ਬਾਸ ਦਾਸ ਕਹ ਕੌਣ ਵੇਖ ਹਾਂ ਜਾਤੀ ਦਾ ਜਾਇ ਜਹਿ ਰੂਪ ਰੇਖ ਜਹਿ ਰੂਪ ਰੇਖ ਜਿੱਦੀ ਜਾਣੀ ਜਾ ਸਕਦੀ ਕਾਇ ਬਾਸ ਦਾਸ ਬਾਸ ਕਿੱਥੇ ਹੈ ਐ ਕਿਵੇਂ ਪਤਾ ਲੱਗੂ ਫਿਰ ਜਹਿ ਰੂਪ ਰੇਖ ਜਾਣੀ ਨਹੀਂ ਜਾ ਸਕਦੀ ਨਾ ਉਹ ਤਾਂ ਜਾਣਿਆ ਜਾ ਸਕਦਾ ਹੈ ਨਾ ਉਹ ਕਿੱਥੇ ਵਸਦਾ ਇਹ ਜਾਣਿਆ ਜਾ ਸਕਦਾ ਹੈ ਨਾ ਉਹਦੀ ਰੂਪ ਰੇਖ ਜਾਣੀ ਜਾ ਸਕਦੀ ਕੋਕਾ ਸਾਡੇ ਕੋਲ ਜਿਹੜੇ ਗਿਆਨੰਦਰੇ ਨੇ ਉਹਨਾਂ ਦੀ ਪਕੜ ਤੇ ਪਰੇ ਅਸਲ ਜੀਣਾ ਜਾਣਣਾ ਉਹਦੀ ਉਪਰੇ ਕੋਥਾ ਆਪੇ ਆ ਜਿਹਨੇ ਜਾਣਣਾ ਉਹਦਾ ਆਪੇ ਆ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਤਾ ਹੋਰ ਜਿਹਨੂੰ ਢੋਲਦਾ ਓਏ ਆਪੇ ਹੈ ਮੇਰਾ ਨੂੰ ਢੋਲਦਾ ਮੇਰਾ ਘਰ ਆਪੇ ਜੀ ਵਾਪੇ ਨਰਾ ਘਰ ਇਹ ਤਾਂ ਉਹਦੀ ਢੋਲਦਾ ਹੋਰ ਤੇ ਸਾਨੂੰ ਉਹ ਤਾਂ ਉਹਨੂੰ ਹਟਾਇਆ ਜਿਹੜਾ ਬਾਹਰ ਟੋਲਦਾ ਗੱਲ ਕਹਿ ਕੇ ਆਹ ਗੱਲ ਕਹਿ ਕੇ ਸਿੱਖ ਨੂੰ ਨਹੀਂ ਹਟਾਇਆ ਜਿਹੜਾ ਬਾਹਰ ਟੋਲਦਾ ਹੈ ਮੂਰਤੀ ਚੋਂ ਨੂੰ ਹਟਾਇਆ ਹੋਇਆ ਹੈ ਤਾਂ ਕਹਿ ਕੇ ਇਹ ਗੱਲਾਂ ਉਹਨਾਂ ਵਾਸਤੇ ਕਹੀਏ ਸਾਡੇ ਵਾਸਤੇ ਨਹੀਂ ਸਾਡੇ ਵਾਸਤੇ ਤਾਂ ਹੈ ਕਿ ਅਸੀਂ ਗੁਰੂ ਦੇ ਸਰੀਰ ਚ ਟੋਲੀਏ ਬੰਦੇ ਦੇ ਸਰੀਰ ਚ ਟੋਲੀਏ ਇਹ ਬੰਦੇ ਨੂੰ ਮੰਨ ਲਈਏ ਕਿ ਜਨਮ ਨਹੀਂ ਲੈਂਦਾ ਹੈ ਜਦੋਂ ਇੱਕ ਹੋ ਜਾਂਦਾ ਫਿਰ ਨਹੀਂ ਜਨਮ ਲੈਂਦਾ ਜਨਮ ਅੱਧਾ ਹੀ ਲੈਂਦਾ ਅੱਧਾ ਘੜਾ ਲਾਉਂਦਾ ਅੱਧਾ ਘੜਾ ਦੀਦਾ ਤੇਦੀ ਰੂਪ ਰਸਨਾ ਹਮ ਲੱਭ ਲੂ ਜਿਹੜੀ ਜੀ ਸਾਥੀ ਨਹੀਂ ਤਾਂ ਬੜੀ ਉਹ ਦਾਲ ਹੋ ਜਾਂਦੀ ਹੋ ਜੂ ਨਾ ਅੱਧੀ ਘਮਤੀ ਜੂ ਹੋਰ ਵੀ ਛੋਟੀ ਹੋ ਜਿਹੜੀ ਇੱਕ ਪੂਰੀ ਸਾਈ ਦੇ ਚੀਜ਼ ਦੀਦੀ ਨਹੀਂ ਉਹ ਅੱਧੀ ਘੱਟ ਲੀਆ ਦੀਦੀ ਜੂ ਅੱਧੀ ਬਣੀ ਦੀਦੀ ਹੁੰਦੀ ਉਹ ਤਾਂ ਹੋਰ ਛੋਟੀ ਹੋ ਸਮਾਂ ਇਸ ਕਰਕੇ ਜੋ ਟੋੜਦਾ ਨਾ ਜਿਹਨੂੰ ਟੋੜਦਾ ਜਿਹਦਾ ਰੂਪ ਰੇਖ ਟੋੜਦਾ ਉਹਦਾ ਇਹ ਆਪਣਾ ਰੂਪ ਰੇਖ ਸਮਝ ਲਵੇ ਕੀ ਹੈ ਜਿਹੜਾ ਇਹਦਾ ਰੂਪ ਹੈ ਉਹ ਹੀ ਹੁੰਦਾ ਹੈ ਆਇਦਾ ਹੱਲ ਹੈ ਹੋਰ ਇਹਦਾ ਹੱਲ ਕੋਈ ਨਹੀਂ ਅਖੀਰ ਹੱਲ ਕੀ ਹੈ ਇਹ ਆਪਣਾ ਰੂਪ ਰੇਖ ਸਮਝ ਲਵੇ ਉਹ ਹੀ ਬਸ ਆਤਮ ਦਰਸ਼ਨ ਦੀ ਗੱਲ ਦਾ ਮਤਲਬ ਇਹੀ ਹੈ ਆਤਮ ਅਖੀਰ ਨੂੰ ਕੀ ਆਊਗਾ ਆਤਮ ਦਰਸ਼ਨ ਸਭ ਕੁਝ ਕਹਿ ਕੇ ਆਤਮਦਰਸ਼ਨ ਤੇ ਗੱਲ ਆਖੇ ਬੁਕੜੀ ਹੋ ਫਿਰ ਆਤਮ ਨੂੰ ਜਾਣ ਲੋ ਆਪਣੇ ਆਪ ਨੂੰ ਆਪਣੇ ਆਪ ਨੂੰ ਸਭ ਜਣ ਕਹੀ ਨਾਮ ਤਾਂ ਸਹ ਕਮਣ ਜਾਤ ਕੀ ਨਾਮ ਆਉਦਾ ਉਹਦਾ ਕੋਈ ਨਾਮ ਤਾਂ ਹੀ ਨਹੀਂ ਸੰਸਾਰ ਚ ਕਿਸੇ ਚੀਜ਼ ਦਾ ਵੀ ਕੋਈ ਨਾਮ ਨਹੀਂ ਨਾਮ ਤਾਂ ਸਾਡੇ ਰੱਖੇ ਸਾਰੀਆਂ ਚੀਜ਼ਾਂ ਦਾ ਨਾਮ ਅਸੀਂ ਆਪ ਐ ਕੋਈ ਚੀਜ਼ ਲੈ ਲੋ ਕਿਸੇ ਤੇ ਉਂਬਲੀ ਰਖ ਲੋ ਦਾ ਨਾ ਫਸੀ ਆਪਣਾ ਰੱਖਿਆ ਹੋਇਆ ਆਪ ਦੂਈ ਬੋਲੀ ਜੋ ਨਾ ਹੋ ਕੋ ਦਾ ਕੁਛ ਵੀ ਨਹੀਂ ਚੀਜ਼ ਹੈ ਜਿਹਦਾ ਕੋਈ ਨਾਮ ਹੁੰਦਾ ਜਾਂ ਸੰਸਾਰ ਨਹੀਂ ਹੁੰਦਾ ਜਨਾਉ ਕਿੱਥੇ ਜਾਂਦੇ ਨੇ ਜੋ ਚੀਜ਼ ਨਵੀਂ ਬਣੀ ਹੋਈ ਹੈਗਾ ਨਾਮ ਕੀ ਹੁੰਦਾ ਆਤਮਾ ਦਾ ਵੀ ਨਾ ਅਸੀਂ ਬਿਥਿਆ ਹੋਇਆ ਇੱਕ ਅਸੀਂ ਆਤਮਾ ਕਹਿੰਦੇ ਅੰਗਰੇਜ਼ ਹੋਲ ਕਹਿੰਦੇ ਨੇ ਲ ਹੁਣ ਦੋਨੋਂ ਹੋ ਗਏ ਅਸਲੀ ਕਿਹੜਾ ਹੋਰ-ਬੋਰ ਗਾਲੇ ਕੁਝ ਹੋਰ ਕਹਿੰਦੇ ਹੋਣੇ ਕਿਸੇ ਜੀ ਦਾ ਵੀ ਨਾਉ ਨਹੀਂ ਹੁੰਦਾ ਜਿਹੜੇ ਮਾਲਾ ਵੜ ਕੇ ਨੌਂ ਜਪਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਗਿਆਨ ਨਹੀਂ ਹੈ ਦੀ ਕਿਸੇ ਵਸਤੂ ਦਾ ਗਿਆਨ ਹੀ ਉਹਦਾ ਨਾਮ ਕਿਸੇ ਵਸਤੂ ਦੀ ਸੋਚ ਹੀ ਉਹਦਾ ਨਾਮ ਨੌਰੀ ਦਾ ਨਗਰ ਨਾਲ ਨਹੀਂ ਕਿਸੇ ਚੀ ਤੱਕ ਪਹੁੰਚਿਆ ਜਾ ਸਕਦਾ ਉਹਦਾ ਸੋਜੀ ਨਾਲ ਪਹੁੰਚਿਆ ਜਾ ਸਕਦਾ ਦਾ ਨਕਸ਼ਾ ਅਰੂਪ ਰೇಖੀ ਹੈ ਨਕਸ਼ਾ ਰੂਪ ਰೇಖੀ ਹੈ ਨਕਸ਼ਾ ਹੈ ਉਹ ਨਕਸ਼ੇ ਨਾਲ ਪਹੁੰਚਿਆ ਜਾ ਸਕਦਾ ਉਹ ਪਗੈ ਨਾਇਣਕਸ਼ ਕਹਿ ਜੇ ਉਹਦੇ ਨਾਇਣਕਸ਼ ਪਰ ਕਾਹ ਰੂਪ ਹੋਦੈ ਨਹੀਂ ਤਾਂ ਆ ਜਿਹਦੇ ਨਾ ਉਹ ਤੋਂ ਸਰਦਾ ਦੀ ਨਾ ਨਾ ਨਸਤਾ ਹੀ ਸਵਾਲ ਆਉਂਦਾ ਹੈ ਰੰਗ ਰੂਪਲ ਭਾਈ ਕਦ ਕਾਠ ਹੱਥ ਪੈਰ ਇਹ ਸਭ ਚੀਜ਼ਾਂ ਦਾ ਨਾਮ ਕਿਉਂ ਆਉਂਦਾ ਹੈ ਉਹ ਇਹ ਗੱਲ ਨਾ ਰੂਪ ਰੇਖ ਰੂਪ ਕੋਈ ਚੀਜ਼ ਬੁਲਦੀ ਹੈ ਨਾ ਸਹੀ ਜਾਤ ਕਬਨ ਜਾਤ ਜਾਤ ਕਿਹੜੀ ਆ ਦੀ ਜਾਤ ਰਹੀ ਨਹੀਂ ਕੋਈ ਆਤਮਾ ਦੀ ਕੀ ਜਾਤ ਹੈ ਇੱਕੋ ਹੀ ਆਤਮਾ ਸਾਰੇ ਦੁਨੀਆਂ ਦੇ ਵਿੱਚ ਜਿੱਦੇ ਸੰਸਾਰ ਦੇ ਜੀਵ ਨੇ ਆਤਮਾ ਸਾਰਿਆਂ ਚ ਹੀ ਹੈ ਜਾਤ ਪਾਤ ਆਦਮੀ ਦੀ ਬਣਾਈ ਹੋਈ ਹੈ ਨੌ ਵੀ ਆਦਮੀ ਦੇ ਰੱਖਿਆ ਨੇ ਸਾਡੇ ਨਾਮ ਰੱਖਿਆ ਨੇ ਸਾਡੀ ਜਾਤ ਪਾਤ ਵੜਾਈ ਹੋਈ ਇਹ ਤਾਂ ਮਿੱਥੇ ਹੋਏ ਨੇ ਸਭ ਕੁਝ ਸਾਡੇ ਇਹਦਾ ਨਾਮ ਪਾ ਲਈ ਜਾਓ ਇੱਕ ਦੋ ਇਹਨੂੰ ਸਮਝ ਲੱਗ ਜੂਗੀ ਕੁਝ ਜਿਹੜਾ ਉਸਤੇ ਜੇ 70 ਮਿੱਤਰ ਨਹੀਂ ਪੁੱਤਰ ਭਰਾਤ ਜੇ 70 ਮਿੱਤਰ ਅਛਤਰ ਉਹ ਲਖੀ ਨੂੰ ਮਿੱਤਰ ਨਾ ਕੋ ਪੁੱਤਰ ਨਾ ਕੋ ਭਰਾਏ ਆਤਮਾ ਦਾ ਕੋਈ 70 ਮਿੱਤਰ ਨਹੀਂ ਅੱਜ ਦੇ ਸ਼ਤਰੂ ਇਹਨੂੰ ਮੰਨਦੇ ਆ ਉਹਦੇ ਘਰੇ ਜੇ ਪੈਦਾ ਹੋਜੇ ਮਰ ਕੇ ਫੇਰ ਉਹਨਾਂ ਦੇ ਘਰੇ ਜਲ ਬਲਾਲ ਹੋ ਆਤਮਾ ਫੇਰ ਨਾ ਉਹਨੂੰ ਪਤਾ ਨਾ ਆਤਮਾ ਨੂੰ ਪਤਾ ਇਹਨੂੰ ਪਤਾ ਤੁਹਾਨੂੰ ਨਹੀਂ ਪਤਾ ਕੱਲ ਇਹਦਾ ਦੋਸਤ ਸੀ ਅੱਜ ਰਿਸ਼ਤੇਦਾਰ ਹੋ ਗਿਆ। ਹੂੰ। ਕੱਲ ਇਹਦਾ ਜਵਾਈ ਬੋ ਗਿਆ। ਕੱਲ ਦਾ ਦੋਸਤ ਸੀ। ਅੱਜ ਜੈਦਾ ਦਾ مالک ਬਣ ਗਿਆ ਸਾਰੀ ਦਾ। ਕੱਲ ਨਾ ਭਰਾ ਸੀ। ਮਾਰਤਾ ਵੀ ਜੈਦਾ ਦਾ ਜੂ। ਉਹ ਵੀ ਪੁੱਤ ਬਣ ਕੇ ਪੈਦਾ ਹੋ ਗਿਆ ਜੈਦਾ ਫੇ ਲੈ ਗਿਆ। ਉਹਦੇ ਵਾਲੀ ਵੀ ਲੈ ਗਿਆ ਨਾ। ਉਦੋਂ ਫੇ ਲੱਗਿਆ ਇਹ ਤਾਂ ਸਾਡਾ ਭਰਮ ਸੀ ਵੀ ਅਸੀਂ ਲੈ ਲਿਆ ਐ ਕਰ ਲਿਆ ਪਿੱਛੇ ਕੀ ਹੋ ਰਿਹਾ ਪਰਦੇ ਦੇ ਪਿੱਛੇ ਉਹ ਤਾਂ ਪਤਾ ਜਿੱਦਾਂ ਕਿਸੇ ਨੂੰ ਜਿਹਨਾਂ ਨੂੰ ਪਰਦੇ ਦੇ ਪਿਛਲਾ ਗਿਆ ਨਾ ਉਹ ਇਹ ਜੇ ਕੰਮ ਨਹੀਂ ਕਰਦੇ ਸੋਚਦੇ ਹੀ ਨਹੀਂ ਜਿਹੜੇ ਪਰਦੇ ਦੇ ਪਿੱਛੇ ਜਿਹੜਾ ਸਮਝਦੇ ਨੇ ਵੀ ਕੋਈ ਹੋ ਕੁਝ ਵੀ ਹੋ ਸਕਦਾ ਉਹ ਇਹ ਜੇ ਕੰਮ ਕਿਉਂ ਕਰਨਗੇ ਅਸੀਂ ਆਪਣਾ ਮਨ ਰਾਜੀ ਕਰ ਲਿਆ ਵੀ ਅਸੀਂ ਨਾ ਕਰਤਾ ਪਿੱਛੇ ਕੀ ਹੋ ਗਿਆ ਉਹਦਾ ਦਿਨਾ ਬਤਾ ਬਸ ਜਿਨ੍ਹਾਂ ਨੂੰ ਪਿਛੇ ਦਾ ਨਹੀਂ ਗਿਆਨ ਹੈ ਪਿਛੇ ਤੇ ਵਿਸ਼ਵਾਸ ਨਹੀਂ ਹੈ ਉਹ ਇਹ ਜੇ ਕੰਮ ਕਰਦੇ ਨੇ ਜਿਨ੍ਹਾਂ ਨੂੰ ਵਿਸ਼ਵਾਸ ਹੋ ਵੀ ਕਰਦੇ ਹੈ ਇਹ ਕੰਮ ਉਹ ਕੰਦੇ ਕਰਦੇ ਹੈ ਇਹ ਕੰਮ ਸਮਝਣ ਕਰਮ ਨਿਧਾਨ ਕਾਰਨ ਸਰੂਪ ਕਰਣਾ ਦਾ ਕਾਰਨ ਸਰੂਪ ਕਰਨਾ ਦਾ ਸਾਗਰ ਹੈ ਉਹ ਰਹਿਮ ਦਾ ਕਰਣਾ ਰਹਿਮ ਨੂੰ ਦੇਹ ਦਾ ਸਮੁੰਦਰ ਕਰਨ ਦਾ ਨਾ ਨਾ ਕਰਨ ਦਾ ਸਰੂਪ ਕਰਨ ਦਾ ਸਰੂਪ ਹੈ ਸਰੂਪ ਕਿਹਾ ਜਾਂਦਾ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੁਕਮ ਹੈ ਨਾ ਸਰੂਪ ਉਹਦਾ ਸ਼ਬਦ ਹੁੰਦਾ ਜੋਤ ਦਾ ਸਰੂਪ ਸ਼ਬਦ ਹੁੰਦਾ ਜਿਵੇਂ ਪਾਣੀ ਦਾ ਸਰੂਪ ਲਹਿਰ ਹੁੰਦੀ ਹੈ ਇਹ ਕਹਿੰਦਾ ਪਾਣੀ ਦਾ ਹੈ ਉਹ ਹੈ ਜਦ ਲਹਿਰ ਕਹਿੰਦੇ ਆ ਨਾ ਫਿਰ ਕੁਝ ਕਰਨ ਦੀ ਸਮਰੱਥਾ ਰੱਖਦੀ ਹੈ ਕਿਹ ਤੁਰ ਫਿਰ ਤੁਰ ਫਿਰ ਬਨਾਂ ਦਾ ਕੁਝ ਕੰਮ ਨਹੀਂ ਰਹਦਾ ਜੀ ਤੇ ਚਲਾਇ ਮਾਨ ਲਹਿਰ ਹੈ ਇਹ ਵੀ ਜਿਹੜਾ ਸਾਡਾ ਮਾਨ ਹੈ ਚਲਾਇ ਮਾਨ ਮਨ ਕੁਝ ਕਰਦਾ ਹੈ ਮਨ ਸੋਚਦਾ ਹੈ ਬੜੀ ਕੁਝ ਕਰਦਾ ਮਨ ਦੇ ਵਿੱਚ ਇੱਛਾ ਜਿਹੜੀ ਪੈਦਾ ਹੁੰਦੀ ਹੈ ਇੱਛਾ ਬਰਤ ਪੈਦਾ ਹੁੰਦੀ ਉਹ ਲਹਿਰ ਹੈ ਬਾਣੀ ਨਹੀਂ ਬਸ ਮਾਨ ਆਪਾਂ ਬੋਲ ਲਿਆ ਇੱਛਾ ਉਹ ਇਹਦਾ ਰੂਪ ਹੈ ਇੱਛਾ ਹੀ ਇਸ ਰੂਪ ਹੈ ਇੱਛਾ ਪੈਦਾ ਹੁੰਦੀ ਹੈ ਰੂਪ ਪੈਦਾ ਹੁੰਦਾ ਹੈ ਜੇ ਚੱਕਰ ਚੈਨ ਨਹੀਂ ਰੰਗ ਰੂਪ ਜੇ ਚੱਕਰ ਚੈਨ ਨਹੀਂ ਰੰਗ ਰੂਪ ਨੂੰ ਚੱਕਰ ਆਣਾ ਚੈਨ ਹੋਣੀ ਇੱਛਾ ਦਾ ਚੱਕਰ ਚੈਨ ਕੀ ਹੈ ਰੰਗ ਰੂਪ ਕੀ ਹੈ ਦੱਸੋ ਇੱਛਾ ਦਾ ਚੱਕਰ ਚੈਨ ਰੰਗ ਰੂਪ ਹੈ ਕੋਈ ਹਾਂ ਕਦੋਂ ਕਰੇ ਤਾਂ ਬਤਾ ਲੱਗਦਾ ਕਿ ਇੱਛਾ ਸੀ ਇਹਦੀ ਜਦ ਦੀ ਚੱਕੀ ਸੀ ਹੁਕਮ ਥਲਾਇਦੇ ਪਤਾ ਲੱਗੂਗਾ ਜਿੱਲੇ ਜਰੋਵੇ ਬੰਦੇ ਵਿੱਚ ਕੀ ਪਤਾ ਆਪਾਂ ਨੂੰ ਜੇ ਖੇਦ ਭੇਦ ਨਹੀਂ ਕਰਮ ਜੇ ਖੇਤ ਭੇਦ ਨਹੀਂ ਕਰਮ ਕਾਲ ਖੇਦਰੀ ਉਹਨੂੰ ਕੋਈ ਖੇਦ ਅਫਸੋਸ ਨਹੀਂ ਕੋਈ ਉਹਨੂੰ ਕੋਈ ਫਿਕਰ ਨਹੀਂ ਹੈ ਕੋਈ ਕੰਮ ਵਿਗੜ ਜਾਂਦਾ ਰ ਆਪਾਂ ਨੂੰ ਗਲਤੀ ਨਾਲ ਕੋਈ ਉਹ ਤਾਂ ਗਲਤੀ ਨਹੀਂ ਹੁੰਦੀ ਰਹਾ ਉਹ ਤਾਂ ਕੋਈ ਕਬ بگੜਦਾ ਨਾ ਉਹਨੂੰ ਖੇਤ ਦੀ ਲੋੜ ਹੈ ਕਰਨ ਦੀ ਇਹ ਨਹੀਂ ਨਾ ਕੋਈ ਭੇਜਦਾ ਉਹਦੇ ਵਿੱਚ ਪਰ ਭੇਜ ਪਰਮ ਕਰਕੇ ਹੁੰਦੇ ਕਰਮ ਕਾਲ ਨਾ ਕਰਮ ਕਲਪਨਾ ਰੂਪੀ ਕਰਮ ਪਰਮ ਜੀ ਕਲਪਨਾ ਨਹੀਂ ਕਰਨ ਦੀ ਲੋੜ ਹੁੰਦੀ ਕਲਪਨਾ ਦਾ ਉਹ ਕਰਦਾ ਹੁੰਦਾ ਜਿਹਦੇ ਬਸ ਵਿੱਚ ਨੂੰ ਕੁਝ ਹੋਵੇ ਕਲਪਨਾ ਹੋਰ ਗੱਲ ਐ ਜਦ ਮੈਂ ਜੋ ਸੋਚਣਾ ਹੋਏ ਜਾਣਾ ਕਲਪਨਾ ਦੀ ਕੀ ਲੋੜ ਐ ਕਲਪਨਾ ਉਹ ਚੀਜ਼ ਹੈ ਜਿਹੜੀ ਅਸੀਂ ਸੋਚਦੇ ਹਾਂ ਹੋਊ ਕਿ ਨਹੀਂ ਹੋਊ ਸੋਚਦੇ ਤਾਂ ਹੈਗੇ ਅਸੀਂ ਜ਼ਰੂਰ ਪਰ ਸਾਨੂੰ ਗਰੰਟੀ ਨਹੀਂ ਹੈ ਕਲਪਨਾ ਦੇ ਪਿੱਛੇ ਤਾਂ ਡਰ ਹੁੰਦੇ ਭੈ ਹੁੰਦੀ ਹੈ ਕਲਪਨਾ ਦੇ ਪਿੱਛੇ ਭੈ ਹੁੰਦੀ ਹੈ ਬੇਸ਼ੱਕ ਪੂਰੇ ਹਨੇਰੇ ਅੰਦਰ ਪਿੱਛੇ ਭੈ ਹੁੰਦੀ ਹੈ ਕਲਪਨਾ ਦੇ ਪੂਰੇ ਹਨੇਰਾ ਵਿੱਚ ਭੈ ਉਹਦੇ ਕਲਪਨਾ ਜਿੱਥੇ ਹੈ ਭੈ ਤੇ ਹਨੇਰਾ ਦੋ ਚੀਜ਼ਾਂ ਇਕੱਠੀਆਂ ਨੇ ਕਲਪਨਾ ਵਿੱਚ ਜੇ ਕੰਮ بگੜ ਗਿਆ ਸਿਰੇ ਨਾ ਚੜ੍ਹਿਆ ਇਹ ਭੈ ਹੈ ਤਦ ਕਰਦੇ ਕੋਈ ਆਪਾਂ ਉਹਦੇ ਡਰ ਵੀ ਤਾਂ ਹੈ ਨਾ ਕੰਮ ਕਰਦੇ ਆ ਕੋਈ ਇਹ ਡਰ ਵੀ ਹੈ ਅ ਗਰੰਟੀ ਕੋਈ ਨਹੀਂ ਵੀ ਸਰੇ ਚਲੂ ਕੋ ਨਹੀਂ ਚਲੂ ਇਹ ਡੇਰਾ ਦੋ ਚੀਜ਼ਾਂ ਗਲਪਣਾਂ ਚ ਰਹਿਣਗੀ ਇਹ ਡੇਰਾ ਵਰਪੇ ਵਰਪੇ ਪਰਮ ਜੀ ਕਭ ਕੀ ਤੈਨੂੰ ਗਲਪਣਾਂ ਕਰੇ ਉਹ ਨਹੀਂ ਉਹਨਾਂ ਜੋ ਸੋਚਣਾ ਹੋ ਜਾਣਾ ਜੋ ਚਾਹਣਾ ਹੋਏ ਜਾਣਾ ਕਲਪਨਾ ਉਹ ਨਹੀਂ ਨਾ ਹੁੰਦਾ ਹੈ ਉਹ ਨਾ ਮੈਂ ਅੱਛਾ ਉਹ ਇੱਛਾ ਜੋ ਇੱਛਾ ਕਰਦਾ ਉਹ ਹੋ ਜਾਂਦਾ ਕਲਪਨਾ ਵਾਲਾ ਕਰਮ ਟੀਆਂ ਨੂੰ ਲੋੜ ਹੈ ਕਲਪਨਾ ਦਾ ਕਰਮ ਉਹਨੂੰ ਲੋੜ ਹੈ ਜਿਹਦੇ ਬਸ ਵਿੱਚ ਕੁਝ ਨਹੀਂ ਹੁੰਦਾ ਤਾਂ ਵਿੱਚ ਹੈ ਸਭ ਕੁਝ ਉਹਦਾ ਸਭ ਕੁਝ ਉਸ ਵਰਥ ਹੈ ਕਾਰਨ ਕਾਰਨ ਅਸੀਂ ਸਭਰਥ ਨਹੀਂ ਹੈਗੇ ਅਸੀਂ ਉਹਦੀ ਰੀਸ ਕਰਦੇ ਹਾਂ ਕਲਪਨਾ ਕਰਕੇ ਕਲਪਨਾ ਕੋਈ ਦੀ ਰੀਸ ਹੈ ਮੈਂ ਆਪਾਂ ਵੀ ਸੋਚ ਕੇ ਦੇਹਦੇ ਹਾਂ ਵੀ ਆਪਣਾ ਕੀਤਾ ਹੋ ਜੂ ਉਹਦਾ ਨਹੀਂ ਇਹ ਤਾਂ ਰੇਸ ਕਰਨ ਵਾਲੀ ਗੱਲ ਆ ਕਲਪਣਾ ਡਰ ਦਰਦਾ ਪੈਣਾ ਅੜਕ ਕੇ ਉਚਾਰਨੀ ਮੈਂ ਖਾਂ ਪਹਿਰਾ ਆ ਜਾਣਾ ਇਹ ਤਾਂ ਰੀਸ ਹੈ ਉਹਦੀ ਹੋਰ ਕੁਝ ਨਹੀਂ ਕਰਪੜੋ ਵਿੱਚ ਜੀ ਜੇ ਰੀਸ ਕਰਨ ਤੇ ਹਟ ਜਾਂਦਾ ਨਾ ਸਭ ਉਹ ਭਰਮ ਦੋਏ ਚਲੇ ਜਾਂਦੇ ਨੇ ਉਹ ਜਾ ਜਾਂਦਾ ਫਿਰ ਕਲਪਣਾ ਆਪਣਾ ਹੁਕਮ ਹੈ ਜਿਹੜਾ ਹੁਕਮ ਕੀ ਇਹ ਮਨ ਭਾਗ ਦੇ ਮਨ ਭਾਗ ਦਾ ਹੁਕਮ ਹੈ ਕਲਪਨ। ਕੁਝ ਘਾਟੇ ਘਾਟੇ ਕਲਪਨਾਂ ਵੀ ਤਾਂ ਹੈ ਰੋ ਤਾਂ ਹੈ ਦੀ। ਸਭ ਜੀਵ ਜੰਤਕੀ ਕਰਤਪਾਲ ਸਾਰੇ ਜੀਵ ਜੰਤਾਂ ਦੀ ਪਾਲਣਾ ਕਰਦਾ ਤੂੰ। ਰਚਾਉਣਾ ਹੋਈ ਜਾਂਦਾ। ਉਰਦੰ ਬ੍ਰਹਤ ਸਰੂਪ ਬ੍ਰਹਤ ਉਰਦੰ ਬ੍ਰਹਤ ਬ੍ਰਹਤ ਸੁਦੰ ਸਰੂਪ ਸੋ ਤਾਂਸ ਰੁਕ। ਉੱਠਾ ਕੰਮ ਨਹੀਂ ਕੋਈ ਕਰਦਾ। ਉੱਠਾ ਕੰਮ ਨਹੀਂ ਕਰਦਾ ਕੋਈ। ਜੇ ਤੇਰੀ ਗੱਲ ਨਹੀਂ ਕੋਈ ਮੰਨਦਾ ਉਹ ਗੁੱਸੇ ਹੋ ਜਿਵੇਂ। ਗੁੱਸੇ ਵੀ ਤਾਂ ਹੋ ਜਾਂਦੇ ਆ। ਐਨਾ ਕੰਮ ਨਹੀਂ ਕਰਦਾ ਤੂੰ। ਬਦਲਾ ਲੈਣ ਦੀ ਭਾਵਨਾ ਵੀ ਨਹੀਂ ਪੈਦਾ ਹੁੰਦੀ। ਗੁੱਸਾ, ਕਰੋਧ ਵੀ ਨਹੀਂ ਹੁੰਦਾ। ਉਹਦਾ ਉਹਦਾ। ਹਾਂ ਵੀ ਜੇ ਆਲੀ ਮੰਦਾ ਚਲ ਆ ਸਹੀ ਹੁਣ ਤੂੰ ਮੰਦਾ ਨਹੀਂ ਡੱਕਦਾ ਚਲਦੇ ਨੂੰ ਧੱਕਾ ਦੇ ਕੇ ਸਿਟੇ ਦੇਈਏ ਇਹ ਵੀ ਨਹੀਂ ਕਰਦਾ ਜਿੱਤੇ ਤੱਕ ਬਚਾ ਹੁੰਦਾ ਬਚਾਉਂਦਾ ਹੀ ਬਚਾਉਂਦਾ ਕੁਝ ਡਿੱਗਦਾ ਡਿੱਗਦਾ ਨੂੰ ਵੀ ਬਚਾਉਂਦਾ ਖੜੇ ਜੇ ਡਿੱਗਦਾ ਡਿੱਗਦਾ ਨੂੰ ਵੀ ਕਦੇ ਨਾ ਕਦੇ ਦੇਖਦਾ ਵੀ ਇੱਥੇ ੜਕ ਜਵੇ ਚੰਗਾ ਇੱਥੇ ੜਕ ਜਵੇ ਚੰਗਾ ਥਲੇ ਨਹੀਂ ਜਾਵੇ ਚੰਗਾ ਇਹ ਨਹੀਂ ਵੀ ਜਲ ਹੋਣ ਡੇਗਦਾ ਬਿਠ ਬੋਲ ਲੋ ਜਾਣ ਲੋ ਜਿੱਥੇ ਜਾਂਦਾ। ਉਹ ਤਾਂ ਬਸ ਰੁਕ। ਇਹ ਭਾਵੇਂ ਜੀਬੇ ਭੁਖੋ ਜਵੇ। ਉਹ ਆਪਣੀ ਕੋਸ਼ਿਸ਼ ਇਹੀ ਕਰਦਾ ਵੀ ਬਚ ਜਵੇ। ਘੜ ਤੋਂ ਘੜ ਹੰਸਾਨ ਹੋਵੇ। ਅੱਪਾ ਵੀ ਦੇਖਦੇ ਆ ਨਾ। ਅਗ ਲੱਗੀ ਹੋਵੇ ਬਚਾਉਂਦੇ ਕਹਦੇ ਆ। ਜਦ ਜਿੰਨਾ ਬਚੇ ਉਹਨਾਂ ਨੂੰ ਬਚਾ ਲੋ। ਜਿਦੋਂ ਬਾਜੇ ਵਿਚਾਲੋ ਇਹ ਥੋੜੀ ਆ ਵੀ ਦੋ ਪੀਪੇ ਹੋ ਲਿਆ ਦੋ ਛੇਤੀ ਬਾਜੀਵੇ ਐ ਤਾਂ ਕਰਦੇ ਨਹੀਂ ਸੇਵੇਂ ਹੋ ਨਹੀਂ ਕਰਦਾ ਸੁਦਮ ਸਰੂਪ ਸ਼ੁੱਧ ਅੰਗ ਸਰੂਪ ਹਿਰਦਾ ਜਿਹੜਾ ਹੈਗਾ ਸ਼ੁੱਧ ਹੈ ਨਹੀਂ ਹੁੰਦਾ ਇਹ ਸ਼ੁੱਧ ਹੀ ਹਿਰਦਾ ਜਾਉ ਤਾਂ ਕਰੋਨਾ ਹੁੰਦਾ ਉਸਾਉ ਜਿਹੜਾ ਹੈ ਨਾ ਵੀ ਜੇ ਐ ਨਹੀਂ ਬੰਦਾ ਤਾਂ ਇਹ ਅਸ਼ੁੱਧ ਸਰੂਪ ਦੇ ਵਿੱਚ ਇਹ ਵਿਰੋਧ ਫੈਰਉਂਦਾ ਬੁੱਧੰ ਅਪਾਲ ਜੁੱਧੰ ਅਨੂਪ ਬੁੱਧੰ ਅਪਾਲ ਹੁੰਦੀ ਕਿੰਨੀ ਇਧਰੀ ਪਾਲ ਹੁੰਦੀ ਹੈ ਵੱਟ ਜੇ ਵਾ ਵੱਡੇ ਆਪਾ ਕਰ ਦਿੰਦੇ ਨਾ ਲਗ ਲਗ ਅੜਾੜੇ ਵੱਟ ਕਿਸੇ ਪਾਲ ਸਰੋਵਰ ਦੀ ਹੁੰਦੀ ਹੈ 500 ਬੂਹਾ ਸਰਵਰ ਪਰ ਇਹਦੀ ਜਣੀ ਬੁੱਧੀਆਂ ਉਹਦੇ ਆਲੇ-ਦਾਲੇ ਬਾਉਂਡਰੀ ਨਹੀਂ ਹੈ ਕਾਦੀ ਪਰਵ ਦੀ ਬੁੱਧੰ ਅਪਾਲ ਅਪਾਰਾ ਬਾਰਡਰ ਨਹੀਂ ਕੋਈ ਹੈ ਬਾਰਡਰਲੈਸ ਬੁੱਧੀ ਹੈ ਅਪਾਰ ਬੁੱਧੀ ਹੈ ਜੁਦੰ ਅਨੂਪ ਔਰ ਜਦ ਜਦਗਲ ਦੀ ਸੁਭਰਤਾ ਉਹਦੇ ਵਿੱਚ ਅਨੂਪ ਲੜਨ ਦੀ ਸੁਭਰਤਾ ਬੁੱਧੀ ਦੀ ਕਾਰੇ ਖਿਲਾਫ ਪਰਮ ਦੇ ਖਿਲਾਫ ਲੜਦੀ ਹੈ ਬੁੱਧੀ ਅਸਲ ਚ ਪਰਮ ਦੇ ਖਿਲਾਫ ਲੜਦੀ ਹੈ ਬੁੱਧੀ ਪਰਮ ਤੇਰਾ ਨਹੀਂ ਜਾਣਾ ਇਹ ਚੀਜ਼ਾਂ ਦੁਨੀਆਂ ਤਾਂ ਛਡਾਉਂਦੀ ਹੈ ਲੋਭ ਛਡਾਉਣਾ ਮੋਹ ਛਡਾਉਣਾ ਇਹ ਪਰਮ ਜਾਂਦਾ ਰਹੀਏ ਰੱਖੇ ਜੜਾਂਦਰ ਹੱਦੀ ਨਾਲ ਵਾਲੇ ਦਾਲੇ ਦੀ ਤਾਂ ਵੱਢਦੇ ਆਂ ਉਹ ਪਟਣੀ ਹੋਣਾ ਅੜਦਾਲੇ ਵੀ ਤੇ ਜਿਹੜਾ ਹੁੰਦੀਆਂ ਦਰਖਤਾਂ ਦੇ ਛੋਟੀਆਂ ਉਹ ਸਾਰੀਆਂ ਵੱਢਣੀਆਂ ਪੈਂਦੀ ਹੋਰ ਜੇ ਦਰਖਤ ਪੋਟਾ ਰਿਹਾ ਬੀੜ ਜੜਦਾ ਥੱਲੇ ਸਿੱਧੀ ਹੁੰਦੀ ਹੁੰਦੀ ਹੈ ਮੂਸਲੀ ਜਿਹਨੂੰ ਕਹਿੰਦੇ ਆ ਪਰ ਅੜਦਾਲੇ ਜਿਹੜਾ ਵੱਢ ਕੇ ਉਹਦੇ ਤੇ ਬਹੁਤ ਜ਼ੋਰ ਜਿੰਨਾ ਚਿਰ ਉਹ ਮੂਸਲੀ ਨਹੀਂ ਵੱਢਦਾ ਦਰਖਤ ਨਹੀਂ ਸੁੱਕਦਾ ਹੈਗਾ ਅਸਲ ਦੇ ਵਿੱਚ ਤਾਂ ਮੇਰੋ ਦੇ ਚੋਂ ਜਾਂਦਾ ਉਹ ਖਰਾਕ ਪਰ ਦੁਨੀਆਂ ਜੜਾ ਵੀ ਸਹਾਇਕ ਹੁੰਦੀ ਅਨਸਾਰੀ ਭਰਮ ਦਾ ਨਾਸ ਕਰ ਪਰ ਮੇਰ ਗੱਲ ਇਹ ਭਰਮਰ ਗਿਆਨ ਦਾ ਇੱਕ ਦੂਜੇ ਦੇ ਵਿਰੋਧੀ ਨੇ ਉਹਦਾ ਰੋਸ਼ਨੀ ਹੈ ਉਹਦਾ ਡੇਰ ਵਿਰੋਧ ਤਾਂ ਇਹਨਾਂ ਦਾ ਹੀ ਅਸਲ ਦੇ ਵਿੱਚ ਇਹ ਦੁਨੀਆਂ ਤਾਂ ਤਾਂ ਛਡਾਉਣੀ ਆਵੇਂ ਭਰਮ ਨਹੀਂ ਜਾਣਾ ਹੈਗਾ ਮੇਨ ਗਾਲ ਟਾਰਗੇਟ ਭਰਵੇਂ ਗੁਰਪ੍ਰਸਾਦ ਪਰਮ ਕਾਲਾਸ ਉਹਨੇ ਤੇ ਬੋਦੀ ਕਿਸੇ ਦੀ ਗੱਲ ਨਹੀਂ ਕੀਤੀ ਪਰਮ ਦਾ ਨਾਸ ਕੀਤਾ ਪਰਮ ਦੇ ਨਾਸ ਵਾਸਤੇ ਇਹ ਨਾਲ ਜੜਾ ਦਾ ਬਟ ਹੋਣਾ ਪਹਿਲਾਂ ਮੜੋਣਾ ਜ਼ਰੂਰੀ ਹੈ ਪਰਮ ਨੂੰ ਖਰਾਕ ਮਿਲਦੀ ਉਥੋਂ ਲਾਸ ਨਹੀਂ ਹੋਣਾ ਪਰਮ ਦਾ ਹਾਂਜੀ ਜੁੱਧਨ ਅਨੂਪ ਜੁੱਧ ਮੰਨੂਪ ਅਨੂਪ ਕਿਸਮ ਦਾ ਜੁੱਧ ਕਰਦੀ ਐਸਾ ਜੁੱਧ ਕਰਦੀ ਹੈ ਕੋਈ ਮਿਸਾਲ ਹੀ ਨਹੀਂ ਦੂਸਰੀ ਕੋਈ ਮੁਕਾਬਲਾ ਹੀ ਨਹੀਂ ਉਹਦੇ ਜੁੱਧ ਦਾ ਐਸੀ ਕੋਈ ਬੁਧ ਸ਼ਕਤੀ ਹੈ ਹੋਰੀ ਜੁਦ ਕਰੇ ਯਾਨੀ ਫਿਰ ਉਹਦਾ ਮੁਕਾਬਲਾ ਕੌਣ ਕਰੂ ਬੇਬੇਕ ਬੁੱਧੀ ਦਾ ਮੁਕਾਬਲਾ ਨਹੀਂ ਕੋਈ ਕਰ ਸਕਦੀ ਅੱਛਾ ਬੇਬੇਕ ਬੁੱਧੀ ਦੇ ਨਾਲ ਬੇਬੇਕ ਬੁੱਧੀ ਦਾ ਜਦ ਨਹੀਂ ਹੁੰਦਾ ਹੁੰਦਾ ਇਹ ਦੋ ਇਕੱਠੀਆਂ ਹੋ ਦੀ ਬੁੱਧੀ ਨਹੀਂ ਇਕੱਠੀ ਹੁੰਦੀ ਗੁਰਮੁਖੀ ਦੀ ਬੁੱਧੀ ਇਕੱਦੀ ਹੈ ਇਕੱਦੀ ਹੈ ਬੁੱਧੀ ਉਹ ਵੇ ਹੋ ਜਾਂਦਾ ਹੈ 100% ਦੀ ਹੋ ਜਾਂਦਾ ਇਹਨਾਂ ਦਾ ਸਾਰੇ ਬੁੱਧੀ ਜੇ ਇਕਾ ਵੀ ਹੋ ਜੇ 100% ਦੀ ਇਕਾਰੀ ਹੋ ਤਾ ਇੱਕ ਘਰ ਚ ਵੀ ਸਵਾਦ ਵਿੱਚ ਥੋੜਾ ਥੋੜਾ ਕਿ ਤਣ ਕਿਤੇ ਜਾ ਕੇ ਫਰਕ ਪਏ ਜਾਂਦਾ ਆਪ ਜਿਹੀ ਲੀਡਰਾਂ ਦਾ ਫਰਕ ਹੈ ਚਾਹੁੰਦੇ ਕੀ ਨੇ ਪਬਲਿਕ ਦਾ ਭਲਾ ਫਰਕ ਕਿ ਨਾ ਕਰਨਾ ਸੋਚੜੀ ਜੀ ਫਰਕ ਕਿ ਲੋਖਣਾ ਫੌਜ ਹੈ ਕੋਈ ਟਾਰਗੇਟ ਦੇ ਦਿਓ ਦਸ ਬੰਦੇ ਲੈ ਲਓ ਅਫਸਰ ਆਪਣਾ ਆਪਣਾ ਫਰਕ ਦੱਸ ਦੇਣਗੇ ਉਹ ਕਹੋ ਐ ਕਰ ਇਸ ਤਰੀਕੇ ਨਾਲ ਲੜੀਓ ਕੁਏ ਥੋੜਾ ਬੋਤਾ ਫਰਕ ਸੰਸਾਰੀ ਬੁੱਧੀ ਚ ਹੋਣਾ ਕੁਦਰਤੀ ਗੱਲ ਹੈ ਕਿੰਦੀ ਠੀਕ ਹੈ ਕਿੰਦੀ ਗਲਤ ਉਹਦਾ ਬਾਅਦ ਪਤਾ ਲੱਗੂਗਾ ਪਰ ਉਸ ਵੇਲੇ ਉਹਨੂੰ ਆਪਣੀ ਠੀਕ ਲੱਗਦੀ ਉਹਨੂੰ ਆਪਣੀ ਠੀਕ ਲੱਗਦੀ ਉਹਨੂੰ ਆਪਣੀ ਠੀਕ ਲੱਗਦੀ ਸੰਸਾਰੀ ਬੁੱਧੀ ਚ ਫਰਕ ਹੋਣਾ ਕੁਦਰਤੀ ਗੱਲ ਹੈ ਜਦੋਂ ਬੁੱਧੀ ਫਰਕ ਤੇ ਖਤਮ ਹੋ ਜਾਂਦਾ ਉਹ ਉਹ ਬੇਬੁੱਧੀ ਕਹਿੰਦੇ ਫੇਰ ਫਰਕ ਨਹੀਂ ਰਹੇ ਤੋ ਉਹ ਭਗਤਾਂ ਦੀ ਬੁੱਧੀ ਹੈ ਉਹ ਬੇਬੇ ਬੁੱਧੀ ਕਹਿੰਦੇ ਇਹ ਕੋਲ ਦੀ ਹੈ ਵਿਵ ਤੇ ਬੇਵੋ ਦਾ ਡਿਫਰੈਂਸਸ ਵਿਵ ਵਿਚਾਰ ਕਛੁਨਾ ਹੈ ਵਿਚਾਰ ਦੇ ਵਿੱਚ ਫਰਕ ਨਹੀਂ ਹੈ بے بے وچار کچھ نہ ہیں پہلا کیا پہلا 12 تے دی فرق ہے بے بے پر ہوتا باز جے بے بے وچار کچھ نہ ہیں ہو گئے پھر چترمان کو دے پھر چترمان کو دے بے بے ਜੇ ਝਗੜਾ ਅੰਦਰੋਂ ਮੁੱਕਿਆ ਨਾ ਆਪਣੇ ਅੰਦਰੋਂ ਫਿਰ ਬਾਹਰ ਬੜੀ ਨੇ ਉਹਦਾ ਬਾਹਰ ਵੀ ਉਹਦਾ ਨਹੀਂ ਬਾਹਰ ਲੋਕਾਂ ਦਾ ਹੋਊਗਾ ਉਹ ਨਾਲ ਇਸ ਕਰਕੇ ਇੱਥੇ ਲਿਖਿਆ ਕੋਈ ਦੁਸ਼ਮਣ ਨਹੀਂ ਕੋਈ ਬਿੱਤਰ ਨਹੀਂ ਬਿੱਤਰ ਤਾਂ ਤਾਂ ਹੀ ਉਹਦਾ ਸੁਭਾਅ ਨਹੀਂ ਬਣਦਾ ਉਹ ਜਖੋਟ ਹੈ ਖੋੜ ਦਾ ਬਿੱਤਰ ਹੋ ਕੇ ਜਾਵੇ ਖੋੜ ਦਾ ਬਿੱਤਰ ਨਹੀਂ ਹੋ ਸਕਦਾ ਕੋੜ ਨੂੰ ਤਾਂ ਖੋੜ ਕਹਿਣਾ ਪਊਗਾ ਬਿੱਤਰ ਦਾ ਘਾਤੀ ਰਹੇਗੀ ਕਬੀ ਨੂੰ ਤਾਂ ਦਸਲਾ ਪਊਏ ਜਾਂ ਇਹ ਕਬੀ ਬਿੱਤਰ ਤਾਂ ਮੰਨਣੀ ਨਹੀਂ ਦੀ ਬਿੱਤਰ ਤਾਂ ਨਹੀਂ ਹੋ ਸਕਦੀ ਬਿੱਤਰ ਤਾਂ ਫਿਰ ਉਹਦੀ ਖੋੜ ਛਪਾਉਣੀ ਪਊਗੀ ਬਿੱਤਰ ਤਾਂ ਬਿੱਤਰ ਦਾ ਉਗੜ ਛਪਾਉਣਾ ਤਾਂ ਨਹੀਂ ਹੈ ਉਗੜ ਨਹੀਂ ਕਿਸੇ ਦਾ ਛਪਾ ਸਕਦੇ ਸੀ ਬਿੱਤਰ ਦਾ ਕਹਾਂਗੇ ਉਹ ਪਊ ਉਹ ਛਪਾ ਸਕਦੇ ਨਹੀਂ ਉਗੜ ਛਪਾਵਾਂਗੇ ਨੁਕਸਾਨ ਹੁੰਦਾ ਬਿੱਤਰ ਦਾ ਹੀ ਨੁਕਸਾਨ ਹੋ ਗਿਆ ਅਸਲ ਦੇ ਵਿੱਚ ਤਾਂ ਮਤਰੇ ਉਹਦਾ ਨੁਕਸਾਨ ਹੋ ਜੂਗਾ ਉਹ ਬਿਮਾਰ ਆ ਪਕਾ ਦੇ ਤੰਦਰੁਸਤ ਡਾਕਟਰ ਉਹ ਬੁੜਜੂ ਉਹ ਵਰਜੂ ਵਿਚਾਰ ਡਾਕਟਰ ਆਇਆ ਪੁੱਛਣ ਕੋਈ ਭਾਈ ਕੋਈ ਬਿਮਾਰ ਆ ਤਾਂ ਦੱਸੋ ਆਪਾਂ ਕਹਿੰਦੇ ਨਹੀਂ ਇਹ ਤਾਂ ਠੀਕ ਹੈ ਤੇ ਉਹਦਾਂ ਉਤਰ ਹੋ ਗਈ ਤਾਂ ਕੋਦੇ ਉਹਦਾ ਉਗਣ ਲਗੋ ਲਿਆ ਕਿ ਭੈੜਾ ਕਰਤਾ ਉਹਦਾ ਸੀ ਫੈਰਾਰੀ ਕੀਤਾ ਇਹ ਕਹੇਗਾ ਇਹ ਤਾਂ ਠੀਕ ਹੈ ਜੀ ਬਿਲਕੁਲ ਤੰਦਰੁਸਤ ਹੈ ਫਿਰ ਇਹ ਕੋਈ ਉਗੜੀ ਉਹਦਾ ਤੋਖੀਤਾ ਉਹਨੂੰ ਉਹਦਾ ਨੁਕਸਾਨ ਹੋ ਗਿਆ ਤਾਂ ਮਰ ਜੂਗਾ ਫਿਰ ਇਸ ਕਰਕੇ ਇਹ ਜੀ ਬਿੱਤਰ ਤਾਂ ਜੀ ਚ ਉਹਦਾ ਨੁਕਸਾਨ ਹੋ ਜਵੇ ਸੰਸਾਰ ਹੈ ਜੀ ਬਿੱਤਰ ਤਰ ਮਿੱਤਰ ਸਮਝਦਾ ਉਹਦੇ ਉਗੜਾਂ ਨੂੰ ਰੱਖ ਲਈਏ ਆ ਨਜਾਇਜ਼ ਵੜੇ ਇਹ ਕਰਦੀਏ ਸੰਸਾਰ ਦੇ ਦਿਖਾ ਵਿੱਚ ਬਿੱਤਰ ਤਾਂ ਇਹ ਬਿੱਤਰ ਤਾਂ ਅਸਲ ਜੁਹਦੀ ਦੀ ਇਹ ਜੀ ਮਿੱਤਰਤਾ ਨਹੀਂ ਕਰਦਾ ਉਹ ਪ੍ਰੇਮ ਕਰਦਾ ਹੈ ਮਿੱਤਰਤਾ ਨਹੀਂ ਕਰਦਾ ਪ੍ਰੇਮ ਕੁਝ ਹੋਰ ਚੀਜ਼ ਹੈ ਪ੍ਰੇਮ ਹੈ ਆ ਦੱਸਦਾ ਵੀ ਹਾਂ ਇਹ અમારી ਹੈਗੀ ਹੈ ਇਹਨੂੰ ਨਹੀਂ ਪਤਾ ਬਿਮਾਰ ਹੋ ਇਹਨੂੰ ਨਹੀਂ ਪਤਾ ਬਿਮਾਰ ਇਹਨੂੰ ਪਤਾ ਨਹੀਂ ਬਿਮਾਰੀ ਕੀ ਹੁੰਦੀ ਹੈ ਪਰ ਇਹਨੂੰ ਦਵਾਈ ਚਾਹੀਦੀ ਹੈ ਵੀ ਤੈਨੂੰ ਨਹੀਂ ਭਾਈ ਪਤਾ ਤੈਨੂੰ ਕੀ ਬਿਮਾਰੀ ਹੈ ਤੂੰ ਦਵਾਈ ਖਾ ਠੀਕ ਹੋ ਜਾਏਗਾ ਪ੍ਰੇਮ ਹੈ ਜੇ ਉਹ ਸਾਂ ਕਰੇ ਮੈਨੂੰ ਕਹਿੰਦਾ ਬਿਮਾਰੀ ਹੈ ਫੇਰ ਉਹ ਹੀ ਮੁਰਖਾ ਖੋਦੇ ਫੇਰ ਮੁਰਖਾ ਉਹ ਦੇ ਫਿਕਰ ਤੋਂ ਗੁਰਬਣੀ ਮੁਰਖੀ ਦੀਆਂ ਨਾਲ ਮੁਰਖਾ ਖੰਦ ਖੋਰ ਅਸਾਂ ਖੋਰ ਖੰਦ ਖੋਰ ਬਿਮਾਰੀਆਂ ਤਾਂ ਰੱਖੀ ਬੈਠੇ ਨੇ ਕਹਿੰਦੇ ਨੇ ਤੰਦਰੁਸਤ ਸਾਨੂੰ ਇਹਨਾਂ ਕਹੋ ਸੀ ਬਿਮਾਰ ਸਾਨੂੰ ਨਾ ਕਹੋ ਬਿਮਾਰਾਂ ਇਲਾਜ ਨਹੀਂ ਕਰਾਉਂ ਤੰਦਰੁਸਤ ਕਿਵੇਂ ਹੋਗੇ ਇਹ ਮੁਰਖਾ ਖੰਦ ਖੋਰ ਗੁੱਸਾ ਕਰਦੇ ਰਹੇ ਗਏ ਤਮੋਰ ਗੰਤ ਕੋਰ ਵਾਲੀ ਗੱਲ ਸੰਸਾਰੀ ਬਿਮਾਰੀ ਦਾ ਨਹੀਂ ਉਸਾ ਕਰਦੇ ਸੀ ਸੰਸਾਰੀ ਬਿਮਾਰੀਆਂ ਦਾ ਨਹੀਂ ਉਸਾ ਕਰਦੇ ਉਧਰ ਕਰਦੇ ਸੰਸਾਰ ਸਾਰੀ ਅਸੀਂ ਅਸਲ ਸੰਸਾਰੀ ਆਦਮੀ ਹ ਇਦਾਂ ਠੀਕ ਵਰਤਦੇ ਆ ਇਦਾਂ ਵਰਤਾਓ ਸਾਡਾ ਠੀਕ ਆ ਉਧਰ ਗਲਤ ਦੋਵੇਂ ਪਾਸੇ ਗਲਤ ਹੈ ਭਗਤਾਂ ਦਾ ਦੋਵੇਂ ਪਾਸੇ ਠੀਕ ਹੁੰਦਾ ਸੰਸਾਰ ਵਾਲੇ ਪਾਸੇ ਦੀ ਪਰਵਾਹ ਨਹੀਂ ਹੁੰਦੀ ਦੁਨੀਆ ਨੂੰ ਸੰਸਾਰ ਆਏ ਪਾਸੇ ਦੀ ਪਰਵਾਹ ਨਹੀਂ ਪਾਸੇ ਦੀ ਪਰਵਾਹ ਨਹੀਂ ਆਹ ਫਰਕ ਹੈ ਨਾ ਦਾ ਜੋੜ ਨਹੀਂ ਹੁੰਦਾ ਇਹ ਗੰਦਾ ਉਹ ਗੜਾ ਦੀਆਂ ਨੇ ਕਿਹਨਾਂ ਬਿਮਾਰੀਆਂ ਉਹ ਤਾਂ ਲੋਡ ਪੈਂਦੀ ਐ ਝੂਠ ਦੀ ਵੀ ਲੋਡ ਪੈਂਦੀ ਐ ਉਹਨਾਂ ਇਹਦਾ ਲੋਡ ਸਮਝਦੇ ਨੇ ਨੋਪਦੀ ਵੀ ਲੋਡ ਪੈਂਦੀ ਐ ਭਾਈ ਉਹ ਇਹਨਾਂ ਨੂੰ ਲੋਡ ਐ ਉਹਨਾਂ ਬਿਮਾਰੀਆਂ ਦੀ ਇਹ ਲੋਡ ਵਾਤੇ ਰੱਖਦੇ ਨੇ ਇਹਨਾਂ ਨੂੰ ਜੰਮਣ ਬੰਦਾ ਨਹੀਂ ਰੌਲਾ ਵੀ ਜੰਮਣ ਦੇ ਬੰਦੇ ਸਾਡਾ ਫਿਕਰ ਐ ਇਹਦਾ ਫਿਕਰ ਨਹੀਂ ਇਹਨੂੰ ਹੈ ਗਿਆਨ ਨਹੀਂ ਐ ਗੱਲ ਦਾ ਇਹ ਤਾਂ ਉਹਨਾਂ ਕੋ ਪੜਾਈ ਹੋਈ ਦੀ ਉਹਨਾਂ ਦੀ ਪੜਾਈ ਹੋ ਰਹੀ ਹੈ ਰਾਏ ਹੋ ਰਹਾ ਸੰਸਾਰੀ ਆਦਮੀ ਜੇ ਰੂਪ ਨਹੀਂ ਰੰਗ ਰਾਗ ਜੇ ਰੂਪ ਨਹੀਂ ਰੰਗ ਰਾਗ ਨਾ ਰੂਪ ਹੈ ਨਾ ਰੇਖ ਹੈ ਨਾ ਰੰਗ ਨਾ ਰਾਗ ਰੰਗ ਰਾਗ ਹੈ ਨਹੀਂ ਰੂਪ ਰੇਖ ਕਾਲਾ ਜਿਹੜਾ ਚਾਹੁੰਦਾ ਮੈਂ ਘੋਰਾ ਹੋ ਜਾਂ ਰਾਗ ਨਾ ਰਾਗ ਇੱਛਾ ਹੀ ਉਦੀ ਹੈ ਨਾ ਕਾਲਾ ਜਿਹੜਾ ਕਹੋ ਮੈਂ ਘੋਰਾ ਹੋ ਜਾਂ ਜਾ ਰੂਪ ਰੰਗ ਹੈ ਨਹੀਂ ਜਿਹੜਾ ਰੂਪ ਹੈ ਉਹ ਕੋ ਮੇਰਾ ਰੂਪ ਠੀਕ ਹੋ ਜਵੇ ਲੋਕ ਕਲਾਸਿਕ ਸਰਜਰੀ ਨਹੀਂ ਕਰਾਉਂਦੇ ਜਦ ਹੈ ਨਹੀਂ ਕੁਝ ਰਾਗ ਇਛਾਈ ਹੁਦੀ ਅਣਛੇ ਜ ਤੇਜ ਜਿਵੇਂ ਲਾਈਟ ਬਿਜਲੀ ਦੀ ਵੀ ਕਦੇ ਡੱਬ ਹੋ ਜਾਂਦੀ ਕਦੇ ਤੇਜ ਹੋ ਜਾਂਦੀ ਹੈ ਯਾ ਡੇਮ ਹੋ ਗਈ ਛੱਜ ਗਈ। ਘਟ ਗਈ। ਅਣਛੇ ਤੇਜ ਅਣਭਿਜ ਅਦਾਗ ਅਣਭਿਜ ਪਿਛਦਾ ਵੀ ਨਹੀਂ ਕਿਸੇ ਚੀਜ਼ ਨੂੰ। ਕਿਸੇ ਚੀਜ਼ ਇਨਾਂ ਨੇ ਭਜਦਾ। ਜੇ ਕੋਈ ਬਾੜਾ ਫੇਰੀ ਜਾਵੇ ਉਹਨੇ ਉਹ ਫਰਕ ਨਹੀਂ ਪੈਂਦਾ ਵੀ ਇਹ ਵਿਚਾਰਾ ਇਨਾਂ ਚਲਦਾ ਬਾੜਾ ਫੇਰਦਾ। ਚੱਲ ਇਹਨੂੰ ਪਤਾ ਨਹੀਂ ਮੇਰੇ ਰੋਂਦੀਆਂ ਫੇਰਦਾ। ਉਹ ਭਜਦਾ ਨਹੀਂ ਇਹਨਾਂ पे ਪਾਗਲਾ ਕਰਿਆਂ। ਪਾਗਲਾ ਦੀਆਂ ਅਗਲਾ ਨਹੀਂ ਭਜਦਾ ਉਹ। ਅਗਲਾ ਦੀ ਅਗਲਾਂ ਦੇ ਨਹੀਂ ਭੇਦਾ ਹੋ ਇਹ ਕੀ ਕਰਦਾ ਕਿੰਨਾ ਜਾਂਦਾ ਕੋਈ ਪੁੱਠਾ ਲੜਦਾ ਕੋਈ ਕੁਝ ਕਰਦਾ ਮੇਰੇ ਸਦਾਈ ਨੇ ਚੜੀ ਜਾਂਦੂ ਸਦਾਈ ਕਿਸੇ ਦੀ ਗੱਲ ਤੇ ਨਹੀਂ ਭੇਦਾ ਕੀਤੇ ਕੀਤੇ ਗੱਲਾਂ ਤੇ ਭੇਜੇ ਇੱਥੇ ਤਾਂ ਸਦਾਈਆਂ ਦੀ ਦੁਨੀਆ ਭਰੀ ਪਈ ਕਿਹੜੀ ਕਿਹੜੀ ਗੱਲ ਤੇ ਭੇਜੇ ਇਹਦੇ ਕੋ ਅੰਤ ਹੈ ਦਾਗ ਨਹੀਂ ਲੱਗਦਾ ਉਹਨੂੰ ਕੋਈ ਜੇ ਇੱਕ ਨੂੰ ਚੰਗਾ ਸਮਝੇ ਦੂਏ ਨੂੰ ਚੰਗਾ ਨਾ ਸਮਝੇ ਤਾਂ ਲੱਗ ਗਿਆ ਇੱਕ ਤੇ ਗਲਤ ਤੇ ਭੇਜ ਜੂਵੇ ਦੂਏ ਤੇ ਭੇਜੇ ਨਾ ਦੂਆ ਸੋਚੇ ਲਵੇ ਸਾਡਾ ਕੀ ਕਸੂ ਹੁਣ ਆ ਗਲਤ ਕੋਈ ਦੇ ਦਿੰਦੇ ਨੇ ਕਿਸ ਨੂੰ ਸਰੋਪਾ ਵਗੈਰਾ ਲਈ ਦਿੰਦੇ ਕਿਸ ਨੂੰ ਦੇ ਦਿੰਦੇ ਨੇ ਰੋਣਾ ਪੈ ਜਾਂਦਾ ਇਹਦੇ ਸਰੋਪਾ ਫਲਾਣੇ ਨੂੰ ਦਿੱਤਾ ਨਹੀਂ ਇਹ ਦੇ ਦਿੱਤਾ ਫਲਾਣਾ ਹੱਕਦਾਰ ਸੀ ਮੈਡਲ ਦਾ ਉਹ ਦਿੱਤਾ ਨਹੀਂ ਫਲਾਣੇ ਨੂੰ ਦੇ ਦਿੱਤਾ ਰੋਣਾ ਪੈਂਦਾ ਕਿ ਨਹੀਂ ਪੈਂਦਾ ਉਹ ਇਹੋ ਕਮ ਨਹੀਂ ਕਰਦਾ ਜਿੱਥੇ ਰੋਲਾ ਪਵੇ ਸਾਰੇ ਯੋਧੇ ਨੇ ਦਰਾਇਤ ਕਰਦਾ ਹੀ ਨਹੀਂ ਉਹ ਉਹ ਕਹਿੰਦਾ ਠੀਕ ਹੈ ਕੋਈ ਜੀ ਠੀਕ ਨੇ ਪਰਣਾ ਕਰਦਾ ਉਹਨਾਂ ਦੀ ਸਾਰੇ ਜੋ ਕੰਮ ਕਰਨ ਵਾਲਾ ਉਹਨੂੰ ਸਮਝ ਆਏ ਠੀਕ ਕਦੋਂ ਕਰ ਰਹੇ ਹੈ ਜਲਥਲ ਮਹੀਪ ਬਣ ਤਨ ਦੁਰੰਤ ਜਲਥਲ ਮਹੀਪ ਜਲਾਨਾ ਥਲਾਨਾ ਰਾਜਾ ਆਪ ਹੈ ਦੁਨੀਆ ਤਾਂ ਐਵੇਂ ਖਾਮ ਖਾਮ ਪੱਗੇ ਹੈ ਜਿਹੜੇ ਜਲਾਂ-ਥਲਾਂ ਤੇ ਕਬਜ਼ਾ ਕਰਦੇ ਨੂੰ ਨਾ ਉਹ ਤਾਂ ਮਰ 2-4 ਦਿਨ ਦੀ ਸਾਹਿਬੀ ਉਹਨਾਂ ਦੀ ਬਗਲ ਨੇ ਝੂਠੇ ਨੇ ਭਾਈ ਜੀ ਜੇ ਜ਼ੋਰ ਵਾਜ ਜਾਂਦਾ ਕਬਜ਼ਾ ਕਰ ਲੈਂਦਾ ਜਾਂ ਜ਼ੋਰ ਘਟ ਜਾਂਦਾ ਕੋਈ ਹੋਰ ਕਬਜ਼ਾ ਕਰ ਲੈਂਦਾ ਇਹਦਾ ਸੰਸਾਰੀ ਗੱਲਾਂ ਨੇ ਅਸਲ ਮਾਲਕ ਉਹਦਾ ਕੋਈ ਝਗੜਾ ਨਹੀਂ ਕੋਈ ਕਬਜ਼ਾ ਕਰ ਲਮੈਨੇ ਕਦੇ ਹਟਾਇਆ ਨਹੀਂ ਆਖੇ ਵੀ ਤੂੰ ਕਹਿੰਦੇ ਕਹਿੰਦੇ ਮੈਂ ਕਬਜ਼ਾ ਮੇਰਾ ਉਹ ਲਗੜਾ ਹੈਗਾ ਉਹ ਕਾਹਦਾ ਬਾਇ ਦਿੰਦਾ ਹੈ ਕਾਹਦਾ ਹੈ ਕਦੀ ਰਹਿਣੇ ਰਖਵਾਲੀਓ ਕਰਨਾ ਦੇਖੋ ਫ੍ਰੀਜ ਰਖਵਾਲੀ ਕਰੇ ਕਿਸੇ ਦੀ ਸਭ ਕੀ ਦਾਣਾ ਕਰੇ ਫ੍ਰੀਜ ਕੀ ਵਾਲਾ ਜਲਦਲ ਮਹੀਪ ਬਣਤਨ ਦਰੰਤ ਬਣਤਲ ਬਣਉਂਦਾ ਸਾਰੇ ਬਾਣਾ ਪਾਉ ਉਹਨੂੰ ਕਹਿੰਦੇ ਜਿੱਤੇ ਸਾਰਾ ਹੀ ਆ ਜਾਂਦਾ ਉਹ ਚ ਕਾਫੂਸ ਵੀ ਵਿੱਚ ਆ ਜਾਂਦਾ ਸੁਚਿਆ ਸੁਚਿਆ ਸੁਚਿਆ ਜਾਂਦਾ ਬੰਤਨ ਦਰੰਤ ਸਾ ਦੂਰ ਕਿਸੇ ਤੋਂ ਨਹੀਂ ਇਹ ਕੋਈ ਆਸਾਂ ਦੇ ਹਿਰਦੇ ਚਾ ਬਾਤ ਭੂਤ ਲੱਗ ਆਦਮੀ ਤਾਂ ਕਿ ਚ ਰਸੀ ਲਖ ਜੂਂ ਕਿਸੇ ਤੋਂ ਦੂਰ ਨਹੀਂ ਸਭ ਤੇ ਇੱਕੋ ਜਿਹਾ ਨੇੜੇ ਆਓ ਸਾਰੇ ਜਿੰਦਰ ਦੂਰ ਕਿਸੇ ਤੇ ਕਿਸੇ ਨੇੜੇ ਨਹੀਂ ਨਾਕੇ ਦੇ ਦੂਰ ਹੈ ਨਾਕੇ ਤੇ ਨੇੜੇ ਜੇ ਨੇੜੇ ਕੇ ਦੂਰ ਜੇ ਨੇਤ ਨੇਤ 19 ਦਿਨ ਉਚਰੰਤ ਸਾਰੇ ਲੋਕ ਰੋਜ਼ ਇਹ ਕਹਿੰਦੇ ਨੇ ਦੇਤ ਨੇਤ ਬੇਅੰਤ ਬੇਅੰਤ ਕਹਿੰਦੇ ਨੇ ਜਿਹਨੂੰ ਸਾਰੇ ਬੇਅੰਤ ਬੇਅੰਤ ਕਹਿੰਦੇ ਨੇ ਉਹਦੀ ਗੱਲ ਕਰਦੇ ਕਹਿੰਦੇ ਅਸੀਂ ਹੁਣ ਬੇਅੰਤ ਬੇਅੰਤ ਹੀ ਨੂੰ ਨੇ ਦੁਨੀਆ ਉਹ ਇੱਕ ਧਲੇ ਦਾ ਬੁੱਧਾ ਸੀ ਜੀ ਨਾਮਾ ਈਸਾ ਨਾਹ ਹਜ਼ਰਤ ਮਹਬੂਬ ਹੈ ਨਾਹ ਵਿਸ਼ਨੂੰ ਹੈ ਸਾਰੇ ਤੇ ਵਿਸ਼ਨੂੰ ਨੇ ਕਹਨੇ ਨਾਹ ਸ਼ਿਵ ਨਾਹ ਬ੍ਰਹਮਾ ਨਾ ਕੋਈ ਹੋਰ ਉਹ ਦੇਵੀ ਦੇਵਤਾ ਹੈ ਔਰ ਨਾ ਨਾਨਕ ਹੈ ਨਾ ਕੋਈ ਕਬੀਰ ਹੈ ਕੁਝ ਨੂੰ ਦੇਤ ਨੇ ਤੇ ਕਹਿੰਦੇ ਨੇ ਉਹਦੀ ਗੱਲ ਕਰਦੇ ਆ ਕਹਨੇ ਇਹ ਸਭ ਤਾਂ ਜਨਮ ਲੈਣ ਵਾਲਿਆਂ ਨੇ ਇਹਨਾਂ ਦੀ ਨਿਤਨੇਤ ਵਾਲੀ ਕੋਈ ਗੱਲ ਨਹੀਂ ਹੈ ਉੱਡ ਇੱਥੇ ਧੜੇਵਾਜੀ ਹੈ ਧੜੇਜਬਾਜੀ ਵਾਲੇ ਲੋਕ ਆਪਣੇ ਆਪਣੇ ਨੂੰ ਚੰਗਾ ਸਮਝਦੇ ਆ ਉਹਦੇ ਜੋ ਉਹਦੀ ਜਗ੍ਹਾ ਆਪਣੇ ਬੰਦੇ ਨੂੰ ਖੜਾ ਕਰ ਲੈਂਦੇ ਨੇ ਵੀ ਆਹੀ ਆਹੋ ਜੀਦਾ ਸਾਰੀ ਗੱਲ ਆ ਨਾ ਜਿਹਦੇ ਵਿੱਚ ਸਾਰੀ ਗੁਰਬਾਣੀ ਜਿਹਨੂੰ ਕਹਿੰਦੀ ਐ ਇਹ ਨਿਤਨੇਤ ਨਿਤਨੇਤ ਕਰੇਦਾ ਆ ਨਾਨਕੇ ਦੇਤ ਦੇਤਾ ਜੀ ਦੂਆ ਕੋਈ ਕਹਿੰਦਾ ਆ ਫਲਾਣਾ ਨੇ ਉਹ ਕਹਿੰਦੇ ਨਹੀਂ ਜੀ ਰਬਦਾਸ ਨੇ ਤੇ ਤਾਂ ਕਹਿੰਦੇ ਕਬੀਰ ਨੇ ਤੇ ਨਾ ਇਹ ਫੇਰਾਂ ਦੇ ਝਗੜੇ ਪੈਦੇ ਨੇ ਇਹਨਾਂ ਖੰਡਾਂ ਤੇ ਇਹ ਝਗੜਾ ਲੋ ਆਦਮੀ ਨੇ ਸੁੱਤ ਕੋਈ ਨਾ ਕੋਈ ਪੰਪਾ ਖੜਾ ਰੱਖਦੇ ਨੇ ਜੇ ਪੰਪਾ ਖੜਾ ਨਾ ਹੋਵੇ ਪਬਲਿਕ ਨੂੰ ਕਿਵੇਂ ਬਗਰ ਲਾਉਣ ਕਿਵੇਂ ਰੋਟੀਆਂ ਸੇ ਕੜਨ ਇਹਨਾਂ ਰੋਟੀਆਂ ਸੇਕੜੀਆਂ ਹੁੰਦੀਆਂ ਨੇ ਆਪਣੀ ਇਹ ਗੱਲਾਂ ਕਰਕੇ ਅੱਡ ਕੈਟਗਰੀਆਂ ਬਣਾਉਣੀਆਂ ਨੇ ਅੱਡ ਬੰਦਰ ਬਣਾਉਣੇ ਨੇ ਖੜਾਵਾ ਲੈਣ ਬੱਟਾ ਪੌੜੀਆਂ ਦੇ ਇਹ ਇਹਨਾਂ ਦਾ ਦੁਕਾਨਦਾਰੀ ਹੈ ਇਹ ਸੱਚ ਨਹੀਂ ਬੋਲਦੇ ਹੁੰਦੇ ਗੁੰਮਰਾਹ ਇਹ ਗੁੰਮਰਾਹ ਕੋਲ ਪ੍ਰਚਾਰ ਕਰਦੇ ਨੇ ਲੋਕ ਗੁੰਮਰਾਹ ਕੋਲ ਪ੍ਰਚਾਰ ਕਰਕੇ ਕੁਝ ਥੋੜਾ ਬਣਾ ਕੇ ਨਾ ਜਿਵੇਂ ਹੁਣ ਸਪੋਕਸਮੈਨ ਕਰਦਾ ਗੁੰਮਰਾਹ ਕਰਦਾ ਲੋਕ ਕਰੂ ਗੁੰਮਰਾਹ ਕਰਕੇ ਥੜਾ ਬਣਾ ਕੇ ਪਹਿਲਾਂ ਉਹਨੇ ਦੋਧਰ ਯਾਨੀ ਵੀ ਆਪਣਾ ਗੋਬਰਾ ਕਰਕੇ ਇੱਥੇ ਸੀ ਪਿੱਛੇ ਗੋਬਰਾ ਕਰਦੇ ਹੀ ਰਹੇ ਨੇ ਉਦਾਸੀ ਵੀ ਗੋਬਰਾ ਕਰਕੇ ਲੈ ਗਏ ਸੀ ਸਿਖਾਰੂ ਉੜ ਕੋਈ ਨਹੀਂ ਬੋਲਦਾ ਸੇਕ ਉਦਾਸੀਆਂ ਨੂੰ ਗੋਬਰਾ ਕਰਦੇ ਨੇ ਲੋਕ ਤੀਰ ਬੱਲੀਆਂ ਰਾਮ ਰਈਏ ਗੋਬਰਾ ਕਰਦੇ ਸੀ ਕੋਣ ਇਹ ਗੋਬਰਾ ਕਰ ਰਹੇ ਨੇ ਇੱਕ ਧੜਾ ਜਿਹਾ ਬਣਾ ਲੈਂਦੇ ਗੋਬਰਾ ਕਰਕੇ ਅੱਡ ਅਖੰਡ ਕੀਰਤਨੀ ਜਥੇ ਆਏ ਵੀ ਇਹੀ ਸੀ ਘੁਮਰਾ ਕਰਕੇ ਥੜਾ ਬਣਾ ਲਿਆ ਇਹਨਾਂ ਦੇ ਵਿੱਚੋਂ ਕਿੰਨੇ ਬੰਦੇ ਹੋਏ ਨੇ ਇਹਨਾਂ ਨੇ ਇਹਨਾਂ ਦੇ ਵੱਡੇ ਲੁੱਟੇ ਨੇ ਇਹ ਜੋਸ਼ੀ ਸੀ 3 ਕਰੋੜ ਦਾ ਘੁਮਲਾ ਕਰ ਗਿਆ ਇਹ ਘੁਮਰੇ ਵਾਲੇ ਆਦਮੀ ਘੁਮਰਾ ਕਰਦੇ ਹੁੰਦੇ ਸੀ ਸਪੋਕਸਮੈਨ ਨੂੰ ਵੀ ਆਪਣਾ ਥੜਾ ਜਿਹਾ ਬਣਾ ਕੇ ਅਖਬਾਰ ਚਲਾ ਲਾਵੇਂ ਪੈਸੇ ਨਾਲ ਤਾਂ ਇਕੱਠੇ ਕਰੀ ਜਾ ਇਹ ਘੁਮਰਾ ਕਰਨ ਵਾਸਤੇ ਇਹਨਾਂ ਦੀ ਆਪਣੀ ਰੋਜ਼ੀ ਰੋਟੀ ਦਾ ਸਵਾਲ ਹੁੰਦਾ ਕੋਈ ਪਰਸਨੈਲਿਟੀ ਰੈਸਟ ਹੁੰਦਾ ਨਾ ਨਾ ਗੁਰਮੱਧੇ ਪ੍ਰਚਾਰ ਦੀ ਗੱਲ ਨਹੀਂ ਹੁੰਦੀ ਹੈ ਆਪਣਾ ਇੰਟਰਸਟ ਉਹਦਾ ਕੋਈ ਵਿਰੋਧ ਉਹਦੇ ਵਾਸਤੇ ਕਰਦੇ ਨੇ ਹੋਰ ਵੀ ਗੱਲਾਂ ਹੈ ਨੇ ਕਈ ਸਾਧ ਸੰਤ ਵੀ ਕਰਦੇ ਨੇ ਅਗੋਰ ਇਕਬਾਲ ਸਿੰਘ ਵੀ ਇਹੀ ਕਰਦਾ ਹੈ ਜਦੋਂ हटके ਗੱਲ ਕਰਦੇ ਨੇ ਗੁਰਬਾਣੀ ਤੋਂ ਇਹ हटके ਕਰਦੇ ਨੇ ਗੁਰਬਾਣਾ ਕੋਈ ਗੱਲ ਕਰਦੇ ਨੇ ਠੀਕ ਗੁਰਬਾਣੀ ਦਾ ਪ੍ਰਚਾਰ ਦਾ ਸਪੋਕਸਮੈਨ ਵੀ ਨਹੀਂ ਕਰਦੇ ਕੋਈ ਵੀ ਨਹੀਂ ਕਰਦੇ ਕਿ ਜਿਆ ਤੱਕ ਚਲੋ ਇਹ ਤਾਂ ਕਰਦੇ ਗੁਰਦੁਆਰੇ ਵਾਲੇ ਪਰ ਇਹ ਤਾਂ ਕੁਝ ਵੀ ਨਹੀਂ ਕਰ ਰਹੇ ਇਹ ਤਾਂ ਸਿਰਫ ਕਰਨ ਤੇ ਹੋਇਆ ਹੋਇਆ ਹੈ ਕਰਨਾਮ ਕਰਨ ਤੇ ਹੋਇਆ ਹੋਇਆ ਹੋਰ ਸਹੀ ਗੱਲ ਦੱਸਣ ਤੇ ਨਹੀਂ ਹੈ ਵੀ ਸਹੀ ਕੀ ਹੈ ਸ਼ੰਕਾ ਕਰਨ ਬੇਵਿਆ ਵੀ ਗੱਲ ਸ਼ੰਕਾ ਲਿਆ ਵੀ ਸ਼ਕਾ ਲਿਆ ਉਹ ਵੀ ਸ਼ਕਾ ਲਿਆ ਘੁਮਰਾ ਕਰਨ ਵਾਲੀ ਗੱਲ ਹੋਰ ਕੀ ਇਹ ਘੁਮਰਾ ਕੌਣ ਕਰਨ ਪਾਇਓ ਨਾ ਜਾਏ ਜਿਹੜਾ ਪੈਰ ਪਾਰ ਜਿਹਦਾ ਜਿਹਦਾ ਅਸੀਂ ਪਾਰ ਨਹੀਂ ਪਾ ਵਾਰ ਪਾਰ ਨਹੀਂ ਪਾ ਸਕਦੇ ਆਏ ਨਾ ਜਾਈ ਜਿਹੇ ਪੈਰ ਪਾਰ ਅਸਲ ਦੇ ਵਿੱਚ ਪੈਰ ਤਾਂ ਤੈਰ ਨੂੰ ਵੀ ਪੈਰ ਕਹਿੰਦੇ ਤੁਹਾਨੂੰ ਨੂੰ ਤੈਰ ਕੇ ਭਾਵੇਂ ਸਾਗਰ ਹੈ ਨਾ ਕਿਸੇ ਤਰੀਕੇ ਨਾਲ ਨੂੰ ਪਾਰ ਨਹੀਂ ਪਾ ਸਕਦੇ ਅਸੀਂ ਤੈਰ ਕੇ ਤਰ ਕੇ ਪਾਣੀ ਹੋ ਜਾਵੇ ਤੇ ਭੱਬਸਾ ਫਦਲ ਤੇ ਆਪਣੀ ਜੱਤੜ ਨਾਲ ਕੋਈ ਪਾਰ ਨਹੀਂ ਹੋ ਸਕਦਾ। ਦਰਮੀਆਂ ਗੱਲ ਕਹੀ ਹੋਈ ਹੈ ਨਾ ਜਿਵੇਂ ਸਮੁੰਦਰ ਨੂੰ ਤਰ ਕੇ ਕੋਈ ਪਾਰ ਹੋ ਜਵੇ। ਹੂੰ ਦੋਖ ਦਾਤਾ ਉਦਾਰ। ਦੀਨਾਨ ਦੋਖ ਦਾਤਾ ਉਦਾਰ। ਦੀਨਾਨ ਜਿਹੜੇ ਦੀਰ ਦੇ ਲੋ ਦੀਨਾਨ ਉਹ ਵਚਨ ਦੀਨਾਨ ਇਹਨਾਂ ਦੇ ਧੋਖਾ ਨੂੰ ਦਹਿਨ ਕਰਨ ਵਾਲੇ ਸਾਡਲ ਵਾਲੇ ਇਹਨਾਂ ਦੀਆਂ ਕਮੀਆਂ ਨੂੰ ਸਾਡਲ ਦੋਖੋ ਦੀਆਂ ਕਮੀਆਂ ਜਿਹੜੇ ਢਹਿ ਢੇਰੀ ਹੋ ਜਾਂਦੇ ਨੇ ਤੇਰੇ ਦਵਾਰੇ ਤੇ ਆ ਨਾਨਕ ਕਹਿੰਦਾ ਗਰੀਬ ਮੈਂ ਹੈਗਾ ਉਹਦੇ ਦਵਾਰੇ ਤੇ ਟੈ ਪਿਆ ਇਹ ਕਹਿੰਦਾ ਨਾਨਕ ਗੁਰੂ ਹੈ ਜਿਹੜੇ ਨਾਨਕ ਗੁਰੂ ਕਹਿੰਦਾ ਨਾ ਗੁਰੂਆ ਉਹਨਾਂ ਦੀ ਮੱਤ ਮਾਰੀ ਹੋਈ ਜਾ ਉਹਨਾਂ ਨੇ ਆਪਣੇ ਦੇਖਣ ਚ ਉਧਰ ਝਾਕ ਕੇ ਅੰਦਰ ਜਾ ਕੇ ਦੇਖਣਾ ਵੀ ਗੁਰਬਾਣੀ ਦੀ ਤੁਹਾਨੂੰ ਕਿਉਂ ਨਹੀਂ ਸਮਝ ਆਈ ਤੁਹਾਡੇ ਦੇ ਕਿੰਨੀਆਂ ਕਬੀਰ ਨੇ ਕਿੰਨੀਆਂ ਗਿਆਨਤਾ ਤੁਹਾਡੇ ਅੰਦਰ ਅਰੇ ਬਣੀ ਰਹੂਗੀ ਇਹ ਗਿਆਨਤਾ ਜਿੰਨਾ ਚਿਰ ਗੁਰਬਾਣੀ ਦੀ ਨਹੀਂ ਸਹੀ ਅਰਥਾਂ ਨੂੰ ਸਹੀ ਹੈ ਨਾ ਨਹੀਂ ਆਉਂਦੇ ਪਤਾ ਦੱਸ ਦੋ ਤਾਂ ਨਹੀਂ ਬਿਲਦੇ ਹੋ ਨਾ ਮੰਨੋ ਗੁਰਬਾਣੀ ਜੇ ਤੁਸੀਂ ਸੰਤ ਕਿਦੂ ਰਹੂਗਾ ਪਰਮਤਉ ਨਾਲ ਜਾਉਂਦਾ ਤੂੰ ਬਣਿਆ ਰਹੂਗਾ ਪਰਮ ਨਹੀਂ ਜਾਣਾ ਹੈ ਵਿੱਚ ਦੇ ਨਾਲ ਦੋਖ ਦਹਿਤਾ ਦੋਖ ਦਹਿਤਾ ਦੀਨ ਤੋਂ ਮੈਨਾਂ ਦੋਖ ਦਹਿ ਨਹੀਂ ਹੁਣ ਉਹਨਾਂ ਨੇ ਪਰਮੇਸ਼ਰ ਦੇ ਅੱਗੇ ਦੀਨ ਦੇ ਉਹਨਾਂ ਨੇ ਨਾਨਕ ਅੱਗੇ ਨਾਨਕ ਦੇ ਦੋਖ ਦਹਿ ਕਰਨੇ ਦੀ ਨਾਂ ਕਰ ਨਹੀਂ ਸਕਦਾ ਉਹਨਾਂ ਨੇ ਪਰਮੇਸ਼ਰ ਦੀ ਜਗ੍ਹਾ ਨਾਨਕ ਬਣ ਲਿਆ ਨਾਨਕ ਕੋ ਸਵਰਥ ਹੈ ਨਾਨਕ ਤਾਂ ਕੁਭ ਕਰ ਨਹੀਂ ਸਕਦਾ ਨਾਨਕ ਨੇ ਜਾ ਕੇ ਫਲਾੜੀ ਦੁਕਾਨ ਤੇ ਜਾਇਓ ਉਹ ਵੇਠੇ ਨਾਨਕ ਦੇ ਕੋਲੇ ਤੋਹੀ ਕਰਦੇ ਕੰਮ ਦਾ ਸਰੇ ਚੜਣਾ ਨਹੀਂ ਉਹਨਾਂ ਦਾ ساری ਉਮਰੇ ਨਹੀਂ ਚੜਣਾ ਕਈ ਹਜ਼ਾਰਾਂ ਜਲਬ ਲੈ ਲੋ ਤਾਂ ਵੀ ਛੱਡੂ ਉਹ ਕਹਿੰਦੇ ਫਲਾੜੀ ਦੁਕਾਨ ਤੇ ਜਾਓ ਉੱਥੇ ਸੌਦਾ ਮਿਲਦਾ ਕੋ ਕਹਿੰਦੇ ਤੂੰ ਹੀ ਦੇ ਦੇ ਤਾਂ ਗੱਲ ਹੋਈ ਹੋਈ ਉਹ ਤਾਂ ਸਾਰਾ ਕੁਝ ਪਰਮੇਸ਼ਰ ਦੇ ਆਪਣੇ ਹੱਥ 'ਚ ਕਰਤੇ ਹੱਥ ਵੜਿਆਈਆਂ ਜੇ ਭਾਵੇਂ ਸਭਨਾਂ ਦਾ ਹਾਲ ਦਾ ਅਸੀਸ ਸਿਧਾਂਤ ਠਾਕੁਰ ਕਲਤਾਲ ਧਰਿਆ ਜਗਾ ਜਗਾ ਤੱਕਿਆ ਹੈ ਸਭਨਾਂ ਦਾ ਸਾਰੇ ਖਜ਼ਾਨੇ ਮਾਇਆ ਦੇ ਨਾਮ ਦਾ ਨਾਮ ਧਰਿਆ ਠਾਕੁਰ ਦੇ ਹੱਥ ਦੀ ਗੁੱਠੀ ਚ ਲੈ ਥੇੜੀ ਦੇ ਉੱਤੇ ਨਾ ਤਾਂ ਦੇ ਕਾਪੂ ਚ ਜਨ ਨਾਨਕ ਬਲਵਲ ਸੱਜ ਬਲ ਜਾਈਏ ਤੇਰਾ ਉਤਨਾ ਬਰਾਬਰ ਗੁਰਬਾਣੀ ਕੀ ਕਹਿ ਰਹੀ ਹੈ ਕੀ ਕਹਿ ਰਹੀ ਹੈ ਬੱਤ ਮਾਰੀ ਹੋਈ ਹੈ ਫਿਰ ਹੋਰ ਕੀ ਹੈ ਦੀਨਾਨ ਦੋਗ ਦਹਿਤਾ ਉਦਾਰ ਉਦਾਰ ਹੈ ਉਦਾਰ ਹੈ ਇਹ ਰੀਗਾ ਵੀ ਦੋ ਇਹਦੇ ਜਿਆਦਾ ਨਹੀਂ ਵੀ ਨੁਕਸਾਨ ਲਾਇਆ ਜਿਹਨੇ ਵਰਗੀ ਬੜਾ ਬੜੇ ਚ ਬੋਲਣ ਕਹਿੰਦਾ ਲਾਇਆ ਸਭ ਕੱਢ ਦਾਂਗੇ ਲੈ ਤੂੰ ਜੈ ਜੈ ਵੀ ਹੈਗੇ ਕੋਈ ਕੋਟ ਇੰਦਰ ਜੈ ਪਾਣੀ ਹਾਰ ਕੋਈ ਕਰੋੜ ਇੰਦਰ ਜਿਹਦਾ ਪਾਣੀ ਢੋਹਦੇ ਨੇ ਉਹ ਇਹ ਨਾਲ ਦਾ ਇੱਧਰ ਇੱਕ ਆ ਵਿਚਾਰਿਆ ਨਾ ਜਿਹੜਾ ਹਿੰਦੁਸਤਾਨ 'ਚ ਵੀ ਬਹਾਉਂਦਾ ਚੀਰ ਚ ਨਹੀਂ ਬਹਾਉਂਦਾ ਚੀਰ ਵਾਲਿਆਂ ਨੂੰ ਹੈ ਨਾ ਲਗੜਾਟ ਹੈ ਚੀਰ ਵਾਲੇ ਬੋਧ ਹੀ ਰਹਣ ਉੱਥੇ ਕਾਹਦੇ ਪਾਵੇ ਨਾਲ ਅੰਦਰ ਵੀ ਉਹ ਤਾਂ ਮੰਦੇ ਨਹੀਂ ਉਹਨਾਂ ਦੇ ਅੰਦਰ ਦੇਵ ਦਾ ਪੰਜਾਬ ਹੈ ਵਟ ਵਟ ਇੱਧਰ ਦੇ ਦਾ ਇਹੋ ਤੁਰਿਆ ਫਿਰਦਾ ਬਾਹਰ ਦੇ ਰਾਜਾ ਨੂੰ ਇੱਧਰ ਕਹਿੰਦੇ ਨੇ ਇਹ ਬਿਸ਼ਨੂ ਇਹ ਸ਼ੇਵੋ ਇੱਧਰ ਜੀ ਜਾਣੇ ਪਹਾੜ ਚ ਰਹਣਾ ਹੈ ਫੇਰ ਥੱਲੇ ਜ਼ਰੂਰੀ ਇਧਰ ਪੂਰੇ ਥੱਲੇ ਹੁੰਦੀ ਹੈ ਕੁਝ ਮੈਦਾਨ ਚ ਉਦੋਂ ਉੱਪਰ ਸ਼ੇ ਬਿਸ਼ਨੂਪੁਰ ਹੁੰਦੀ ਹੈ ਉਦੋਂ ਉੱਪਰ ਸ਼ੇਪੁਰ ਹੀ ਦਾ ਜਿਹੜੀ ਉਹ ਤੇ ਬਰਫ ਚ ਬਰਫ ਚ ਬੇਸ਼ਰਪੁਰੀ ਉਹਦਾ ਥੋੜੀ ਥੱਲੇ ਆ। ਇਹ ਆ ਨਾ ਤੇ। ਕਈ ਕੋਟ ਇੰਦਰ ਜੈ ਪਾਣੀ ਹਾਰ। ਕਈ ਕੋਲ ਕਰੋੜਾ ਇੰਦਰ ਨਾ ਬਦਲ ਲੈ ਇੰਦਰ ਬਦਲੂਗਾ ਇਹਦੇ ਨੇ ਪਾਣੀ ਹਾਰ। ਆ ਇਧਰ ਰਾਜੇ ਰਹੇ ਜਿਹੜੇ ਸੰਸਾਰ ਦੇ। ਕਹਿੰਦੇ ਤੇਰਾ ਪਾਣੀ ਭਰਦੇ ਨੇ। ਪਬਲਿਕ ਦੀ ਸੇਵਾ ਕਰਦੇ ਨੇ ਔਰ ਕੀ ਹੈ ਰਾਜੇ ਪਬਲਿਕ ਦੀ ਪਾਲ ਕਰਦੇ ਹੁੰਦੇ ਨੇ। ਜੇ ਪਬਲਿਕ ਨੂੰ ਪਾਲਦੇ ਨੇ ਰਾਜੇ ਪਾਣੀ ਹਾਰੇ ਨੇ। ਦੇਵਕੰਨਾਈ ਵਾਲਾ ਰਾਜਾ ਵੇ ਬਬਲਕ ਦੀ ਪਾਲਣਾ ਥੋੜੀ ਬੁੱਧ ਕਰਨੀਆਂ ਪੈਂਦੀਆਂ ਚਾਹੇ ਉਹ ਆਪਣੇ ਧੜੇ ਦੇ ਜਾਂ ਦਿਓ ਸਮਝਦੇ ਕਰਦਾ ਤਾਹੋ ਨਾ ਕਈ ਕੋਟ ਰੁੱਦਰ ਕਈ ਕਰੋੜ ਕਹਿੰਦੇ ਆ ਜਿਹੜੇ ਨੇ ਜੋਗੀ ਨੇ ਆ ਜਿਹੜੇ ਸ਼ਿਵ ਨੇ ਸ਼ਿਵਜੀ ਜੁਗਿਆ ਦਵਾਰ ਜੋਗੀ ਤੇਰੇ ਦਵਾਰੇ ਤੇ ਹੋ ਤਪੱਸਿਆ ਕਰਦੇ ਨੇ ਵਿਚਾਰੇ ਸਮਾਧੀ ਲਈ ਉਹ ਵੀ ਖੜੇ ਨੇ ਤੇਰੀ ਆਸ ਤੇ ਹੀ ਇਹ ਗੁੰਦਵਾਰਾ ਖੋਲੂਗਾ ਮੈਂ ਅੰਦਰ ਜਾਊਗਾ ਸੰਸਾਰ ਤਾਂ ਛੱਡੀ ਬੈਠੇ ਦੇ ਲੋ ਜਿਹੜਾ ਆਦਮੀ ਸੰਸਾਰ ਛੱਡੀ ਬੈਠਾ ਉਹਦੇ ਦਵਾਰੇ ਤੇ ਗਿਆ ਬੁਲਿਆ ਜਿਹੜਾ ਸੰਸਾਰ ਇਹਨੂੰ ਲਿਖਿਆ ਪਾਣੀ ਹਾਰ ਵਾਲੇ ਨੂੰ ਦਵਾਰ ਨਹੀਂ ਲਿਖਿਆ ਹੋਇਆ ਕਈ ਕੋਟ ਅੰਦਰ ਪਾਣੀ ਹਾਰ ਪਾਣੀ ਹਾਰ ਤਾਂ ਕਿਤੇ ਦੂਰ ਵੀ ਪਾਣੀ ਪਲਾ ਸਕਦਾ ਹੈ ਯਾਕੇ ਕਈ ਕੋਟ ਰੁੱਧਰ ਚੁਗੀਆ ਦਵਾਰ ਹਾਂ ਦਵਾਰ ਸਿਰਫ ਜੋਗੀ ਜੋਗੀ ਨੇ ਇੱਧਰ ਨਹੀਂ ਦਵਾਰ ਤੇ ਦਵਾਰ ਤੇ ਪਾਣੀ ਕਿਹਨੂੰ ਪਲਾਉਣ ਪਾਣੀ ਪ੍ਰਾਪਤ ਉਹਦੇ ਖੇਤਾਂ ਜਾ ਕੇ ਜਿੱਥੋਂ ਦਾ ਕਾਰੋਬਾਰ ਚੱਲਦਾ ਪਾਣੀ ਉਹਦੀ ਲੇਬਰ ਨੂੰ ਪਰਾਉੜਦੇ ਜਾ ਕੇ ਜਿੱਥੇ ਲੱਗੀ ਹੋਈ ਹੈ ਪਾਣੀ ਉਹ ਨੂੰ ਪਰਾਉੜਦੇ ਪਾਣੀ ਦਾ ਬੱਧਾ ਨੂੰ ਪਰਾਉੜਦੇ ਜਾ ਕੇ ਉਹ ਜੋਗਿਆਂ ਨੇ ਕੰਮ ਛੱਡਿਆ ਆ ਉਹਦੇ ਦੁਆਰ ਦੇ ਖੜੇ ਨੂੰ ਵੀ ਦਰਵਾਜ਼ਾ ਖੋਲਤਾ ਉੱਤਰ ਬੜੀਏ ਇਸ ਗੱਲ ਚ ਵੀ ਭੇਜਦਾ ਜੁਗੇ ਨੂੰ ਦੁਆਰ ਲੱਗਿਆ ਨੂੰ ਪਾਣੀ ਹਾਲ ਲੱਗਿਆ ਪਾਣੀ ਯਾਰ ਹੜਦੀ ਪੜਾਈ ਹੁੰਦੀ ਹੈ ਪਾਣੀ ਯਾਰ ਵਿਚਾਰੇ ਜਿੱਥੇ ਬੈਠਾ ਹੁੰਦਾ ਉੱਥੇ ਜਾ ਕੇ ਪਾਣੀ ਭਰਉਂਦੇ ਨੇ ਜਿੱਥੇ ਆਦਮੀ ਵੱਡਦਾ ਹੈ ਉੱਥੇ ਜਾ ਕੇ ਉਹਦੇ ਕੋਲ ਉੱਥੇ ਜਾ ਕੇ ਪਾਣੀ ਭਰਉਂਦੇ ਨੇ ਤਾਂ ਇਹਦਾਂ ਲੋੜ ਹੈ ਜੇ ਪਾਣੀ ਵਾਲੇ ਨੇ ਉੱਠ ਕੇ ਜਾਣਾ ਵੇ ਤੈਨੂੰ ਪਾਣੀ ਹਰਦੀ ਕੀ ਲੋੜ ਹੈ ਉਹਨੂੰ ਆਵੇਂ ਮਿਲੂ ਨਲਕਾ ਖਿੜ ਕੇ ਹੋ ਇਹ ਕੁਝੋ ਕੱਢ ਕੇ ਜਿਵੇਂ ਵੀ ਯੂਟਿਊਬਰ ਤੇ ਜਾ ਕੇ ਪੀਓ ਆਪ ਤੂੰ ਪਾਣੀ ਯਾਰ ਖਾਦਾ ਹੋਇਆ ਪਾਣੀ ਯਾਰ ਹੈ ਜਿੱਥੇ ਉਹ ਬੈਠਾ ਉੱਥੇ ਦੇ ਜਾ ਕੇ ਬਾਰਸ਼ ਹੋਤੀ ਬੰਦੀਆਂ ਨੇ ਇੱਥੇ ਬੈਠਾ ਹੁੰਦਾ ਕੋਈ ਹਾਂਜੀ ਇਹ ਦਰਖਤ ਨੇ ਇਹ ਦਰਖਤ ਤੇ ਬੈਠੇ ਨੇ ਪਾਣੀ ਆਲ ਵੀ ਪੈਦਾ ਜਾਂਦਾ ਉਹ ਪਾਣੀ ਉਹਨਰ ਉੱਥੇ ਮਿਲਦਾ ਵਿਚਾਰਿਆਂ ਨੂੰ ਇਹ ਦਰਖਤਾਂ ਦੀ ਸੈਂਸ ਦੀ ਗੱਲ ਹੈ ਉਹਦਾ ਹਿਲਦਾ ਨਹੀਂ ਉਹ ਦੂਜੇ ਜਾਨਵਰ ਤਾਂ ਤੁਰ ਫਿਰ ਕੇ ਪੀ ਲੈਣ ਤੇ ਜਾ ਕੇ ਇਹ ਦਰਖਤ ਕਮੇ ਪੀਣ ਫਸਲ ਕਮੇ ਪੀਵੇ ਫਸਲ ਬਾਰੂ ਬਰਾਨੀ ਵੀ ਤਾਂ ਆਉਂਦੀ ਹੈ ਫਸਲ ਆਪਣੀ ਫਸਲੋਂ ਬਰਾਨੀ ਦੀ ਬੀਜ ਵਰਾਨੀ ਬਦਲਦਾ ਪਰਮੇਸ਼ਰ ਦੇ ਫਿਰ ਉਹਦੇ ਆਸਤੇ ਖੜੀ ਆ ਰਹੀ ਐ ਨਹੀਂ ਸੁੱਕ ਜੂਗੀ ਕਾਫੂਸ ਐ ਸੈਂਸ ਵਿੱਚ ਕਰੀਆ ਉੱਥੇ ਵੀ ਜੀਵਣਾ ਆਤਮਾ ਸਾਰੇ ਆਤਮਾ ਕਿਤੇ ਆਦਮੀ ਦੀ ਹੋਈ ਐ ਉਹ ਉਹਨਾਂ ਨੂੰ ਕਹਣ ਦੋ ਉਹਨਾਂ ਨੂੰ ਵੀ ਤਾਂ ਹੋ ਹੀ ਜਾਂਦਾ ਵਾਸਤੇ ਰੱਖਿਆ ਹੈ ਇੱਧਰ ਅਸੀਂ ਤਾਂ ਪੀ ਲੈਨੇ ਆਪੇ ਜਾ ਕੇ ਇੱਧਰ ਤਾਂ ਉਹਨਾਂ ਵਾਸਤੇ ਰੱਖਿਆ ਹੈ ਦੇਖੋ ਕਿੰਨੇ ਨੇ ਹੁਣ ਉਹਨਾਂ ਨੂੰ ਪਾਣੀ ਕੌਣ ਦੇਵੇ? ਅਟਲ ਆਹਾਂ ਚ ਖੜੇ ਨੇ ਇਦ ਰਖਤ। ਪਹਾੜ ਦੀਨ ਚ। ਤੈਸੋ ਪਾਣੀ ਉੱਥੇ ਪਾਣੀ ਦੇਵੇ। ਉਹਨਾਂ ਨੂੰ ਪਾਣੀ ਕੌਣ ਦੇਵੇ? ਇਹ ਉਹਦੀ ਜਾਨ ਦੀ ਰੱਖਿਆ ਕੌਣ ਕਰੇ? ਤੇ ਆਜੇ ਦੱਬ ਹੋਰ ਕੰਨਾ ਕੋਈ ਖੜਾ ਹੈ। ਬੱਬੜ। ਕਾਬੂਸ ਖੜਾਇਆ ਰ। ਉਹਨਾਂ ਨੂੰ ਪਾਣੀ ਕੌਣ ਦੇਵੇ? ਉਹ ਇੰਦਾ ਰੱਖਿਆ ਇਹਨੇ ਫਿਰ ਕਈ ਕੋਟ। ਇਹ ਜਿੱਥੇ ਜਿੱਥੇ ਵਰਖਾ ਕਰੋ ਜਾ ਕੇ ਪਾਣੀ ਦੋ ਉਹਨੂੰ। ਕਿਆ ਸਰੇ ਕਈ ਭੇਦ ਵਿਆਸ ਬ੍ਰਹਮਾ ਅਨੰਤ ਕਈ ਭੇਦ ਵਿਆਸ ਬ੍ਰਮਾ ਦਾ ਨਰ ਤੇ ਬ੍ਰਮਾ ਦਾ ਕੰਪਿਊਟਰ ਵੀ ਨਹੀਂ ਚੱਗਦਾ ਕਿੰਨਾ ਨਾ ਕੰਪਿਊਟਰ ਛੱਡ ਗਿਆ ਕੰਮ ਵੀ ਪ੍ਰਮੋਕ ਕਿੰਨਾ ਲਗਣਤੀ ਅਨੰਤ ਹੈ ਕਹਤਾ ਦਿਮਾਗ ਵੀ ਕੰਪਿਊਟਰ ਹੈ ਉਹ ਦਿਮਾਗ ਨੂੰ ਦੇ ਕੰਪਿਊਟਰ ਬੁੜੇ ਕਾਲੇ ਨਹੀਂ ਦੱਸਦਾ ਹੁਣ ਚੱਕਦਾ ਨਹੀਂ ਆ ਜੀ ਵੀ ਕਿਹਨੇ ਗਿਣਤੀ ਨਹੀਂ ਦੱਸਦਾ ਹੈਗਾ ਅੰਕੜੇ ਜਿਆਦਾ ਨਹੀਂ ਇਹਦੇ ਕੋ ਕੋਪੈਸਤੀ ਘਟਦਾ ਹੈ ਇਹਦੀ ਕੋਪੈਸਤੀ ਘਟਦਾ ਹੈ ਅੰਕੜੇ ਨੇ ਬ੍ਰਹਮਾ ਵੀ ਅਨੰਤ ਨੇ ਜਹ ਨੇਤ ਨੇਤ ਇਸ ਦਿਨੋ ਅਚਰੰਤ ਉਹ ਕੀ ਕਰਦਾ ਨੇ ਲਗਾਤਾਰ ਰੋਜ ਉਹ ਬੇਅੰਤ ਬੇਅੰਤ ਕਹੀ ਜਾਂਦੇ ਨੇ ਬਿਹਾਨ ਦੇ ਬੰਦ ਕੜਲੇ ਬਾਲੇ ਜਿਹੜੇ ਪ੍ਰਭੂ ਨੇ ਉਹ ਕਿੰਨੇ ਨੇ ਅਸੀਂ ਦੱਸ ਨਹੀਂ ਸਕਦੇ ਉਹਨਾਂ ਦੀ ਗਿਣਤੀ ਅਨੰਤ ਰਹੀ ਤਉ ਪ੍ਰਸਾਦ ਕੀ ਪ੍ਰਤਪਾਲ ਕਰੈ ਨਿਤ ਸੰਤ ਉਵਾਰ ਗਣੀਮਨ ਕਰੈ ਦੇਖੋ ਦਿਨਨ ਕੀ ਪ੍ਰਤਪਾਲ ਕਰੈ ਨਿਤ ਜਿਹੜੇ ਉਹਦੇ ਅੱਗੇ ਸਰੈਂਡਰ ਹੋ ਜਾਂਦੇ ਨੇ ਲੋ ਉਹਨਾਂ ਦੀ ਬਹਿਤ ਉਹਨਾਂ ਦੀ ਪ੍ਰਤਪਾਲ ਕਰਦਾ ਪ੍ਰਤਪਾਲ ਤਾਂ ਸਾਰਿਆਂ ਦੀ ਉਹਨਾਂ ਦੀ ਹੋਰ ਤਰ੍ਹਾਂ ਦੀ ਪ੍ਰਤਪਾਲ ਕਰਦਾ ਆਤਮਾ ਦੇ ਲੈਵਲ ਦੀ ਪ੍ਰਤਪਾਲ। ਵਾਕੀ ਸੀ ਲੈਵਲ ਦੀ ਕਰਦਾ। ਪ੍ਰਤਪਾਲ ਕਰੇ ਦਿੱਤ ਸਤੋ ਆਰ ਖਢੀ ਬਲੂਗਾ। ਸੁੰਤਾਰੂ ਹੋਰਤਾ ਚੱਕੀ ਜਾਂਦਾ। ਜਿਹੜੇ ਸੁੰਤ ਨੇ ਹਰਕੇ ਸੁੰਤ। ਉਹਨਾਂ ਦੀ ਬੁੱਧੀ ਦਾ ਲੈਵਲ ਉੱਚਾ ਚੱਕੀ ਜਾਂਦਾ। ਸੰਤ ਉਵਾਰ। ਮਾਇਆ ਤੋਂ ਬਾਹਰ ਖਢੀ ਜਾਂਦਾ ਲੋੜ। ਮਾਇਆ ਛੱਡੀ ਜਾਂਦੇ ਨੇ, ਉਹ ਛੱਡੀ ਜਾਂਦੇ ਨੇ ਮਾਇਆ ਦਾ। ਗਣੀ ਮਨ ਵਧੀ ਜਾਂਦਾ। ਉਹ ਜਿਹੜੇ ਬਾਇਆ ਨੂੰ ਜਫੀਰ ਬੋਲਦੇ ਨੇ ਰਾ ਚਾਹੁੰਦੇ ਨੇ ਇਹ ਗਣੀ ਬੰਦੇ ਖੋਖਵਾਇ ਕਿ ਲੱਗੇ ਹੋਏ ਨੇ ਇੱਕ ਦੂਏ ਦੀ ਚ ਬਾਇਆ ਦੀ ਦੌੜ ਕਰਨ ਇਹ ਗਣੀ ਬੰਦੇ ਦੀ ਇਹਨਾਂ ਦਾ ਜਬਰ ਬਲ ਚ ਇਹਨਾਂ ਦੀ ਬੁੱਧੀ ਗਾਲੀ ਜਾਂਦੇ ਘਾਰਾਂ ਕੀ ਬੁੱਧੀ ਦਾ ਨਾਸ ਕਰੀ ਜਾਂਦੇ ਨੇ ਝਗੜੇ ਕਰਦੇ ਨੇ ਲੋਕ ਨਾ ਅ ਦੂਏ ਚਾਹੇ ਚਾਹੇ ਹੈ ਝਗੜਾ ਗਿਆਨ ਦਾ ਵੀ ਝਗੜਾ ਹੈ ਬੁੱਧੀ ਬਦਸੰਖੋਜੀ ਉਪਜਾਂ ਸੰਤ ਖੋਜੀ ਹੈ ਵਿਦਵਾਨਵਾਦ ਵੀ ਬੁੱਧੀ ਹੈ ਉਹ ਬੁੱਧੀ ਦਾ ਨਾਸ ਕਰਦਾ ਜਿਹੜਾ ਰਾਜਾ ਰਾਜਵਾਦ ਹੈ ਉਹ శ్రీ ਰਵੀਦਾਸ ਕਰਦਾ ਬੁੱਧੀ ਦਾ ਵੀ ਕਰਦਾ ਸਭ ਕਹਦਾ ਸਰਦ ਕਿਸੇ ਦੀ ਅੱਖ ਜਲੀ ਜਾਂਦੀ ਹੈ ਕਿਸੇ ਦਾ ਹੱਥ ਕੱਲੇ ਜਾਂਦਾ ਕਿਸੇ ਦੀ ਲੜਾਈ ਚ ਗਰੀਵਨ ਗਰ ਪਛ ਪਸ਼ੂ ਨਗ ਨਾਗ ਨਰਾਦ ਗਰੀਵਨ ਨੂੰ ਨਹੀਂ ਵਿਚਾਲਦਾ ਉਹ ਕਹਿੰਦਾ ਤੁਸੀਂ ਜੇ ਸਕਤਾ ਸਕਤੇ ਕੋ ਮਾਰਾ ਤਾ ਮਨ ਸੁਣੋ ਸੁਣੋ ਗਰੀਵਨ ਲੜਦੇ ਨੇ ਲੜੀ ਨਹੀਂ ਇਸ ਗੱਲ ਦਾ ਕਿਸੇ ਦਾ ਤਰਸ ਨਹੀਂ ਆ ਉਹਨੂੰ ਕਿਸੇ ਦੀ ਪੱਖ ਨਹੀਂ ਲੈਂਦਾ ਕਹਿੰਦਾ ਕੋਈ ਨਹੀਂ ਫੈਸਲਾ ਪੁਲਿਸ ਵੀ ਖੜ ਕੇ ਦੇਖਣ ਆ ਜਾਂਦੀ ਹੈ ਜੇ ਦੋਹੇ ਤਰਫ ਭਟ ਜਾਣ ਪੁਲਿਸ ਪਰੇ ਹੋ ਜਾਂਦੀ ਹੈ ਉਹਨਾਂ ਨੂੰ ਕਿਹਾ ਵੀ ਮੋਰਖਾਂ ਦੇ ਵਿੱਚ ਨਹੀਂ ਆਈਦਾ ਤੁਹਾਡੇ ਲੱਗ ਜੂ ਇਹਨਾਂ ਨੂੰ ਲਾਲਾਂ ਨੂੰ ਚਾਹ ਤੂੰ ਸੀ ਤਾਂ ਬਚਾਉਣੇ ਗਏ ਆ ਉਹਨਾਂ ਨੂੰ ਵੀ ਨਾ ਲੜੋ ਇਹ ਤਾਂ ਹੋ ਗਏ ਹੁਣ ਤੁਹਾਨੂੰ ਡਬੜਦਣ ਕਿਸ ਨੂੰ ਨਾਲ ਲੜਨ ਤੋਂ ਜਾਓ ਹੁਣ ਇਹਨਾਂ ਨੂੰ ਮੈਂ ਜਾਂ ਠਾਕਰਾਂ ਦੇ ਲਿਓ ਫੇਰ ਗ੍ਰਿਫਤਾਰ ਕਰ ਲਓ ਹਾਂ ਇੱਕ ਤਾਂ ਗ੍ਰਿਫਤਾਰ ਦੇ ਕਰੋ ਕਿ ਵੀ ਅਪਰਾਧਾ ਦੂਆ ਦੂਆ ਅਰੇ ਰੂਹੇ ਤੇ ਠੋਕ ਦੇਵੇ ਕਿਕਰੂ ਕੋਲ ਸਾੜੇ ਜੱਫੀ ਪਾ ਲਈ ਦੂਏ ਨਾ ਮਾਰਦਾ ਇਹਦਾ ਅਪਰਾਧ ਹੋ ਗਿਆ ਫੜ ਕੇ ਬਰਹਾਉਣਾ ਅਪਰਾਧ ਹੈ ਉਹਨਾਂ ਸਮਝ ਐਸ ਗਲਤੀ ਇਹ ਅਸੀਂ ਫੜ ਲੀਏ ਦੂਆ ਆ ਕੇ ਉਹਨੇ ਬਰਛਾ ਠੋਕ ਦੇ ਇਹ ਵੀ ਮਾੜੀ ਗੱਲ ਹੈ ਸਾਥੇ ਦਾ ਅਪਰਾਧ ਹੋ ਗਿਆ ਵਿਚਾਰਾ ਬਰਵਾਤਾ ਸੀ ਗਰੀਬ ਪੁਲਿਸ ਦਾ ਕੰਮ ਰੱਖਿਆ ਕਰ ਹਾਂ ਉਹਨੂੰ ਪਜਾਬੋ ਤੇ ਰਮਗਾਤਾ ਉਧਾਨਾ ਹੋਇਆ ਹੈ ਬਰਛਾ ਲੈ ਕੇ ਜੇ ਪੁਲਿਸ ਵਾਲਾ ਮੂਰੇ ਹੋ ਜੂ ਉਹਦੇ ਇਸ ਕਰਕੇ ਉਹ ਚਿਰ ਉਹਨਾਂ ਨੂੰ ਭਾਈ ਨਿਬੜ ਲੈਣ ਲੋ ਜਬਾਟਕ ਹੋ ਤੁੱਕ ਪਾਸਾ ਫੇਰ ਫੜ ਲਿਓ। ਐਵੇਂ ਹੋ ਕਰਦਾ। ਸਰਕਾਰ ਐਵੇਂ ਕਰਦੀ ਹੈ ਸਰਕਾਰ ਕੀ ਕਰੇਗੀ? ਕੀ ਕਰੇ ਸਰਕਾਰ ਬਥੇੜਾ ਬਚਾਉਂਦੀ ਹੈ। ਤੇ ਨਾ ਬਚਣ ਫਿਰ ਕੀ ਕਰੇ? ਪਛ ਪਸ਼ੂ ਨਗਨਾਗ ਨਰਾਧਪ ਸਰਬ ਸਮੇਂ ਸਭ ਕੁ ਪਾਰ ਹੈ। ਪਛ ਪੰਛੀ ਦੇ ਪਸ਼ੂ ਦੇ ਨਾ ਨਾ ਗਾਉਣ ਨੇ ਨਾ ਦਾ ਕਹਿੰਦੇ ਨੇ ਜਿਹੜੇ ਖਾਓ ਖੜੇ ਨੇ। ਗੱਡੇ ਹੋਏ ਇੱਕ ਥਾਂ ਉਹ ਨਾਗਾ ਜਿਹੜਾ ਉਹਦੇ ਚ ਗੱਡਿਆ ਹੁੰਦਾ ਹੁੰਦੇ ਚ ਖੜਾ ਹੁੰਦਾ ਉਹ ਵਿਚਾਰਾ ਉੱਥੇ ਹੀ ਰਹਿੰਦਾ ਉਹਦੇ ਹਿਲਦੀ ਧਰਤੀ ਹਿਲਦੀ ਆ ਤਾਂ ਨਾਲ ਹਿਲਦਾ ਧਰਤੀ ਹਿਲਦੀ ਤਾਂ ਹਿਲਦੇ ਨੇ ਉਹ ਹੱਥ ਇਹਦਾ ਤਾਂ ਹਿਲਦਾ ਅਸਲ ਤੇ ਨਾਗ ਮੰਨੂ ਕਹਿੰਦੇ ਜੇ ਅਸੀਂ ਨਾਗ ਲਫ਼ਜ਼ ਲਾਈਏ ਨਾ ਨਾਗ ਸੱਪ ਨੂੰ ਹੀ ਕਹਿੰਦੇ ਬਾਝ ਕਰਨ ਲੱਗੇ ਸਪਾ ਦੁੱਧ ਪਲਾਈ ਜਿਹੜਾ ਕਹਿੰਦੇ ਨੇ ਨਾ ਜੇ ਸਪਰੂ ਦੁੱਧ ਵੀ ਪਲਾਈਏ ਤਾਂ ਵੀ ਉਹਦੀ ਜਹਿਰ ਬੁੱਲਦੀ ਜਿਹੜਾ ਮਨੁੱਖ ਹੈ ਜੇ ਉਹਨੂੰ ਸਾਰੀ ਗੁਰਬਾਣੀ ਵੀ ਪੜਾਈਏ ਉਹਦੇ ਚੀਜ਼ ਉਹਦੇ ਅੰਦਰ ਗੁਰਬਾਣੀ ਦਾ ਸਾਦੀ ਹੁੰਦੀ ਉਹ ਤਾਂ ਵੀ ਮਾਇਆ ਦਾ ਉਹ ਕਰੂਗਾ ਜਿਹੜੇ ਮਾਇਆਧਾਰੀ ਨੇ ਨਾ ਗੁਰਬਾਣੀ ਪੜ੍ਹ ਕੇ ਕਿਹਨਾਂ ਨੇ ਇਹਨੂੰ ਕਮਾਈ ਦਾ ਸਾਧਨ ਬਣਾਇਆ ਸਾਰੇ ਸੁਪਨੇ ਆ ਮਾਗਲਬ ਸੁਝੋ ਕਿਹਨਾਂ ਸੁਪਨ ਕਾਇਦੇ ਨਹੀਂ ਹੋਣ ਡਾਗੀ ਦਾ ਕੌਮ ਹੈ ਪਹਾੜ ਦੇ ਵਿੱਚ ਡੇਗੀ ਵੀ ਕਹਿੰਦਾ ਡਾਗੀ ਵੀ ਜਾਂ ਤੈਨੂੰ ਆਪਣੇ ਉੱਪਰ ਹਰ ਵੀ ਇਹਦੀ ਕੌਮ ਹੈ ਡਾਗੀ ਬਹੁਤ ਹੈ ਕ ਬਹੁਤ ਬੜੀ ਕੌਮ ਹੈ ਸੁਪਨੂ ਨਹੀਂ ਕਹਣਾ ਕਾਹਨ ਲੱਗੇ ਸੁਪਨੂ ਰੋ ਬਦਨਾਰੂ ਕਿਆ ਹੋਇਆ ਜਿਹੜਾ ਦੁੱਧ ਪੀ ਕੇ ਵੀ ਜ਼ਹਿਰ ਪੈਦਾ ਕਰੇ ਕੁਰਬਾਨੀ ਪੜਕੇ ਵੀ ਉਹਦਾ ਲੋਭੇ ਪੈਦਾ ਹੋਵੇ ਉਹਦੇ ਕੁਰਬਾਨੀ ਪੜਦੇ ਆ ਅਰਦਾਸ ਲੋਭ ਦੀ ਕਰਦੇ ਇਹ ਸਾਰੇ ਸੱਪ ਨੇ ਲੋਭ ਤੋਂ ਖਰਾਬ ਹੈ ਅਬਰਤ ਪੀ ਕੇ ਅਬਰਦੀ ਵੀ ਜ਼ਹਿਰ ਬਣਾ ਦੇਵੇ ਪੀਵੇ ਅਬਰਤ ਪੈਦਾ ਕਰੇ ਜ਼ਹਿਰ ਸੱਪਾਂ ਦਾ ਤਾਂ ਜ਼ਹਿਰ ਪੈਦਾ ਹੋਉਂਦਾ ਕਪਰੂ ਦੁੱਧ ਬੁਲਾਇਓ ਤਾਂ ਵੀ ਜਾ ਮੈਂ ਰਹੂ ਉਹਦੇ ਅੰਦਰ ਇਹ ਲੋਕ ਜਿਹਨੇ ਲੋਬੀ ਨੇ ਇਹ ਸੱਪ ਦੇ ਹੋਣ ਪ੍ਰਤੀਕ ਨੇ ਸੱਪ ਕਦੇ ਪੈਸਾ ਦੇ ਤੁਸੀਂ ਮੈਨੂੰ ਦਿਖਾ ਦਿਓ ਬੈਠਾ ਹੋਇਆ ਤੁਹਾਡੇ ਬੈਂਕਾਂ ਦੇ ਆਲੇ ਸੱਪ ਰਹਣ ਬੈਂਕਾਂ ਦੇ ਅੰਦਰ ਸੱਪ ਨਹੀਂ ਦੇਖੇ ਜੇ ਸੱਪ ਮਾਇਆ ਦੇ ਰਹੇ ਨੇ ਬੈਂਕਾਂ ਦੇ ਆਲੇ ਵਾਲੇ ਸੱਪ ਰਹਣ ਸਵੇਰ ਵਾ ਤਾਂ ਹੌਲ ਬੈਠੇ ਅਮਰੀਕਾ ਸਾਰੇ ਸੱਪ ਚਲੇ ਜਾਣ ਉੱਥੇ ਤਾਂ ਧਰਜ ਜ਼ਿਆਦਾ ਹੈ ਇਹ ਗੱਲਾਂ ਨਹੀਂ ਹਨ ਸੱਪ ਉਹ ਆਦਮੀ ਹੈ ਜਿਹੜਾ ਛਾਪੜ ਕੇ ਬੈਠੇ ਮਾਇਆ ਤੇ ਕਿਸੇ ਗਿਆਨ ਨੂੰ ਨਾ ਬਣੇ ਮਾਇਆ ਤੇ ਪਕੜ ਮਜ਼ਬੂਤ ਕਰੀ ਜਾਵੇ ਜਿੰਨਾ ਗਿਆਨ ਨੂੰ ਪੜਾਵੇ ਸਮ ਮਾਇਆ ਧਾਰੀ ਉਹਦਾ ਚਲਾ ਜਾਵੇ ਮਾਇਆ ਧਾਰੀ ਕਹਿੰਦੇ ਨੇ ਮਾਇਆ ਧਾਰੀ ਤਾਂ ਨਾ ਬੋੜਾ ਬੋੜਾ ਛਾਪਦੇ ਕਰਨ ਨਹੀਂ ਹੁੰਦੇ ਸੱਪ ਦਾ ਕੰਢੀ ਹੁੰਦਾ ਏਸ ਕਰਕੇ ਮਾਇਆ ਤਾਰੀ ਨੂੰ ਅੰਨਾ ਬੋੜਾ ਕੇ ਆ ਬੋੜੇ ਕਰਕੇ ਸੱਪ ਲੈ ਲਿਆ ਨਾ ਸੱਪ ਵੀ ਬੋੜਾ ਹੁੰਦਾ ਉਹ ਪਰਵਾਣੀ ਸੁਣਦਾ ਹੀ ਨਹੀਂ ਹੈ ਆਪਣੇ ਮਤਲਬ ਦੀ ਗੱਲ ਸੁਣਦਾ ਸੱਪ ਨੂੰ ਨਹੀਂ ਗਾਣਾ ਨਾ ਜਿਹੜਾ ਮਨ ਹੁਣ ਜਿਹੜੇ ਸੱਪ ਬਣਾਏ ਨੇ ਕਹਾ ਹੂਗਾ ਦੋ ਜੀਪਾਂ ਨੇ ਉਹਦੇ ਦੋ ਜੀਪਾਂ ਕਿਸੇ ਸੱਪ ਦੇ ਮਨੂ ਦਿਖੋ ਇੱਕ ਇੱਕ ਮੂੰਹ ਇੱਕੋ ਜੀ ਹੁੰਦੀ ਹੈ ਦੋਹਾਂ ਦੀ ਹੈ ਪਰ ਇਹਦੇ ਦੋ ਜੀਪਾਂ ਨੇ ਵੱਡੇ ਬੂੰਹ ਵੀ ਦੋ ਨੇ ਇੱਕ ਗੁਰਮੁਖੀ ਮੂੰਹ ਇੱਕ ਮਨਮੁਖੀ ਮੂੰਹ ਬੁੱਢੀ ਦੇ ਦੋ ਮੂੰਹ ਨੇ ਬਲਕਿ ਪੰਜ ਬੁਖੀ ਕਿਹਾ ਹੈ ਸਰਪਣੀ ਕਾਲੀ ਸਰਪਣੀ ਕਾਲੀ ਉਹ ਮਾਇਆ ਨੂੰ ਕਿਹਾ ਹੈ ਉਹ ਜਿਆਦਾ ਮਾਇਆ ਮੰਗਦਾ ਇਕ ਤਾਂ ਇਕ ਨਾਮ ਮੰਗਦਾ ਦੋ ਕੱਠੇ ਮੂੰਹ ਨੇ ਹੁਣ ਸਾਡੇ ਦੋ ਪ੍ਰਕਾਰ ਦੀ ਇੱਛਾ ਮੰਦੀ ਇੱਛਾ ਮਾਇਆ ਦੀ ਹੈ ਮਨ ਮਾਇਆ ਵਿੱਚ ਫਸ ਰਹੇ ਹੋ ਜਿੱਤ ਦੀ ਇੱਛਾ ਦੁਈ ਹੈ ਦੋ ਦੇ ਦੋ ਮੂੰਹ ਅੱਡੋ ਅੱਡ ਨੇ ਅੱਡੋ ਤਾਂ ਨਾ ਦੀ ਗੱਲ ਨਹੀਂ ਲੜਦੀ ਦੋਹਾਂ ਦੀ ਉਹਦੇ ਮੂੰਹ ਜੋ ਹੋਰ ਕੋ ਨਿਕਲਦਾ ਹੈ ਮੂੰਹ ਜੋ ਹੋਰ ਕੋ ਨਿਕਲਦਾ ਆਪਾ ਵਿਰੋਧੀ ਗੱਲਾਂ ਨੇ ਰੋਦੀਆਂ ਉਹ ਤਾਂ ਕਹਿੰਦਾ ਵੀ ਜੋ ਕੰਮ ਕਰਨਾ ਹੈ ਉਹ ਕਰ। ਪੜੇ ਕੰਮ ਨਾ ਕਰੇ ਕਹਿੰਦਾ ਪੜੇ ਕੰਮ ਉਹ ਨਾ ਸਰਦਾਰ ਵੀ। ਭਾਇਆ ਬਣਾ ਸਰਦਾਰ ਦੀ ਝੂਠ ਬੋਲੇ ਬਣਾ ਸਰਦਾਰ ਦੀ ਹਿਰਾਫਰੀ ਬਣਾ ਸਰਦਾਰੀ ਉਹ ਕਹਦਾ ਇਹ ਇਹ ਸਾਲਾ ਕਿੱਦਾਂ ਰਹੇਗਾ? ਧਰਮ ਕਹਿੰਦਾ ਵੀ ਇਹ ਕੰਮ ਨਾ ਕਰੋ। ਇਹ ਕੰਮ 'ਚ ਘਾਟਾ ਘਟਾ ਹੈ। ਸਿਆਣੇ ਕਹਿੰਦੇ ਨੇ ਕੰਮ 'ਚ ਘਾਟਾ ਹੈ। ਕਹਿੰਦਾ ਸਿਆਣੇ ਛੱਡੋ ਪਰ। ਸਿਆਣੇ ਕਹਿੰਦੇ ਨੇ ਰੋਟੀ ਬੰਲੀ ਰੋਟੀ ਬੰਲੀ ਰੋਟੀ ਪੈਸੇ ਨਾਲ ਪੈਸਾ ਕਮਾ ਨਹੀਂ ਹੁੰਦਾ ਝੂਠ ਬੋਲੇ ਫਿਰ ਉਹ ਆਪਣੀ ਦਲੀਲ ਲੰਦਾ ਹੋਵਣੀ ਦਲੀਲ ਲੰਦਾ ਇਸ ਕਰਕੇ ਦੋ ਬੂ ਇਸੇ ਦੇ ਦੋ ਗੱਲਾਂ ਜੋ ਹੈ ਇੱਕ ਗੱਲ ਨਾ ਨਾਟ ਗਲੇਖੇ ਇੱਕ ਗੱਲ ਇੱਕ ਗੱਲ ਬੜੇ ਗੱਲਾਂ ਦੋ ਨੇ ਦੇ ਅੰਦਰ ਇੱਕ ਮੂ ਖਤਮ ਹੋ ਜਾਣਾ ਫਿਰ ਦੋ ਚਿੱਤੇ ਕੀ ਦੋਈ ਥੂ ਨਾ ਗਰਾਨੀ ਗਰਾਨੀ ਟੂਟਾ ਨਾਗ ਨਾਗਨ ਰੱਧਪ ਨਾਗ ਨਾਗਨ ਰੱਧਪ ਰੱਧਮ ਰਾਜੇ ਓਏ ਇੱਕ ਤਾਂ ਸ਼ਿਵਜੀ ਦੇ ਕੇ ਲਿਆਗੇ ਸ਼ਿਵ ਭਗਤ ਆਗੇ ਸ਼ਿਵ ਆ ਗਿਆ ਨਾਗ ਰੱਧ ਰੱਧਪ ਰੱਧਮ ਵਿਸ਼ਰੂ ਆ ਗਿਆ ਲੋਏ ਆਗੇ ਸਰਬ ਸਮੇ ਸਭ ਕੋ ਵਰਤ ਪਾਲਣਾ ਕਰਨਾ ਕਿਉਂਕਿ ਜਿਹੜੀ ਇਹ ਹੈ ਨਾ ਪਛਪਛੂ ਪਹਿਲਾ ਆ ਗਿਆ ਨਾ ਬਾਕੀ ਸਾਰਿਆਂ ਜੁਨੀ ਆ ਗਏ ਪਛਪਛੂ ਉਹ ਨਾਲ ਨਹੀਂ ਬਾਰਦਾ ਅੜਮੀ ਨਹੀਂ ਬਾਰਦਾ ਕੋਈ ਹੋਰ ਰੱਬ ਨਹੀਂ ਹੈ ਜਿਹੜਾ ਸ਼ਿਵਜੀ ਨੂੰ ਪਾਣਦਾ ਕੋਈ ਹੋਰ ਰੱਬ ਨਹੀਂ ਹੈ ਜਿਹੜਾ ਵਿਸ਼ਨੂੰ ਦੇ ਪਾਸੋਂ ਵਿਸ਼ਨੂੰ ਨੂੰ ਪਾਣਦਾ ਇੱਕੋ ਹੀ ਹੈ ਕਹਿੰਦਾ ਉਹ ਰੱਬ ਪਰ ਉਹ ਢੋਲ ਢੱਡੀ ਬੈਠੇ ਉਹ ਜਦ ਕੇ ਪਿੱਛੇ ਇੱਕੋ ਹੀ ਜਦੋਂ ਦੇ ਸਰ ਤੇ ਉਹ ਢੋਲ ਢੱਡੀ ਬੈਠੇ ਨੇ ਉਹ ਕਹਿੰਦੇ ਸਾਨੂੰ ਸ਼ਿਵਜੀ ਤੋਂ ਬੁਲਾਉਗਾ ਸਭ ਕੁਝ ਉਹ ਕਹਿੰਦੇ ਸਾਨੂੰ ਵਿਸ਼ਨੂੰ ਤੋਂ ਬੁਲਾਉਂਗਾ ਕਾਹ ਵਿਸ਼ਨੂੰ ਆ ਸ਼ਿਵਜੀ ਨੂੰ ਪਾਣ ਵਾਲਾ ਇੱਕ ਹੋਰ ਹੈਗਾ ਉੱਪਰ ਕਾਇਰ ਹੈ ਜਿਹੜਾ ਸਾਰੇ ਜੀਵ ਜੰਤ ਦੀ ਪਾਲਣਾ ਕਰਦਾ ਪਸ਼ੂ ਦੀ ਕਰਦਾ ਪੋਖਤ ਹੈ ਜਲਮੈ ਥਲਮੈ ਪਲਮੈ ਕਲਕੇ ਨਹੀਂ ਕਰਮ ਵਿਚਾਰ ਹੈ ਪੋਖਤ ਹੈ ਜਲਮੈ ਥਲਮੈ ਜਲ ਦੇ ਵਿੱਚ ਵੀ ਜੀਵ ਨੇ ਧਰਤੀ ਦੇ ਉੱਤੇ ਵੀ ਜੀਵ ਨੇ ਸਾਰਿਆਂ ਦੀ ਉਹ ਪਾਲਣ ਪੋਸ਼ਣ ਕਰਦਾ ਸਾਰਿਆਂ ਦੀ ਭੁੱਖ ਦਾ ਇਲਾਜ ਕਰਦਾ ਭੁੱਖ ਭਟਾਉਂਦਾ ਖਾਣ ਨੂੰ ਦਿੰਦਾ ਪੀਣ ਨੂੰ ਦਿੰਦਾ ਪਾਲਣਾ ਕਰਦਾ ਪੋਖਤ ਪਲ ਮੈਂ ਕੱਲ ਕੇ ਨਹੀਂ ਕਰਮ ਵਿਚਾਰਿਆ ਪਲ ਮੈਂ ਕਰ ਦਿੰਦਾ ਕੰਮ ਪੋਖਤ ਪਲ ਮੈਂ ਪਲ ਮੈਂ ਤਾਂ ਕਿ ਕੰਮ ਹਾਂ ਪੋਖਤ ਹੈ ਜਲ ਮੈਂ ਥਲ ਮੈਂ ਕੇ ਨਹੀਂ ਕਰਮ ਵਿਚਾਰਿਆ ਉਹਨਾਂ ਨੇ ਕੀ ਸੋਚ ਹੈ ਉਹ ਕੀ ਸੋਚਦੇ ਨੇ ਇਹ ਕਰਮ ਦੀ ਵਿਚਾਰ ਨਹੀਂ ਕਰਦਾ ਇਹਨਾਂ ਦੀ ਸੋਚ ਕੀ ਹੈ ਉਹ ਜੋ ਮਰਜੀ ਸੋਚੀ ਜਾਣ ਉਹ ਲੈ ਦੱਸਦਾ ਨੇ ਨਿਆਣੇ ਕੀ ਸੋਚਦੇ ਨੇ ਬਾਬਰੂ ਕੀ ਲਗੇ ਇਹ ਕੋ ਪੜਾ ਵੀ ਸੋਚਦਾ ਉਹ ਕਹਿੰਦਾ ਸੋਚੀ ਜਾਂਦੇ ਐ ਥੋੜੀ ਕਹਿੰਦਾ ਵੀ ਰੋਟੀ ਬੰਦ ਕਰ ਦੋ ਇਹਦੀ ਉਹ ਇਹ ਥੋੜੀ ਕਹੋਗਾ ਵੀ ਇਹਨੂੰ ਕੱਪੜੇ ਬੰਦ ਕਰ ਦੋ ਉਹ ਕਹਿੰਦਾ ਇਹਨੂੰ ਸਮਾਂ ਹੋਰ ਫਾਲਤੂ ਦੇ ਦਿਆ ਕਰੋ ਇਹ ਦੋਿਆਂ ਨੂੰ ਇਹ ਕਹਿੰਦਾ ਵੀ ਮੈਨੂੰ ਘੱਟ ਦਿੰਦੇ ਉਹ ਘੱਟ ਦੇਣ ਦਾ ਹੀ ਰੌਲਾ ਹੁੰਦਾ ਰੌਲਾ ਕਾਹਦਾ ਹੁੰਦਾ ਸਿਰ ਸਾਜ ਵੀ ਘੱਟ ਦੇਣ ਦਾ ਹੀ ਰੌਲਾ ਰੋਸਾ ਇਹਨੂੰ ਵਾਈ ਬੰਦ ਦੇ ਦੋ ਜੇ ਦਾਣਾ ਮੈਂ ਬੂਡ ਵੇਂਗੇ ਲੈਣ ਨੂੰ ਲੈਦੇ ਉਸੇ ਟੋਪਰੇ ਤੂੰ ਇਹਨੂੰ ਸਮਝਾ ਤੁਸੀਂ ਦੋਸਤ ਕਲੇਸ਼ ਨਾ ਹੋਵੇ ਉਹ ਕਲੇਸ਼ ਵੀ ਕਹਿੰਦਾ ਕਿਸੇ ਤਰੀਕੇ ਨਾਲ ਵਧੇ ਦੇ ਦਈਏ ਕਲੇਸ਼ ਨਾ ਹੋਵੇ ਕਰੂਣੀ ਵਿਚਾਰਦਾ ਕਰ ਸ਼ਾਨਦਲੀ ਵਿਚਾਰਦਾ ਦੀਨ ਦਇਆਲ ਦਇਆ ਨਿਦ ਦੋਖਣ ਦੇਖਤਾ ਹੈ ਪਰ ਦੇਤ ਨਾ ਹਾਰਾ ਦੀਨ ਦੇ ਹਾਲ ਹੈ ਧਿਆਨ ਦੇ ਸਾਡੇ ਦੋਖਾਂ ਨੂੰ ਸਾਡੀਆਂ ਕਮੀਆਂ ਨੂੰ ਦੇਖਦਾ ਹੈ ਉਹ ਘਰ ਬਾਬ ਜਾਣਦਲ ਦੀ ਕਮੀ ਨੂੰ ਪਰ ਫਿਰ ਵੀ ਦੇਈ ਜਾਂਦਾ ਪਰਦੇ ਤਲਾ ਹਰ ਜਾਣਦਾ ਹੋ ਵੀਰਿਆ ਯਾਰੀ ਦਿੰਦਾ ਕੀ ਕਰੇ ਪਰਦੇ ਤਲਾ ਹਰ ਚਲੋ ਬੰਦ ਇਹ ਉਹ ਕਰਦਾ ਹੈ ਆਦਮੀ ਵੀ ਕਰਦਾ ਇਹਨੂੰ ਜੇ ਤੂੰ ਕਰਦਾ ਆ ਮੈਨੂੰ ਪੁੱਛਿਆ ਫਿਰ ਉਹ ਕਿਉਂ ਨਾ ਕਰੇ ਬਈ ਇਹ ਤੂੰ ਕਰਦਾ ਉਹ ਐਵੇਂ ਕਰਦਾ ਤੇਰੇ ਇਹਦੇ ਅੰਦਰ ਪ੍ਰੇਮ ਜਗਾਇਆ ਇਹ ਕਹਿ ਕੇ ਇਹ ਕਹਿ ਕੇ ਪ੍ਰੇਮ ਜਗਾਇਆ ਤੇ ਅੰਦਰ ਵੀ ਜੇ ਤੇਨੂੰ ਪ੍ਰੇਮ ਆ ਆਪਣੀ ਔਲਾਦ ਨੂੰ ਐਵੇਂ ਹਰੂ ਵੀ ਹੈ ਸਾਡੇ ਕਰਮਾਂ ਨੂੰ ਨਹੀਂ ਦੇਖਦਾ ਸੀ ਸਾਡੀ ਕੀ ਸੋਚਦੇ ਉਹ ਫਿਰ ਵੀ ਦੇਈ ਜਾਂਦਾ ਆਇਓ ਕਈ ਵਾਰ ਸਾਡੂੰ ਤਾਂ ਗੁੱਸਾ ਆ ਜਾਂਦਾ ਉਹਨੂੰ ਹੌਲਦਾ ਬਈ ਅਈ ਤਾਂ ਕਈ ਵਾਰ ਕੋ ਸਭੀ ਆ ਜਾਂਦਾ ਉਹਨੂੰ ਕੋ ਸਭਰੀ ਉਹਦਾ ਦਾਹਤ ਹੈ ਦੁਖ ਦੋਖਣ ਸਾਰਾ ਨਾ ਸਾਡੇ ਦੁੱਖ ਔਰ ਦੋਖਾਂ ਦਾ ਦਹਨ ਕਰਨਾ ਦੁੱਖਾਂ ਦੋਖਾਂ ਦਾ ਨਾਸ ਕਰਨਾ ਉਹਦਾ ਕੰਮ ਸਾਰੀ ਸ੍ਰਿਸ਼ਟੀ ਦੇ ਦੁੱਖ ਦੋਖ ਦਾ ਦਹਨ ਕਰਨਾ ਉਹਦਾ ਕੰਮ ਦਲ ਦੁਰਜਣ ਕੇ ਪਲ ਮੈਂ ਦਲ ਡਾ ਜਿਹੜੇ ਦੁਰਜਣ ਨੇ ਦੂਜਿਆਂ ਨੂੰ ਇੱਕ ਦੂਏ ਨੂੰ ਦੁੱਖ ਦੇਣੇ ਵਾਲੀ ਵੀ ਦੇ ਦਲ ਉਹ ਕਹੇ ਜਾਣ ਨਾ ਬਾਜਾਂ ਤੇ ਸਿਕਦਾਰਾਂ ਇਹਨਾਂ ਫੜਿਆ ਨਾ ਫਾਈ ਲੱਗੀ ਜਾਤ ਵਾਹ ਨਗਰ ਇਥੋਂ ਜਿਹੜੇ ਇਹ ਜਿਹੇ ਨਾ ਲੋਕਾਂ ਨੂੰ ਗੁਬਰਾਹ ਕਰਕੇ ਧਰਮ ਤੋਂ ਪਰੇ ਲਿਆਉਣ ਵਾਲੇ ਆਪਣੇ ਜਾਲ ਵਿੱਚ ਫਸਾਉਣ ਵਾਲੇ ਇਨਾ ਦੇ ਜਿਹੜੇ ਦੱਲੇ ਨੇ ਧਾਲ। ਦਲਾਂ ਦੇ ਦਰੋਂ। ਦਲ ਢਾਰ ਹੈ। ਦਲ ਦੁਜਨਕੇ ਦੁਜਨਾਂ ਦੇ ਦਲ। ਦੁਜਨਾਂ ਦੀ ਸਮੂਹ ਫੌਜਾਂ ਦੁਜਨਾਂ ਦੀਆਂ। ਪਰ ਮੈਂ ਦਲ ਢਾਰ ਹੈ। ਪਰ ਮੈਂ ਤਹਿਨ ਦੇ ਵਿੱਚ ਦੜਦ ਦਰੜ ਕੇ ਰੱਖ ਦਿੰਦਾ। ਪਾਲ ਦੇ ਵਿੱਚ ਦੜਦ ਦਰੜ ਦਿੰਦਾ। ਜਦ ਸੱਚ ਪ੍ਰਗਟ ਹੁੰਦਾ ਸਾਰੇ ਨੂੰ ਦੜਦ ਇਕੱਠੇ ਲੈਲੇ ਜਾਂਦੇ ਨੇ। ਜਿੰਨਾ ਪ੍ਰਚਾਰ ਉਹ ਇਕੱਠੇ ਬੰਦ ਹੋ ਜਾਂਦਾ ਹੁਣ ਜਿਆਦਾ ਸੱਚ ਪ੍ਰਗਟ ਹੁੰਦਾ ਹੈ ਨਾ ਝੂਠ ਦਾ ਪ੍ਰਚਾਰ ਹੁੰਦਾ ਇਕੱਠਾ ਹੀ ਬੰਦ ਹੋ ਜਾਂਦਾ ਫਿਰ ਹਰ ਕੋਈ ਹਰ ਕੋਈ ਬੋਲਣ ਲੱਗ ਜਾਂਦਾ ਨਾ ਹਰ ਲੋਕਾਂ ਨਾਲ ਜਵਾਬ ਨਹੀਂ ਸੀ ਅੱਗੇ ਨਾਲ ਦੀਆਂ ਗੱਲਾਂ ਨੇ ਜੇ ਜਵਾਬ ਆ ਜਾਣਗੇ ਆਪੇ ਚੁੱਪ ਇਹ ਪਹਿਲਾਂ ਹੀ ਚੁੱਪ ਕਰ ਜਾਂਦੇ ਉਹ ਸਿਆਣੇ ਉਹਦੇ ਨੇ ਉਹ ਲੋਕਾਂ ਕੋ ਆ ਕੇ ਜਵਾਬ ਬੇਇੱਜ਼ਤੀ ਕਰਾਉਣੋਂ ਪਹਿਲਾਂ ਹੀ ਚੁੱਪ ਹੋ ਜਾ ਪਹਿਲਾਂ ਚੁੱਪ ਹੋ ਜਾਂਦੇ ਹੁੰਦੇ ਇਹਨਾਂ ਨੂੰ ਤਾਂ ਪਤਾ ਅਸੀਂ ਗੁਬਰਾ ਕਰ ਰਹੇ ਹਾਂ ਜੇ ਲੋਕਾਂ ਕੋਲ ਜਵਾਬ ਆ ਗਿਆ ਉਹਨਾਂ ਨੇ ਪਹਿਲਾਂ ਹੀ ਚੁੱਪ ਕਰ ਜਾਣਾ। ਬੈਠ ਕੇ ਰਾਖੇ ਵੀ ਚੁੱਪ ਹੋਣ ਗਈ ਨਾ। ਬੈਠ ਕੇ ਕਿਉਂ ਕਰਨ? ਉਹ ਹਾਂ ਵਈ ਅਸੀਂ ਤਾਂ ਪਿੱਛੇ ਐਵੇਂ ਭੜਿਆ ਸੀ। ਇਹ ਬਿਕਾਇਦੇ ਰਹੇ। ਠੀਕ ਹੈ ਵੀ ਠੀਕ ਹੈ ਆਹੀ ਠੀਕ ਹੈ। ਚਲ ਗਾੜੇ ਰੰਕ। ਪਿਛਲੇ ਤੇ ਆਪੜੋ। ਪਹੁੰਚਾ ਫਿਰ ਕੇ ਨਾਲੇ। ਸੰਪਤੀ ਲੈ ਲਈ ਸਾਰਿਆਂ ਦੀ। ਫੇਰ ਵੀ ਅਸੀਂ ਗੁਰੂ ਨਾਲੇ ਜੋੜਿਆ ਤੁਹਾਨੂੰ ਕਿਰਪਾਨਾ ਤਾਂ ਪੋਈ ਹੀ ਦੇ ਵਾੜੀ ਨਾਲੇ ਜੋੜਦੇ ਰਹੇ ਅਸੀਂ ਵੀ ਚੱਲ ਆਵੇਂ ਜਾਣ ਕੇ ਕਹਿੰਦੇ ਰਹੇ ਫਿਰ ਐਂ ਕਹਿੰਦੇ ਨੇ ਪੋਚਾਈ ਫੇਰ ਨਾ ਖੰਡ ਅਖੰਡ ਪ੍ਰਚੰਡ ਪ੍ਰਹਾਰਣ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰਾ ਖੰਡ ਅਖੰਡ ਜਿਹੜਾ ਖੰਡ ਹੈ ਨਾ ਉਹ ਮਾਨ ਖੰਡ ਹੈ ਜਿੱਤ ਵੀ ਖੁਡੈ ਦਾ ਦਾ ਜੱਜ ਕਿਨਾ ਜਰਦਾ ਦੱਤ ਅਖੰਡ ਅਖੰਡ ਪਰ ਆਪਣੇ ਆਪ ਨੂੰ ਬੁਲਦਾ ਅਖੰਡ ਮਨ ਬਤਾਂ ਨੇ ਸਾਰੀ ਆਪਣੇ ਆਪ ਨੂੰ ਖੰਡ ਬੰਦੀ ਹੈ ਹੈ ਤਾਂ ਉਹ ਮੰਦੀ ਮਤ ਅਖੰਡ ਦੀ ਮਤ ਹੈ ਉਹ ਖੰਡ ਦਾ ਗਿਆਨ ਪਰ ਇਹ ਕਹਨਾ ਮੇਰੀ ਗੱਲ ਦਾ ਜਵਾਬ ਹੈ ਨਹੀਂ ਕਿਉਂਕਿ ਮੈਂ ਇਹ ਜੀ ਤੋਰੇ ਫਿਰਦੇ ਹੁਣ ਜੋ ਕਹਿੰਦੇ ਸਾਡੇ ਕੋਲੇ ਤਤ ਗੁਰ ਹੈ ਇਹ ਹੋਈਆ ਐਹ ਜੀਆਂ ਦੀ ਗੱਲ ਹੈ ਇਹ ਖੰਡ ਅਖੰਡ ਜਿਹੜਾ ਅਖੰਡ ਰਿਹਾ ਆਪਣੇ ਆਪ ਨੂੰ ਸਭ ਦੇ ਕਾਲਾ ਫਗਾਨਾ ਕੀ ਕਹਿੰਦਾ ਵੀ ਮੇਰੀ ਗੱਲ ਦਾ ਜਵਾਬ ਨਹੀਂ ਦੱਸੋ ਮੈਨੂੰ ਮੇਰੇ ਕੋਲ ਕੀ ਹੈ ਉਹ ਤੇਰੇ ਕੋਲ ਇਹ ਹੁੰਦਾ ਕੋਈ ਤਾਂ ਦੱਸ ਦੇ ਗਲਤੀ ਹੁੰਦੀ ਗਲਾਲਦੇ ਜਾਂ ਸਾਰਾ ਕੁਝ ਗਲਤ ਹੈ ਕਿਹੜੀ ਗਲਤੀ ਕਰਨ ਤੇਰੀ ਦੱਸ ਵੀ ਤੇਰੇ ਕੋਲ ਠੀਕ ਕੀ ਸੀ ਜਿਹੜੇ ਕਾਲੇ ਫਗਾਨੇ ਤੇ ਮੈਂ ਇਹ ਤੈਨੂੰ ਦੱਸਣ ਉਹਦੇ ਕੋਲ ਠੀਕ ਹੀ ਨਹੀਂ ਗੱਲ ਸੀ ਇੱਕ ਗੱਲ ਉਹਦੀ ਠੀਕ ਦੱਸਣ ਕਿਹੜੀ ਕਿਹੜੀ ਗੱਲ ਸੀ ਗਣੀ ਗਈ ਉਹਦੀ ਗਲਤ ਕੀ ਉਹਦਾ ਜਵਾਬ ਦਿੰਦੇ ਕਿਹੜੀ ਗੱਲ ਦਾ ਜਵਾਬ ਦਿੰਦੇ ਅਕਾਲ ਤਖਤ ਵਾਲੇ ਇਹ ਜਵਾਬ ਦਿੰਦਾ ਵੀ ਜਿਹੜੇ ਆਦਮ ਨੂੰ ਇੰਨਾ ਨਹੀਂ ਪਤਾ ਵੀ ਪਤਾਸਿਆ ਨਾ ਮਿੱਠਾ ਅਰਨਾਮ ਦਾ ਮਿੱਠਾ ਕੀ ਫਰਕ ਹੈ ਉਹਨੂੰ ਗੁਰਬਾਣੀ ਵੀ ਕਿਹਦੀ ਸੋਝੀ ਹੋਊ ਆਹੀ ਗੱਲ ਸੀ ਜਿਹਨੂੰ ਇੰਨਾ ਹੀ ਨਹੀਂ ਪਤਾ ਉਹਦੇ ਕੋਲ ਠੀਕ ਕੀ ਹੋ ਸਕਦਾ ਆਏ ਗੋਦ ਇਹਨਾਂ ਦਾ ਸਾਰਿਆਂ ਦਾ ਗੁਰੂ ਉਹ ਹੈ। ਇਹਨੇ ਤੋਰੇ ਫਰਦਾਨ ਦਾ ਉਸਵਾਨ ਦੇ ਖਿਲਾਫ ਸਾਰਿਆਂ ਦਾ ਗੁਰੂ ਉਹੀ ਹੈ। ਕਾਲਾ ਹੋਗਾ ਨਾ। ਉਹਦੇ ਕੋਲੇ ਕੱਖ ਨਹੀਂ ਹੈ ਜਦ। ਇਹਨਾਂ ਕੋਲ ਕੀ ਹੋਣਾ ਵਿਚਾਰਾਂ। ਇਹ ਦੱਸਣ ਵੀ ਫਲਾਂ ਗੱਲ ਉਹਦੀ ਠੀਕ ਸੀ। ਉਹਦੀਆਂ ਦਸ ਕਿਤਾਬਾਂ ਨੇ ਛਾਪੀਆਂ ਨੇ ਜਗਿੰਦਰ ਸਿੰਘ ਨੇ ਇੱਕ ਗੱਲ ਦੱਸੇ ਉਹਦੀ ਆ ਠੀਕ ਸੀ। ਗੁਰਮਤਿ ਅਨੁਸਾਰ ਸਾਰੀਆਂ ਹੀ ਗਲਤੀਆਂ ਆਉਂਦੀਆਂ ਇੱਕ ਤਾਂ ਦੱਸੇ ਵੀ ਆ ਠੀਕ ਸੀ ਇਹ ਠੀਕ ਦੀ ਲਿਸਟ ਦੇ ਦੇਣ ਸਾਨੂੰ ਵੀ ਆ ਠੀਕ ਸੀ ਗੁਰਮਤਨ ਸਾਹਿਬ ਜੀ ਇਹ ਠੀਕ ਦੀ ਲਿਸਟੇ ਨਹੀਂ ਦੇ ਸਕਦੇ ਕਿਹੜੀ ਗੱਲ ਦੀ ਆਕੜ ਲੈਣਾ ਕੋਲ ਕਿਹੜੀ ਗੱਲ ਦੀ ਆਕੜ ਹੈ ਆਕੜਾ ਸਰ ਪਰਪਾਲ ਚ ਚੜ੍ਹ ਧੜਾ ਬਣਾਉਣ ਦੀ ਧੜਾ ਬਣਾ ਕੇ ਖੋਲਕ ਤੱਕ ਪਹੁੰਚਣ ਦੀ ਇਹਨਾਂ ਨੂੰ ਕਿਸੇ ਨੇੜੇ ਆਉਣ ਦੇਣਾ ਗੋਲਕਦਰ ਇਹ ਨਹੀਂ ਆ ਸਕਦੇ ਗੋਲਕਦਰ ਨੇੜੇ ਸਵਾ ਇਹ ਤਾਂ ਦੂਰ ਹੋ ਗਏ ਗੁਰੂ ਤੋਂ ਵੀ ਗੁਰੂ ਦੇ ਦੋਖੀ ਹੋ ਗਏ ਇਹ ਤਾਂ ਦੋਖੀ ਹੋ ਗਏ ਇਹ ਆਪਣੀ ਜ਼ਿੰਦਗੀ ਤਾਂ ਇਹ ਤਾਂ ਐਸੇ ਛੇਕ ਦਿੱਤੇ ਜਾਣਗੇ ਨਾ ਅਕਾਲ ਤੱਕ ਛੇਕੇ ਨਾ ਛੇਕੇ ਸਿੱਖਾਂ ਨੇ ਦਿਲ ਤੋਂ ਛੇਕੇ ਜਾਣੇ ਨੇ ਗੁਰੂ ਦੇ ਤਾਂ ਛੇਕੇ ਹੋਈ ਨਾ ਇਹਨਾਂ ਦੇ ਤਾਂ ਇੱਕ ਇੱਕ ਦੀ ਫੋਟੋ ਲਾਉਂਦੇ ਨੇ ਇਹ ਕੁੜੀ ਦੀ ਫੋਟੋ ਲਾਈ ਹੋਈ ਇਹ ਜੀ ਐਂ ਕਹਿਦੀ ਇਹਦਾ ਉਹਨਾਂ ਨੂੰ ਕੋਈ ਵਜ੍ਹਾ ਨਹੀਂ ਮਿਲ ਰਿਆ ਹਾਂ ਅਖਬਾਰ ਕੋਈ ਬੰਦਾ ਨਹੀਂ ਦੇ ਵਿੱਚ ਆਪਣੀ ਵਡਿਆਈ ਕਰਨੀ ਆਪਣੀ ਰੋਜ਼ ਵਡੇ ਕਰੀ ਜਾਂਦੇ ਅਖਬਾਰ ਲਿਓ ਆਪਨ ਕੋ ਜੋ ਭਲਾ ਕਹਾਵਾ ਤੇ ਸੇ ਭਲਾਈ ਇਗਰਮਤਾ ਤੂੰ ਆਪਣੀ ਵਡਿਆਈ ਕਰੀਏ ਨਾ ਆਪਣੇ ਇਹਦਾ ਇਹ ਨਹੀਂ ਬਤਾ ਵੀ ਆਪਣੀ ਵਡਿਆਈ ਕਰਨ ਵਾਲਾ ਆਦਮੀ ਤਾਂ ਬਹੁਤ ਹੀ ਭੈੜਾ ਹੁੰਦਾ ਗੁਰਬਾਨੀ ਦੇ ਕਹਿੰਦੀ ਤੂੰ ਕਹਿੰਦਾ ਤ ਗੁਰਮਤ ਜੇ ਤੇਰੇ ਕੋਲ ਤਤ ਗੁਰਮਤ ਹੁੰਦੀ ਆਪਣੀ ਵਡਿਆਈ ਉਹ ਨਾ ਕਰਦਾ ਪੇਪਰ 'ਚ ਆਪਣੀ ਵਡਿਆਈ ਜੇ ਕੋਈ ਕਰਦਾ ਵੀ ਸੀ ਤੇਰੀ ਉਹਦੀ ਖਬਰ ਵੀ ਨਾ ਛਾਪਦਾ ਤੂੰ ਭਾਈ ਦੇਖੇ ਮੇਰੀ ਵਡਿਆਈ ਮੈਨੂੰ ਖਬਰ ਛਾਪਣੀ ਇਹ ਤਾਂ ਗੁਰਮਤ ਤੋਂ ਖਲਾਫ ਹੈ ਕੋ ਜੂੜ ਬੋਲ ਬੋਲ ਕੇ ਆਪਣੀ ਬਣੀ ਛਾਪੀ ਜਣਾ ਲੋਕਾਂ ਨੂੰ ਘਬਰਾ ਕਰਨ ਖਤਰ ਵਿੱਚ ਫੇਰੇ ਬਗਲ ਲਗਣ ਵੀ ਲੋਕਾਂ ਨੂੰ ਹੀ ਹੋ ਜਾਵੇ ਬੱਲਾ ਬੱਲਾ ਵੀ ਇਹਦੇ ਦਾ ਮਗਰ ਬਹੁਤ ਹੈ ਅਸੀਂ ਬਾਹਰ ਬੈਠੇ ਆ ਸਾਨੂੰ ਨਹੀਂ ਪਤਾ ਕੌਣ ਹੈ ਮਗਰ ਪਬਲਿਕ ਤਾਂ ਅਸੀਂ ਤੂੰ ਦਫਤਰ ਰਹਿਣਾ ਅਸੀਂ ਪਬਲਿਕ ਹੀ ਰਹਨੇ ਆ ਤੂੰ ਦਫਤਰ ਚੋਂ ਤੈਨੂੰ ਵਧਾਣੀ ਬਾਹਰ ਕੀ ਹੈ ਫੀਲਡ ਜਿਹੜੇ ਬੰਦੇ ਨੇ ਉਹਨਾਂ ਨੂੰ ਪਤਾ ਨਾ ਫੀਲਡ ਦਾ ਅਸੀਂ ਤੂੰ ਬੈਠਾ ਦਫਤਰ ਦੇ ਵਿੱਚ ਹਲੇ ਲੋਕਾਂ ਨੂੰ ਬਹੁਤ ਗੱਲਾਂ ਦਾ ਪਤਾ ਵੀ ਨਹੀਂ ਅੱਪੇ ਹਟ ਜਾਣਗੇ ਆ ਵੀ ਪੜਦਾ ਚੱਕ ਦਾਂਗੇ ਫੇਰ ਖੰਡ ਅਖੰਡ ਪ੍ਰਚੰਡ ਪ੍ਰਹਾਰਨ ਖੰਡ ਅਖੰਡ ਜਿਹੜੇ ਇਹਾਂ ਦੇ ਭਰਮ ਨੇ ਨਾ ਆਪਣੇ ਆਪ ਨੂੰ ਸਮਝਦੇ ਨੇ ਖਲਟ ਬੜੇ ਹੋਣੇ ਪ੍ਰਚੰਡ ਹੋ ਕੇ ਪ੍ਰਹਾਰ ਕਰਦੇ ਨੇ ਤੇ ਪ੍ਰਚੰਡ ਪ੍ਰਚੰਡ ਪ੍ਰਹਾਰ ਕੀਤਾ ਸੀ ਉਹਦੇ ਤੇ ਕੋਈ ਬਰਤਾਲਾ ਸੀ ਲੋਕਾਂ ਨੂੰ ਚਾਣਨਾ ਕੀਤਾ ਸੀ ਫਿਰ ਕਾਤੇ ਕਰਤਾ ਹੁਣ ਬੈਗ ਫੁੱਟ ਤੇ ਹੁਣ ਕੱਢਣਾ ਉਹਨੂੰ ਮਦਾਨ ਜਵਾਹਰ ਸੂਰਮੇ ਨੂੰ ਫਿਰ ਉਹ ਕਹਿੰਦੇ ਉਹ ਜਦੋਂ ਤੇ ਆਇਆ ਇਹ ਤੇ ਪੰਜਾਬ ਦੇ ਵਿੱਚ ਫਿਰ ਆਪਾਂ ਗਏ ਵੀ ਸੀ ਉਹਨੂੰ ਵੀ ਮੇਰੇ ਨਾਲ ਗੱਲ ਕਰਾਓ ਗੱਲ ਕਿਉਂ ਨਹੀਂ ਕੀਤੀ ਫਿਰ ਉਹਨਾਂ ਨੇ ਕਹੇ ਤਾਂ ਸੌ ਤੇ ਮੈਂ ਨਾ ਕਰਦਾ ਉੱਥੇ ਸੋਹਣਾਗਰ ਤੇ ਰੱਖ ਦਿੰਦੇ ਉਹਤੇ ਬੈਠਾ ਦੇ ਨਾਲ ਉਤਸਤ ਤੇ ਗੱਲ ਕਰ ਰਿਹਾ ਸੀ ਫਿਰ ਕਾਦੇ ਪਿੱਛੇ ਲੋਗੇ ਚੰਡੀਗੜ੍ਹ ਚੰਡੀਗੜ੍ਹ ਐ ਤੋਂ ਮੈਂ ਤਾਂ ਕਰਕੇ ਤੁਸੀਂ ਬੁਲਾਇਆ ਹੈ ਉੱਥੇ ਮੈਂ ਨਾਲ ਗੱਲ ਨਹੀਂ ਕਰ ਦਿੱਤੀ ਫਿਰ ਕਾਦੇ ਬਚ ਗਏ ਇਹਨਾਂ ਸੱਚਾ ਖਾਂਦੀ ਸਾਡੀ ਬਦਲ ਆਇਆ ਹੈ ਮੈਂ ਆਇਆ ਥੋੜੀ ਬਦਲ ਪ੍ਰਚੰਡ ਪ੍ਰਹਾਰਨ ਪ੍ਰਚੰਡ ਪ੍ਰਹਾਰਨ ਪ੍ਰਚੰਡ ਯਾਨੀ ਪੂਰੇ ਗਿਆਨ ਦੀ ਰੋਸ਼ਨੀ ਪਾ ਦੇਣੀ ਪਾਈ ਸੀ ਪ੍ਰਚੰਡ ਪ੍ਰਹਾਰ ਕੀਤਾ ਆਰਟੀਕਲ ਦੇ ਵਿੱਚ ਲੈਟ ਹੈ ਉਹ ਕਿੱਥੇ ਨਾਉਂ ਦੀ ਗੱਲ ਕਿੱਥੇ ਪਤਾ ਦੀ ਗੱਲ ਉਹ ਬੈਠ ਰਿਆ ਨਾ nabla to nahi matter banata fir oh manne ko mande mithe kawde di gall hai badi kawdi gall kehti mainu ohna ne jeev kawdi ho gayi je koya keda nu kawdi gall kehti pai god khala god khad te hat ਕੌਣ ਕਹਿੰਦਾ ਏ ਤੁਹਾਨੂੰ ਬਹੁਤ ਵੱਡਾ ਭਲੇਖਾ ਤੁਸੀਂ ਤੁਹਾਨੂੰ ਗੁੱਦੀ ਹੈ ਗੁੱਦੀ ਹੀਰ ਹੋ ਤੁਸੀਂ ਕੌੜੀ ਗੱਲ ਕਿਸੇ ਨੂੰ ਕਹਿ ਦੇਵੇ ਸਾਰੀ ਜ਼ਿੰਦਗੀ ਚੁੱਪਦੀ ਹੈ ਗੋੜ ਖਾਧੇ ਤੇ ਹਟ ਜੂਓ ਬਰਤਨਾ ਕੌੜਾ ਹੋ ਗਿਆ ਗੋੜ ਖਾ ਲੋ ਹੋਰ ਕਿਸੇ ਜੀ ਇਹਨਾਂ ਕੌੜਾ ਹੋ ਗਿਆ ਗੋੜ ਖਾ ਲੋ 10 ਮਿੰਟ ਚੀਂਦੀ ਖਾ ਲੋ ਤਦਾਸਾ ਖਾ ਲੋ ਹਟ ਜੂ ਮਿੰਟ ਨੂੰ ਹਟ ਜੂ ਮਿੰਟ ਨੂੰ ਹਟ ਜੂ ਘੰਟੇ ਨੂੰ ਹਟ ਕੌੜਾ ਪਰ ਕੁਰੀਰ ਵੀ ਖਾਣੇ ਆ ਪਿੱਛੋਂ ਖਾਏ ਲੈਣੇ ਆਪੇ ਹਟ ਜਾਂਦਾ ਜੋ ਕੋੜੀ ਗੱਲ ਦਾ ਜਿਹੜਾ ਕਿਹਾ ਹੋਇਆ ਉਹ ਸਾਰੀ ਜ਼ਿੰਦਗੀ ਨਹੀਂ ਖੜਦਾ ਕੋੜੀਆਂ ਗੱਲਾਂ ਕਈਆਂ ਹੋਈਆਂ ਪੰਡਤ ਨੂੰ ਹੁਣਦੇ ਹੀ ਚੁੱਪਦੀਆਂ ਨੇ ਕਈ ਪੀੜੀਆਂ ਰੱਗੀਆਂ ਇਹਨੂੰ ਕੋੜੀ ਲੱਗੀ ਬਾਣੀ ਹੁਣਦੇ ਹੀ ਲੱਗੀ ਜਾਂਦੀ ਐ ਉਹਨਾਂ ਦੀ ਪੁਸਤਾਲ ਤਰ ਪੁਸਤਾਂ ਨੂੰ ਕੋੜੀ ਲੱਗੀ ਜਾਂਦੀ ਐ ਗੱਲ ਗੁਰਬਾਣੀ ਦੀ ਲੱਗਦੀ ਐ ਨਾ ਕੋੜੀ ਕਿਉਂ ਲੱਗਦੀ ਐ ਉਹ ਗਾਂ ਪੋਸਟਾਲ ਚਲਿਆ ਗਿਆ ਕੌੜਾ ਪਲੋਦਾ ਇੱਕ ਕੌੜੀ ਅਲਗ ਦੀ ਚਲੀ ਹੋਊਗੀ ਸਾਰਿਆਂ ਨੂੰ ਇਹ ਕੌੜਾ ਰੋ ਕੌੜਾ ਇੱਕ ਬਣਾਤਾ ਤੁਸੀਂ ਕਿੱਦਾਂ ਧਰਮ ਦਾ ਪ੍ਰਚਾਰ ਕਰਦੋਂਗੇ ਉੱਤਾਰ ਨੂੰ ਦੁਬਿਈਆ ਘਰ ਬਣਾ ਲਿਆ ਇਹ ਗਾਂ ਖੜਾਉਣੇ ਉਹ ਕਹਿੰਦਾ 30% ਵਾੜਾ ਬਾਣਾ ਲੋਗਾਂ ਰਾਮ ਖਲਾਉਣਾ ਜਾਣ ਉਹ ਜਾ ਧਰਮ ਨਹੀਂ ਹੈਗਾ ਵੀ ਮੂਰਤੀ ਲੈ ਲਈ ਖਡਾਉਣਾ ਬਣਾ ਕੇ ਖੇਲ ਕੇ ਚਲੇ ਗਏ ਇਹ ਬੁੱਧੀ ਬੁੱਧੀ ਵਾਨਾ ਦਾ ਧਰਮ ਵਿਦਵਾਨਾ ਹੈ ਵਿਦਵਾਨ ਬੁੱਧੀ ਹੀ ਰੁੱਦਰ ਵਿਦਵਾਨਾ ਦਾ ਧਰਮ ਕੀ ਹੈ ਪੰਡਤ ਆਲੇ ਲੋਗਾਂ ਨਾਮ ਖਲਾਉਣਾ ਜਾਣ ਉਹ ਵਿਦਵਾਨਾ ਦਾ ਧਰਮ ਤੋਤੀ ਟਿੱਕਾ ਬਾੜਾ ਬਾਣਾ ਲੋਗਾਂ ਨਾਮ ਖਲਾਉਣਾ ਜਾਣ ਜਿਹੜੇ ਸਿਰਫ ਬਾਣੇ ਨੂੰ ਦਾੜ੍ਹੀ ਕੇਸ ਰੱਖਣ ਨੂੰ ਪੌੜ ਜਗੜ ਨੂੰ ਬਰ ਐਤ ਰਹਿਤ ਨੂੰ ਸਰੀਰਕ ਰਹਿਤ ਨੂੰ ਧਰਮ ਬੰਦਦੇ ਨੇ ਲੋਕਾਂ ਨਾਮ ਖਲਾਉਣਾ ਜਾਣਾ ਉਹ ਹੋਰ ਕੁਝ ਨਹੀਂ ਇੱਥੇ ਮਨਵੇ ਕੇ ਸਦਗੁਰੂ ਕੇ ਪਾਸ ਕਾਰਜ ਰਾਹ ਪੂਰਨ ਸੇਵਾ ਕਰਤ ਹੋਏ ਨੇ ਕਾਮੀ ਜਿਸ ਕੋ ਹੋਤ ਪ੍ਰਾਪਤ ਸੋਮਾ ਸੋਮਾ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰਾ ਪੂਰਨ ਪ੍ਰੇਮ ਕੀ ਪ੍ਰੀਤ ਸੁਭਾਰਾ ਹੈ ਪੋਖਤ ਹੈ ਪਾ ਨਹੀਂ ਅਖੰਡ ਅਖੰਡ ਪ੍ਰਚੰਡ ਪ੍ਰਹਾਰਣ ਅਖੰਡ ਪ੍ਰਚੰਡ ਪ੍ਰਹਾਰਣ ਪੂਰਨ ਪ੍ਰੇਮ ਕੀ ਭਾਵੇਂ ਉਹ ਪੂਰੇ ਜੋਰ ਨਾਲ ਪੂਰੇ ਗਿਆਨ ਨਾਲ ਉਹ ਅਖੰਡ ਗਿਆਨ ਨੂੰ ਖੰਡਨ ਕਰਦਾ ਗਲਤ ਸਾਬਤ ਕਰਦਾ ਬਾਰੇ ਉਹਦੇ ਬੋਲਣ ਜਿਹੜੀ ਪਰੀ ਤਾਂ ਨਾ ਪ੍ਰੇਮ ਦੀ ਜਿਹੜੀ ਉਹਦੀ ਉੱਧਰ ਪ੍ਰੇਮ ਭਾਵਨਾ ਉਹਨੂੰ ਨਸ਼ਟ ਨਹੀਂ ਹੋਣ ਦਿੰਦਾ ਉਹਦਾ ਲਾਭ ਉਹਨੂੰ ਸਿੱਖਿਆ ਦੇਣ ਵਾਸਤੇ ਕਰਦਾ ਹੈ ਨਫ਼ਰਤ ਵਾਸਤੇ ਨਹੀਂ ਕਰਦਾ ਆਪਣਾ ਗੋਲ ਟੀਕੋ ਦਾ ਜੇ ਕੋਈ ਵਿੰਦ ਕਰੇ ਹਰ ਆਪਣਾ ਗੋਲ ਨਾ ਗਵਾਉਂ ਉਹ ਭਾਵੇਂ ਪ੍ਰਚੰਡ ਗਿਆਨ ਨਾਲੇ ਪ੍ਰਹਾਰ ਕਰਦਾ ਉਹਦੇ ਕੂੜ ਤੇ ਪਰ ਉਹਨੂੰ ਸਿੱਖਿਆ ਦੇਣ ਵਾਸਤੇ ਕਰਦਾ ਨਫ਼ਰਤ ਨਾਲ ਨਹੀਂ ਕਰਦਾ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਲਾ। ਬੂਲ ਪ੍ਰੇਮ ਕੀ ਪ੍ਰੀਤ ਹੈ ਨੁੱਸ ਸੰਭਾਲਾ। ਜਿਹੜੀ ਪੂਰਨ ਪ੍ਰੇਮ ਉਹਦੇ ਅੰਦਰ ਇਹ ਪ੍ਰੀਤ ਨੂੰ ਸੰਭਾਲ ਕੇ ਰੱਖਦਾ ਪ੍ਰੀਤ ਅੰਦਰੋਂ ਨਸ਼ੀ ਜੋੜ ਦਿੰਦਾ। ਗੱਲ ਕਰਨ ਲੱਗਿਆ ਵੀ ਅੰਦਰ ਪ੍ਰੀਤ ਨਹੀਂ ਨਸ਼ਾ ਛੋੜ ਦਿੰਦਾ। ਉਹਦੇ ਉਹਨੂੰ ਸਿੱਧਾ ਰੱਬ ਪਾਉਣ ਵਾਸਤੇ ਗੱਲ ਕਰਦਾ। ਜਿਵੇਂ ਰਾਹ ਤੋਂ ਭਟਕਿਆ ਹੋਇਆ ਉਹ ਭਟਕਿਆ ਉਹਨੂੰ ਰਾਹ ਦਿਖਾ ਰਿਹਾ ਵੀ ਇਹ ਰਾਹ ਉਲਟਾ ਜਾਂਦਾ ਨੜਕਾ ਚਲਿਆ ਜਾਏਗਾ। ਏ ਯਾਨੋ ਕਨਾਂ ਨਾਲ ਕਰੂ ਜਾ ਰਹੇ ਹੋ ਤੁਸੀਂ ਸਿੱਖੀ ਸਿੱਖੀ ਦਾ ਤੁਸੀਂ ਰੌਲਾ ਪਾਈ ਜਾਂਦੇ ਹੋ ਤੁਸੀਂ ਸਿੱਖ ਦਾ ਕੀ ਬਣਨਾ ਸਿੱਖੀ ਤਾਂ ਬਹੁਤ ਦੂਰ ਹੈਗੀ ਦਰ ਕਰੂ ਜਾ ਰਹੇ ਹਾਂ ਇਰਾਨ ਅਖਦਾ ਜਿੱਥੇ ਤੁਸੀਂ ਜਾ ਰਹੇ ਹੋ ਸਿੱਖੀ ਅੜਾਦੀ ਹੈ ਇੱਕ ਅਖਰ ਵੀ ਜਿਹੜਾ ਅਖਬਾਰ ਚ ਲਿਖਿਆ ਹੁੰਦਾ ਸੀ ਗੁਰਬਾਣੀ ਦੀ ਇੱਕ ਪੰਕਤੀ ਵੀ ਉਹ ਵੀ ਥੱਲੇ ਜ਼ਮੀਨ ਤੇ ਡਿਗੜੀ ਸੇਖਵਾਹ ਤੇ ਬਰਦਾਸ਼ਤ ਨਹੀਂ ਸੀਗੀ ਅਖਬਾਰਾਂ 'ਚ ਕਈ ਵਾਰ ਹੋਇਆ ਵਪਾਰਜ ਬਾਣੀ ਲਿਖਣ ਦੇ ਲਈ ਸੀ ਅਖਬਾਰਾਂ ਦੇ ਫਿਰ ਦੇ ਵਿੱਚ ਬੱਚ ਬੇਹ ਕੁਰਬਾਨੀ ਦੇ ਖਿਲਾਫ ਦੀ ਅਖਬਾਰਾਂ ਜੁਲਦੀ ਨਹੀਂ ਚਾਹੀਦੀ ਆ ਜਿਹੜੇ ਕਾਰਨ ਨੇ ਤੇ ਨਹੀਂ ਲਿਖਣੀ ਚਾਹੀਦੀ ਹੁਣ ਵੀ ਆਉਦੀ ਹੈ ਵੀ ਬੈਦ ਵੀ ਹੁੰਦੀ ਹੈ ਰਾਦਰੀ ਹੁੰਦੀ ਹੈ ਉਹਦੇ ਇੱਕ ਵਕਤੇ ਵੀ ਹੋਣੀ ਹੂਈਆਂ ਬਈਕਮਕਤੇ ਵੀ ਹੋ ਰਹੀ ਹੂਈ ਸਾਰੀ ਵੀ ਹੋ ਰਹੀ ਹੂਈ ਗਿਆਨ ਦਾ ਸਭ ਗ੍ਰੰਥ ਨੂੰ ਤੁਸੀਂ ਅੱਦੇ ਨੂੰ ਆ ਸਭ ਤੇ ਬਿਨਾਂ ਬਿਨਾਂ ਬੰਦੇ ਹੋ ਤੁਸੀਂ ਤੁਸੀਂ ਤਾਂ ਬੰਦੇ ਹੋ ਨਾ ਐਡਾ ਫਿਰ ਤੂੰ ਕਿਤਾਬ ਘੇ ਲਿਖਾਉਂਦਾ ਫਿਰ ਤੂੰ ਕਿਤਾਬ ਘਾਣਾ ਤੇਰੀ ਬੁੱਧੀ ਹੀ ਨਹੀਂ ਤੈਨੂੰ ਪਤਾ ਲੱਗੂਗਾ ਕਿ ਕਿਤਾਬ ਦਾ ਰਿਜ਼ਲਟ ਕੀ ਹੋਊਗਾ ਰੱਦ ਤਾਂ ਤੈਨੂੰ ਮਿਲ ਜੂਗਾ ਇਹਦਾ ਸ਼ਰੀਲ ਪੁਸਤਕ ਹੈਗਾ ਸਮਝ ਆਈ? ਕਤਾਬ ਜਲ ਤੂੰ ਕਹਿਣਾ ਨਾ ਰੂ ਤੇ ਫਿਰ ਤੈਨੂੰ ਪਤਾ ਲੱਗੂ ਕਤਾਬ ਕੀ ਹੁੰਦੀ ਹੈ ਇਹਦਾ ਤੈਨੂੰ ਜਿਆ ਰੱਦ ਪਾਰਨਾ ਪਾਇ ਸਕੇ ਪਦਮਾਪਤੀ ਵੇਦਕ ਸਕੇ ਪਦਮਾਪਤੀ। ਪਦਮਾਪਤੀ ਪਾਰ ਨਹੀਂ ਪਾ ਸਕਿਆ। ਪਦਮਾਪਤੀ ਵਿਸ਼ਨੂੰ ਨੂੰ ਕਹਿੰਦੇ। ਪਦਮਾਪਤੀ ਵਿਸ਼ਨੂੰ ਨੂੰ ਕਹਿੰਦੇ। ਵਿਸ਼ਨੂੰ ਨੂੰ ਵੀ ਨਹੀਂ ਸਮਝ ਆਈ। ਵਿਸ਼ਨੂੰ ਵੀ ਭਗਤੀ ਕਰਦਾ ਵਿਸ਼ਨੂੰ ਕਹਿੰਦੇ ਭਗਤੀ ਕਰਦਾ। ਫਿਰ ਕਿ ਵਿਸ਼ਨੂੰ ਭਗਤੀ ਕਰਦਾ ਹੋ ਕੀ ਕਰਦਾ। ਇਹ ਦਾ ਮਤਲਬ ਵਿਸ਼ਨੂੰ ਵੀ ਕਿ ਵਿਸ਼ਨੂੰ ਦੀ ਉਹ ਰੋ ਉਹ ਤੋਂ ਜਿਹੜਾ ਉੱਪਰ ਬੈਠਾ ਹੈ ਜਿਹਨੂੰ ਉਹ ਦਿਉਂਦੇ ਨੇ ਮੈਂ ਉਹਨੂੰ ਦਿਉਂਗਾ ਮੈਂ ਉਹਦਾ ਤੇਉਣਾ ਮੈਂ ਕੀ ਮੈਂ ਤਾਂ ਉਹਦੇ ਨਾਲ ਜੁੜਿਆ ਹੁੰਦਾ ਮੈਨੂੰ ਤੇਉਣ ਦੀ ਲੋੜ ਨਹੀਂ ਕਾਨ ਸੁਨੇ ਮੈਂ ਉਹਨਾਂ ਦੀ ਗੱਲਾਂ ਸੁਣੀਆਂ ਨਾ ਕਿਸ ਨੂੰ ਕੋਈ ਹੁੰਦਾ ਮੈਂ ਨਹੀਂ ਜਾਣਦਾ ਕੌਣ ਹੁੰਦਾ ਕਾਨ ਸੁਣਨਾ ਪਹਿਚਾਨਣਾ ਤੈਨੂੰ ਮੈਨੂੰ ਕੋਈ ਜਾਣ ਪਛਾਣ ਨਹੀਂ ਉਹਨਾਂ ਨੂੰ ਕੌਣ ਨੇ ਸੁਣੀਆਂ ਹੋਈਆਂ ਗੱਲਾਂ ਨੇ ਕਹਿੰਦੇ ਨੇ ਹੁੰਦਾ ਹੁੰਦਾ ਨਹੀਂ ਹੁੰਦਾ ਮੈਨੂੰ ਤੇ ਦੀ ਲੋੜ ਨਹੀਂ ਲੈ ਬਲ ਆ ਗਈ ਭੇਰੀ ਪਾ ਤਾਂ ਚੱਲ ਬਿੜੇ ਹੋਏ ਨੇ ਗੁਰਕੇ ਚੱਲ ਬਸੇ ਬਰੇ ਹੀਰੇ ਸੰਗ ਪਨੀਤਾ ਦੇਹੀ ਕਤੇ ਆਦੀ ਬਣੀ ਗੁਰਬਾਨੀ ਤੁਸੀਂ ਕਹੋ ਫਰਾਨਾ ਨਾਮ ਕਹਤੋਂ ਨੂੰ ਕੀ ਪਤਾ ਕੀ ਹੈ ਨਾ ਤੁਹਾਨੂੰ ਆਸ ਦਾ ਪਤਾ ਨਾ ਸੁਦਾ ਪਤਾ ਪਤਾ ਇਹ ਆਉ ਚਾਉ ਪਈ ਦੇ ਵਿੱਚ ਜਿਵੇਂ ਕਹਿੰਦੇ ਫਰਾਨਾ ਨਾਮ ਕਹ ਤਬ ਲੱਗ ਜੂ ਪੜ ਫਾਰਨ ਪਾਇ ਸਕੇ ਪਦਮਾਪਤੀ ਬੇਦ ਕਤੇਬ ਉਹ ਭੇਦੋ ਚਾਰਾਂ ਬੇਦ ਕਤੇਵਾ ਭੇਦੋ ਬੇਦ ਔਰ ਕਤੇਬ ਕਤੇਬ ਹੈ ਮੁਸਲਮਾਨਾਂ ਦੀ ਬੇਦ ਹੈਗਾ ਦੁਆ ਦਾ ਦੇਖੋ ਬੇਦ ਨੂੰ ਕਿਆ ਸੰਭਲ ਸ਼ਾਸਤਲ ਦੀ ਗੱਲ ਨਹੀਂ ਕੀਤੀ ਇੱਥੇ ਸ਼ੰਭਲ ਸ਼ਾਸਤਲ ਦੇ ਵਿੱਚ ਜਿਕਰੇ ਨਹੀਂ ਹੈ ਉਹਦਾ ਉਹਦਾ ਆਦਮੀਆਂ ਦੀ ਕਹਾਣੀ ਹੋਵੇ ਸਾਖੀਆਂ ਦੇ ਬੇਦ اور ਕਦੇਵ ਨੇ ਵੀ ਤੈਨੂੰ ਕਿਹਾ ਵੀ ਇਹਦਾ ਭੇਦ ਕੋਈ ਨਹੀਂ ਆ ਭੇਦ ਕਹਿੰਦੇ ਆ ਭੇਦ ਮੰਨਦੇ ਰਹੇ ਉਹ ਵੀ ਆ ਭੇਦ ਮੰਨਦੇ ਉਹਦਾ ਨਹੀਂ ਭੇਦ ਹੁਕਮੰਦਾ ਕੋਈ ਭੇਦ ਨਹੀਂ ਕਿਸੇ ਨੂੰ ਕੱਲ ਨੂੰ ਕੀ ਹੋ ਜਾਣ ਪਰਤੇ ਦੂਏ ਪਰ ਚੱਕੇ ਤੇ ਕੀ ਹੋ ਜਾਣਾ ਦੂਆ ਸਾਹ ਔਲਕ ਨਹੀਂ ਹੋਣਾ ਕੋਈ ਨਹੀਂ ਦੱਸ ਸਕਦਾ ਆ ਜਿਹੜੇ ਜੋਤਿਸ਼ਰ ਪੰਡਤ ਤਾਂ ਫਿਰ ਗਏ ਅਸੰਤ ਵੀ ਗਏ ਜਿਹੜੇ ਦੱਸਣ ਵਾਲੇ ਨੇ ਉਪਾਏ ਸਭ ਝੂਠੀਆਂ ਦੁਕਾਨਾਂ ਦੇ ਇਹ ਮੰਤਰ ਜਾਪ ਵਾਲੇ ਸਭ ਝੂਠ ਨੇ ਆ ਪੈ 2000 ਹਾਂ ਰੋਜੀ ਹੀ ਰਾਜ ਬਲੋਕਤ ਰਾਜਕ ਰੋਖ ਰੂਹਾਨ ਦੀ ਰੋਜੀ ਨ ਠਾਰਾ ਰੋਜੀ ਸਾਰਿਆਂ ਨੂੰ ਰੋਜੀ ਦਿੰਦਾ ਹੋ ਹੀਰਾਜ ਬਲੋਕਤ ਰਾਜਕ ਰਾਜ ਦਾ ਜੜਾ ਉਹਦਾ ਰਾਜ ਤਾਂ ਕੋਈ ਜਾਣਦਾ ਨਹੀਂ ਸਾਰਿਆਂ ਦਾ ਭੇਜ ਜਾਣਦਾ ਹੈ ਨਾ ਰੋਜੀ ਦੇ ਜਾਂਦਾ ਨਾ ਜਾਣਦਾ ਸਾਰਿਆਂ ਨੂੰ ਕੀ ਸੋਚਦੇ ਹਾਂ ਜਿਹੜੇ ਰੋਖ ਰੂਹਾਨ ਮੇਰੇ ਉਹਦੇ ਨਾਲ ਰਾਜ ਨੇ ਰੱਬ ਰਾਜਵੀਰ ਨੂੰ ਪਰਮੇਸ਼ਰ ਤੋਂ ਬਹੁਤ ਕਹਿੰਦਾ ਰੱਬ ਹੁੰਦਾ ਹੀ ਨਹੀਂ ਅਸੀਂ ਨਹੀਂ ਬੰਦੇ ਰੱਬ ਨੂੰ ਕਹਿੰਦਾ ਰੇ ਉਹਨੂੰ ਰੋਹ ਰੋਹਰ ਕੇ ਹੋਇਆ ਰੋਹ ਰੂਹਾਨ ਕੀ ਰੋਜੀ ਨਾ ਟੱਲੇ ਪਰ ਗੁੱਸੇ ਨੇ ਜਿਹੜੇ ਜਿਹੜੀਆਂ ਰੋਹ ਰੱਬ ਨਾਲ ਗੁੱਸੇ ਦੇ ਰਾਜਰ ਪਤਾ ਨਹੀਂ ਕਿਉਂ ਰਾਜਰ ਜਿਹੜੇ ਬੰਦੇ ਹੀ ਨਹੀਂ ਹੈਗਾ ਉਹਨਾਂ ਨੂੰ ਵੀ ਕਹਿੰਦੇ ਰੋਜੀ ਦੇਈ ਜਾਂਦਾ ਰੋਜੀ ਨਾ ਟਾਰਾ ਹੈ ਉਹਨਾਂ ਦੀ ਵੀ ਨਹੀਂ ਗੁੱਸੇ ਨਾਲ ਰੱਬ ਨਹੀਂ ਹੁੰਦਾ ਉਹਨਾਂ ਨੂੰ ਨਹੀਂ ਜਾਂਦਾ ਵੀ ਕੋਈ ਨਹੀਂ ਖਾਈ ਜਾਂਦਾ ਇਹਨਾਂ ਨੂੰ ਉਹਦਾ ਸਮਾਂ ਆਪ ਲੋਕੇ ਰਹੇ ਲੋ ਉਹ ਕਹਿੰਦੇ ਨੇ ਹੈ ਉਹ ਨਹੀਂ ਕਹਿੰਦਾ ਵਧੀਆ ਸਮਾਂ ਕਹਿੰਦੇ ਨੇ ਹੈ ਦੀ ਇਹ ਤਾਂ ਉਹ ਜੱਗੇ ਆਪਾਂ ਇਹਨਾਂ ਦੇ ਸਮਝੋ ਸਾਹਮਣੇ ਹੋ ਕੇ ਲੈਣਾ ਕੀ ਹੈ ਇਹ ਤਾਂ ਆਪਣੇ ਹੱਕ ਚ ਨੇ ਕਹਿੰਦੇ ਨੇ ਹੈ ਉਹ ਨਹੀਂ ਹੈ ਉਹ ਨਹੀਂ ਇਹ ਰੌਲਾ ਆਪਣੇ ਹੱਕ ਚ ਹੈ ਵੀ ਆਪਾਂ ਲੁਕੇ ਹੋਇਆ ਇੱਕ ਤੱਕੋ ਡਾਕੂ ਲੁਕੇ ਹੋ ਰਹੇ ਦਾ ਸਾਡੇ ਮੈਂ ਕਹਿੰਦਾ ਵੇ ਕਬਰੇ ਚ ਨਹੀਂ ਹੈਗੇ ਇੱਥੇ ਨਹੀਂ ਹੈਗੇ ਚਲੋ ਕਹਾਂ ਚਲੀਏ ਕੋਈ ਕਹਿੰਦਾ ਇੱਥੇ ਹੈਗਾ ਉਹਨੂੰ ਤਾਂ ਨਾ ਹੋਣ ਵਾਲੇ ਜਿਹੜੇ ਕਹਿੰਦੇ ਹੈਰੀਓ ਜੰਗਲ ਤੋਂ ਬਾਅਦ ਤੇ ਉਹਨੇ ਤਾਂ ਲੁੱਕੇ ਰਹਿਣਾ ਉੱਥੇ ਜਿਹੜਾ ਹੈਗਾ ਕਹੇਗਾ ਉਹ ਤਾਂ ਹੀ ਖਤਰਾ ਉਹਨੂੰ ਨਾ ਹੈਗਾ ਤਾਂ ਕੋਈ ਖਤਰਾ ਨਹੀਂ ਨਾ ਹੈਗਾ ਤਾਂ ਦੂਰ ਨੂੰ ਵੀ ਦੋਵੇਂ ਚੰਗਾ ਕਹਿਣਾ ਹੈ ਦੀ ਤੂੰ ਪਰੇ ਹੀ ਰਹਿ ਦੂਰ ਹੋ ਉਹ ਬਿਰਲਾ ਬਿਰਲਾ ਬਾਕੀ ਤਾਂ ਜਿਹੜੇ ਹੈਗੇ ਆਲੇ ਨਾ ਗੁਰਦੁਆਰੇ ਜੰਨੇ ਜਾਂਦੇ ਨੇ ਹੈਗੇ ਆਲੇ ਸਵਾਰ ਸਾਈ ਕਰਦੇ ਨੇ ਜਾ ਕੇ ਉੱਥੇ ਕੀ ਕਰਦੇ ਉਹ ਸਵਾਰ ਸਾਈ ਕਰਾਉਂਦੇ ਨੇ ਨਾ ਮੰਨਦੇ ਨੇ ਪੈਸੇ ਦੇ ਕੇ ਸਵਾਰ ਤੋਂ ਨਾ ਹੈ ਦੀ ਉਹ ਤਾਂ ਮੈਂ ਕੰਡ ਖਾਦੇ ਨੇ ਉਹਦੇ ਜਾ ਕੇ ਖਾ ਮ ਖਾਦੇ ਉਹ ਨਾ ਹੈ ਜਿਹੜੇ ਸਵਾਰਤਾ ਨਹੀਂ ਕਰਦੇ ਉਹ ਆਪਣਾ ਜਿੰਨਾ ਦੇ ਦਿੰਦਾ ਉਹਦੇ ਸ਼ੰਕਰ ਨੇ ਠੀਕ ਨੇ ਸਵਾਰ ਖਾਦਾ ਨਹੀਂ ਕਰਦੇ ਦੂਹੀ ਤਾਂ ਨਹੀਂ ਕਰਦੇ ਉਹ ਕੋਈ ਕਹਿੰਦਾ ਮੈਂ ਖੱਡ ਬਾੜ ਕਰਾਉਂ ਕੋਈ ਕਹਿੰਦਾ ਮੈਂ ਕੁਛ ਕਰਾਂ ਕੋਈ ਕਹਿੰਦਾ ਮੈਂ ਉਹ ਸੁਖ ਸੁਖਣੀ ਹੈ ਫਿਰ ਫालतੂ ਦੇ ਉਹ ਇਹ ਕੰਮ ਤਾਂ ਇਹ ਨਾ ਕਰਦੇ ਬਸ ਫਿਰ ਉਹ ਚੰਗੇ ਨੇ ਇਹਨਾਂ ਨੂੰ ਇਹਨਾਂ ਨੂੰ ਉਹ ਠੀਕ ਨੇ ਨਾਮਰੇ ਵਾਲੇ ਇਹਨਾਂ ਨੇ ਦੁਆ ਨੇ ਸੁਧਰ ਨਹੀਂ ਕਰਾਈ ਇਹ ਕਹਿੰਦੇ ਬੁੱਢਾ ਵਾਲੇ ਨੇ ਇਹ ਤਾਂ ਲਾਲਚ バス ਨੇ ਬੁੱਧੇ ਔਰ ਨੇ ਇਹ ਲੋਪੀ ਦਾ ਲੋਕ ਇਹਨਾਂ ਪਛਾਣਾ ਕਰੋ ਅਜੇ ਦੂਏ ਰੋਹ ਰੋਂਦਾ ਕਿਹਾ ਪਛਾਣਾ ਕਰੋ ਕਦੇ ਨਹੀਂ ਕਿਤੇ ਨਹੀਂ ਕਿਹਾ ਦੱਸੋ ਕਿੱਥੇ ਲਿਖਿਆ ਰੋਕ ਰੋਹਾਂ ਦਾ ਜਗਰਾ ਹੈ ਰੇ ਤੇ ਰੋਗ ਰਾਨ ਵਾਸਤੇ ਦੱਸੋ ਪੰਕਤੀ ਕੀ ਹੈ ਸਾਰੀ ਕੁਰਬਾਨੀ ਜ ਹੈ ਕੋਈ ਪੰਕਤੀ ਜੇ ਬੁਰਾ ਗਿਆ ਇਹਨਾਂ ਨੂੰ ਕੀ ਆਇਆ ਲੋਬੀਆਂ ਨੂੰ ਜਿਹੜੇ ਰੋਜ਼ ਅਰਦਾਸ ਕਰਾਉਂਦੇ ਨੇ ਜਿਹੜਾ ਦੁੱਧ ਵਿਗੜ ਗਿਆ ਨਾ ਉਹ ਵਿਗੜ ਗਿਆ ਇਹ ਵਿਗੜਿਆ ਹੋਇਆ ਦੁੱਧ ਆ ਉਹ ਜਿਹੜਾ ਜੋ ਥਣਾ ਤੇ ਆਉਦਾ ਜਾਨਕ ਨੂੰ ਬਾਹਰ ਜਾਂ ਦੇਖਾਂਗੇ ਨਾ ਆਜੋ ਤਾਂ ਉਹ ਕਹਿੰਦੇ ਨੇ ਬਾਹਰ ਹੈ ਹੀ ਦੀ ਉਹ ਬਾਹਰ ਆਇਆ ਹੀ ਦੀ ਇਹੋ ਉਹ ਤਾਂ ਆਜਾ ਥਣਾ ਤੇ ਭਿੱਜੇ ਹੀ ਐ ਜਿਹੜਾ ਆਜੋ ਚੋਇਆ ਦਿੱਤਾ ਤੋਂ ਨਹੀਂ ਬਗੜਿਆ ਬਗੜਦਾ ਹੁੰਦਾ ਉਹ ਕਦੋਂ ਗਾਮੇ ਜਾ ਬਹਾਜਾਲ ਮੰਨਣ ਗਏ ਜਦੋਂ ਮੰਨਣ ਸਾਹਮਣੇ ਆਉਣਗੇ ਮੰਨਣਗੇ ਉਦੋਂ ਸਿੱਧੇ ਜੁੜ ਜਾਣਗੇ ਉਹੀ ਰਾਖਸ਼ੀ ਨੇ ਜਿਹੜੇ ਛੇਤੀ ਬਣ ਜਾਂਦੇ ਹੁੰਦੇ ਨੇ ਇਹ ਲੋਹ ਘਰਾਨਾ ਉਹਨਾਂ ਨੂੰ ਗਿਆ ਹੋਇਆ ਰੋਜੀ ਨਾ ਠਾਲ ਆਹੋ ਇਹ ਲੋਹ ਘਰਾਨਾ ਨੂੰ ਹੁੰਦਾ ਉਹ ਮੁੜਕਰ ਕੁਦਰਤ ਨੂੰ ਮੰਨ ਲੈਂਦੇ ਨੇ ਕੁਦਰਤ ਹੈਗੀ ਐ ਉਹ ਚਲ ਕੋਈ ਗੱਲ ਨਾ ਕੁਦਰਤ ਹੈਗੀ ਐ ਕਿ ਕੋਈ ਗੱਲ ਆ ਫਿਰ ਉਹਦਰ ਤਾਂ ਹੈਗੀ ਐ ਕਿ ਉਸਤਾ ਮੰਨਦੇ ਨੇ ਉਹ ਕੀਤ ਪਤੰਗ ਕੁਰੰਗ ਭਜੰਗਮ ਪੁੱਤ ਭਵਿਕ ਭਵਾਨ ਬਣਾਏ ਦੂਜੀ ਗੱਲ ਇਹ ਹੈ ਤਰਬੂਜ ਦੇ ਨਾਤੇ ਧੜੇ ਇਹਨਾਂ ਨੇ ਬਣਾਏ ਜਿਹੜੇ ਬੁਰਦੇ ਨੇ ਤਰਬੂਜ ਦੇ ਨਾਤੇ ਧੜਾਉਣ ਵਾਲਾ ਕੋਈ ਨਹੀਂ ਨਹੀਂ ਨਾ ਹੈ ਇਸ ਕਰਕੇ ਵੀ ਇਹ ਝਗੜੇ ਨੇ ਇਹਨਾਂ ਨੇ ਨਾਸ ਕਰਤਾ ਸਭ ਕੁਝ ਬੰਨਣ ਵਾਲਿਆਂ ਨੇ ਨਾਸ ਕੀਤਾ ਇਹਦੀ ਬੱਤਾ ਬਣਾ ਲੀਓ ਲੜਾਈਆਂ ਝਗੜੇ ਇਹਨਾਂ ਦੇ ਨੇ ਕੱਟਵਾੜ ਇਹਨਾਂ ਨੇ ਕੀਤੀ ਹੈ ਤਰਬੂਜ ਦੇ ਨੋਤੇ ਧਰਮ ਦੇ ਨੋਤੇ ਉਹਨਾਂ ਨੇ ਕੱਟਵਾੜੀ ਕੀਤੀ ਅਪਰਾਧ ਨਹੀਂ ਕੀਤਾ ਉਹਨਾਂ ਨੇ ਜੇ ਅਪਰਾਧ ਕੀਤਾ ਹੂਗਾ ਕੁਝ माया ਦੀ ਖੋਖਜ ਵਾਸਤੇ ਕੀਤਾ ਲੜਾਈ ਧਰਮ ਦੀ ਖੋਖਜ ਵਾਸਤੇ ਕੋਈ ਲੜਾਈ ਨਹੀਂ ਦੋਦੀ ਮੁਸਲਮਾਨਾਂ ਨੇ ਮੁਸਲਮਾਨਾਂ ਨੂੰ ਬਚਾਉਣ ਵਾਸਤੇ ਹਿਦੂਆਰੇ ਹਿਦੂਵਾਦ ਬਚਾਉਣ ਵਾਸਤੇ ਬੋਦੀ ਮਾਰੇ ਉੱਥੇ ਪ੍ਰੋਟੈਸਟੈਂਟ ਉੱਥੇ ਯਹੂਦੀ ਬਾਰੇ ਉਹਨਾਂ ਨੇ ਵਰਡ ਦੇ ਵਿੱਚ ਕਿੰਨਾ ਨੁਕਸਾਨ ਧਾਨ ਬਗਾ ਦਿਉ ਨੀ ਕੀਤਾ ਪਾਪ ਕੀਤਾ ਉਹਨਾਂ ਨੇ ਧਰਮ ਦੇ ਨਾਮ ਦੇ ਪਾਪ ਨਹੀਂ ਕੀਤੇ ਕਿਰਨੋ ਤਾਂ ਚੁਗਦੇ ਰੂਗਲਾਨ ਕੀ ਰਾਜੀ ਨਾ ਟਾਲਾ ਆ ਉਹ ਇਹਨਾਂ ਨੂੰ ਬੋਲ ਪੈਕ ਚੁਗਦੇ ਨੇ ਜਿਹਨ ਰੀਗ ਹੁੰਦੇ ਉਹ ਧਰਮ ਦੇ ਨਾਮ ਦੇ ਜਿਹੜੇ ਪਾਪ ਕਰਦੇ ਨੇ ਲੋਕ ਨਾ ਉਹ ਸਭ ਨੂੰ ਭੜੇ ਹੋਣ ਜਦ ਸੱਚ ਪ੍ਰਗਟ ਹੁੰਦਾ ਉਹ ਬਿਲਕੁਲ ਨਹੀਂ ਮੰਨਦੇ ਉਹ ਤਾਂ ਮੰਨ ਲੈਂਦੇ ਨੇ ਐ ਤੂੰ ਫੇਰ ਮੰਨਦੇ ਵਿਗੜਿਆ ਹਾ ਦੁੰਦਾ ਇਹਨਾਂ ਜੋ ਰਹਿ ਜਾਂਦੇ ਨੇ ਨਾ ਮੰਨਣ ਵਾਲੇ ਕੁਝ ਬੰਦੇ ਪਹਿਲਾਂ ਹੀ ਖੜੇ ਹੁੰਦੇ ਨੇ ਇਹਨਾਂ ਦੀ ਫੱਟੀ ਵਿਹਲੀ ਹੁੰਦੀ ਹੋਈ ਨਹੀਂ ਲਿਖੀ ਹੋਈ ਹੁੰਦੀ ਹੈ ਪਹਿਲਾਂ ਜੀ ਭਰੀ ਹੋਈ ਹੁੰਦੀ ਹੈ ਕਾਲੀ ਹੋਈ ਹੁੰਦੀ ਹੈ ਇਹਨਾਂ ਦਾ ਤਾਂ ਮਨ ਕਾਲਾ ਹੋ ਗਿਆ ਹੁੰਦਾ ਉਹਨਾਂ ਨੇ ਲਿਖਿਆ ਹੀ ਨਹੀਂ ਉਹਨਾਂ ਨੇ ਉਹਨਾਂ ਦੀ ਕਾਫੀ ਕੋਰੀ ਹੁੰਦੀ ਹੈ ਰੱਬ ਵਾਰੇ ਤਾਂ ਰੱਬਾਰੇ ਉਹਨਾਂ ਦੀ ਕਾਫੀ ਕੋਰੀ ਹੈ ਉਹ ਕਹਿੰਦੇ ਹੈ ਹੋਰੀ ਜਾਂ ਹੈ ਨਹੀਂ ਲਿਖੇ ਕੁਝ ਨਹੀਂ ਕਾਫੀ ਕੋਰੀ ਹੈ ਉਹਨਾਂ ਦੀ ਆਦੇ ਬਾਰੇ ਜ਼ਰੂਰ ਹੈ ਮਾਇਆ ਦੀ ਗੱਲ ਹੈ ਮਾਇਆ ਦਾ ਸਾਰੀ ਹੈ ਮਾਇਆ ਦੇ ਖੇਤਰ ਚਾਰੂ ਕੀਟ ਪਤੰਗ ਕੁਰੰਗ ਭਜੰਗਮ ਪੂਤ ਭਵਿਕ ਪਵਾਨ ਬਣਾਏ ਕੀਟ ਪਤੰਗ ਕੁਰੰਗ ਭਜੰਗਮ ਅਪਜੰਗ ਬਹਿਰਾ ਗਿਆ ਜਿਹੜਾ ਆਦਮੀ ਡੇਡਾ ਚੱਲਦਾ ਨਾ ਵੱੜ ਪਾ ਕੇ ਆਪਾਂ ਕਹਿੰਦੇ ਜਿਵੇਂ ਵੱੜੇ ਵੱੜਲ ਉਹ ਪਜੰਗਮ ਪਰ ਡੇਡਾ ਚੱਲਦਾ ਸੀ ਨਾ ਚੱਲਦਾ ਹੀ ਨਹੀਂ ਆਪਣਾ ਲੋੜ ਦੇ ਹੈ ਜਿਹੜਾ ਆਪਣਾ ਲੋੜ ਲੈ ਕੇ ਚੱਲਦਾ ਪਜੰਗ ਉਹ ਯੰਗਵਾ 나ੜੀ ਵੀ ਉਹਨੂੰ ਤਾਂ ਹੀ ਕਹਿੰਦੇ ਨੇ ਵੜਪਾਖੇ ਚਲਦੀ ਨੂੰ ਜਿਹੜਾ ਬਹੁਤਾ ਚਲਾਕ ਹੈ ਨਾ ਚਲਾਕੀ ਕਰਦਾ ਤੇਜ਼ ਦੌੜਦਾ ਬੁਰ ਤੇਜ਼ ਦੌੜਦਾ ਕਰਕੇ ਇਹਨੂੰ ਕੁਰੰਕ ਕਹਿੰਦਾ ਪਤੰਗ ਕੀਟ ਪਤੰਗ ਪਤੰਗ ਉਡਾਰੀਆਂ ਮਾਰਦਾ ਉੱਡਦਾ ਕੀਟ ਕੀਟ ਸਰੀਰ ਦੇ ਛੀਰਮੰਦ ਦਾ ਕੀਟ ਹੈ ਉੱਡਦਾ ਤਾਂ ਪਤੰਦ ਹੈ। ਕੁਰੰਗ ਪੰਜਾਬ ਦੇ ਉੱਤੇ ਚਾਰੇ ਲਾਗੂ ਕਰੀਏ ਫਿਰ ਸਾਰਾ ਆ ਜਾਂਦਾ। ਆਤਮਾ ਦੇ ਲੱਛਣ ਨੇ ਸਾਰੇ। ਜੇ ਆਤਮਾ ਦੇ ਨਾਲ ਜੋੜ ਕੇ ਚੱਲੀਏ ਫਿਰ ਸਾਰੇ ਹੀ ਆ ਜਾਣਗੇ ਜੀਵ ਇਹਦੇ ਵਿੱਚ। 83 ਲਖ ਜੋਨ ਆ ਉਹਨਾਂ ਜਿਹੜੇ ਸੋਚਦਾ ਹੁਣ ਦਰਖਤਾਂ ਦੇ ਵਿੱਚ ਵੀ ਹੈ ਸੋਚਦਾ ਦਰਖਤਾਂ ਦੇ ਵਿੱਚ ਵੀ ਹੈ ਸੋਚੀ ਜਿਹੀ ਦਿਖਾਈ ਜਿਵੇਂ ਕੀੜੇ ਜਿਹੇ ਨਹੀਂ ਸੋਚਉਂਦੀ ਉਹ ਵਿਚਾਰੇ ਕਿੱਡੀ ਕੋੜਾਰੀ ਹੁੰਦੀ ਉਹਦੀ ਇਹ ਜੀ ਸੋਚ ਹੈ ਨਾਲ ਦੀ ਸੋਚ ਕੀ ਭੂਤ ਭਵਿੱਖ ਭਵਾਨ ਬਣਾਏ ਭੂਤ ਭਵਿੱਖ ਭਵਾਨ ਬਣਾਏ ਪਹਿਲਾਂ ਬਣਾਏ ਨੇ ਜਿਹੜੇ ਹੁਣ ਬਣ ਹੁਣ ਬਣੇ ਹੋਏ ਨੇ ਇਹ ਕਹਾਂ ਨੂੰ ਬਣਾਉਣੇ ਨੇ ਜਿਹੜੇ ਇਹ ਜੀਵਰੇ ਸਾਰੇ ਪੂਤ ਪੂਤ ਵਿੱਚ ਬਣਾ ਚੁੱਕਿਆ ਜੋ ਪਹਿਲਾਂ ਪੂਤਕਾਲ ਚ ਜੋ ਬਣਾਏ ਨੇ ਤੈਂ ਔਰ ਹੁਰਲੇ ਔਰ ਜਿਹੜੇ ਗਾਹਾਂ ਨੂੰ ਬੜੋੜੇ ਨੇ ਭਵਿੱਖਤ ਨੇ ਰਾਖਸ਼ੀ ਖਪੇ ਅਹੰਮੇਵ ਇਹ ਦੋਏ ਖਾਪ ਕੇ ਆਹ ਚ ਹਮ ਕਰ ਚ ਔਰ ਦੇਵਤੇ ਰਾਖੇ ਬਰਾਬਰ ਆ ਗਏ ਕੀ ਫਰਕ ਆ ਗਿਆ ਜਿਹੜੇ ਨਹੀਂ ਮੰਨਦੇ ਜਿਹੜੇ ਮੰਨਦੇ ਨੇ ਉਹਨਾਂ ਦਾ ਉਹਨਾਂ ਦਾ ਦੋਏ ਬਰਾਬਰ ਉਹਨਾਂ ਦੀ ਕਾਦੇ ਰੋਜੀ ਟਾਲੇ ਬਈ ਉਹਨਾਂ ਦੀ ਰੋਜੀ ਦੋਏ ਦਾ ਅੰਕਾਰੀ ਦੇ ਉਹਦਾ ਖਾਤਾ ਦਾ ਦੋ ਇੱਕੋ ਜਿਹਾ ਹੀ ਨੇ ਉਹਦੇ ਖ ਹੈ ਹਕਾਰੀ ਕਹਿਣਾ ਸਾਡਾ ਰੱਬ ਅਸੀਂ ਰੜਿਆ ਸਾਡੇ ਹੀ ਸਗਾ ਤੁਹਾਡਾ ਹੈ ਜੀ ਫਰ ਤਰਮਤ ਨਾ ਉਹ ਤੇ ਦੁਸ਼ਪਾਪਨਾ ਕਰਦੇ ਹੁ ਕਿਹਦੇ ਨਾ ਕਰਦੇ ਹੁ ਨਾਲੇ ਤਾਂ ਫੜਦੇ ਤਾਂ ਇਹੋ ਵੀ ਸਾਰਿਆਂ ਜਿੱਕੋ ਹੀ ਹੈ ਫਿਰ ਇਹ ਸਾਰਿਆਂ ਜਿੱਕਾ ਫਿਰ ਤੁਸੀਂ ਉਜਲੀਜ ਕਰਦੇ ਬੰਦੇ ਹੋ ਜੋ ਤੁਹਾਡਾ ਧਰਮ ਹੈ ਉਹ ਤੇ ਹੀ ਤੁਸੀਂ ਵਿਰੁੱਧ ਹੋ ਉਹਦਾ ਚਲ ਕੇ ਸਾਨੂੰ ਮੋਦਾ ਹੀ ਨਹੀਂ ਉਹਦਾ ਤਾਂ ਨਹੀਂ ਬੋਲਦੇ ਤੁਹਾਡੇ ਲੱਛਣ ਦੇ ਕੇ ਨਹੀਂ ਬੋਲਦੇ ਆ ਇਹ ਤੁਹਾਡੇ ਵਾਲੇ ਦੁਨੀਆ ਦੇ ਤੁਹਾਨੂੰ ਇਹਨਾਂ ਨੂੰ ਪਸੰਦ ਨਹੀਂ ਕਰਦੇ ਉਹ ਇਹ ਜਿਹੇ ਧਰਮ ਜੋ ਕਹਿੰਦੇ ਨੇ ਉਹ ਤੇ ਉਲਟ ਦਾ ਇਹਨਾਂ ਦਾ ਕਰਮ ਧਰਮ ਤੇ ਕਰਮ ਉਲਟ ਹੈ ਤੁਹਾਡਾ ਧਰਮ ਤੇ ਸੋਚ ਉਲਟ ਹੈ ਤੁਹਾਡੀ ਪ੍ਰੈਕਟੀਕਲੀ ਤੁਸੀਂ ਧਰਮ ਤੋਂ ਉਲਟੋਂ ਜੋ ਉਹ ਕਹਿੰਦੇ ਹੋ ਕਰਮ ਤੁਹਾਡਾ ਉਹ ਤੋਂ ਉਲਟ ਇਸ ਕਰਕੇ ਉਹਨਾਂ ਨੇ ਧਰਮ ਨੂੰ ਅਸਤੀਫਾ ਦੇ ਦਿੱਤਾ ਵੀ ਇਹਨਾਂ ਦੀ ਕਿਸੇ ਕੈਟਾਗਰੀ ਤਾਂ ਅਸੀਂ ਆਉਣਾ ਨਹੀਂ ਇਹਨਾਂ ਨਾਲ ਤਾਂ ਅਸੀਂ ਲੜਨਾ ਨਹੀਂ ਨਵੇਂ ਜ਼ਮਾਨੇ ਨੂੰ ਵਿਚਾਰਿਆਂ ਨੂੰ ਪਤਾ ਕੋਈ ਨਹੀਂ ਉਗਣਾ ਉਹ ਨਜ਼ਰ ਕਾ ਦਿਓ ਭਾਈ ਉਹ ਹੀ ਨਹੀਂ ਜਦੋਂ ਪ੍ਰਗਟ ਹੋਊਗਾ ਫਿਰ ਦੇਖ ਲੈਣਗੇ ਜਦ ਪ੍ਰਗਟ ਹੋਊਵੇ ਦੇਖੀ ਜਾਓ ਇਹ ਹਾਲਤ ਦੇ ਵਿੱਚ ਕਿਸੇ ਨੇ ਭੇਦ ਨਹੀਂ ਲਖਿਆ ਦੋਹਾਂ ਨੂੰ ਕਾਹੜਾ ਦੋਹਾਂ ਨੂੰ ਸਮਝ ਨਹੀਂ ਆਈ ਤੇ ਭੇਵ ਲਖਿਆ ਭਰਮ ਸਿਓ ਪਰਮਾਏ ਪਰਮ ਦੇ ਵਿੱਚ ਪਰਮੇ ਫਿਰਦੇ ਨੇ ਐਵੇਂ ਪਰਮ ਦੇ ਧਰਮੀ ਬਣੇ ਫਿਰਦੇ ਨੇ ਉਹਨਾਂ ਨੂੰ ਆਪਣੇ ਧਰਮੀ ਹੁੰਦਾ ਦੇਵਤੇ ਹੁੰਦਾ ਭਰਮ ਹੈ ਪਰਮਪਾਲੀ ਬੈਠਣ ਜਿਵੇਂ ਸਿੱਖ ਸਿਖਾਉਣ ਦਾ ਭਰਮਪਾਲੀ ਬੈਠੇ ਸਾਡੇ ਤੇ ਵੀ ਲਾਗੂ ਹੈ ਗੱਲ ਦੇਵਤਿਆਂ ਜਾਗੇ ਨਾ ਅਸੀਂ ਜਦ ਮਾਨਸ ਤੇ ਦੇਵਤੇ ਕੀ ਇਹ ਕਰਤਨ ਨਾ ਲੱਗੀ ਬਾਹਰ ਬਲੀਹਾਰੀ ਕੋ ਆਪਣੇ ਹੈ ਦਿਵਹਾੜੀ ਸਾਧਵਾ ਜਨ ਮਾਨਸ ਤੇ ਦੇਵਤੇ ਕੀ ਇਹ ਕਰਤਨ ਨਾ ਲੱਗੇ ਬਾਹਰ ਜਿਹੜਾ ਰੱਬ ਨੂੰ ਮੰਨਦਾ ਹੈ ਪ੍ਰਮਾਤਮਾ ਨੂੰ ਪਰਮੇਸ਼ਰ ਨੂੰ ਮੰਨਦਾ ਹੈ ਉਹ ਦੇਵਤਾ ਹੁੰਦਾ ਪਰ ਸਾਨੂੰ ਵੀ ਹੈ ਉੱਤੇ ਅਸੀਂ ਫਸ ਗਏ ਸਾਨੂੰ ਕਿਹਾ ਕੀ ਕਰਦੇ ਅਸੀਂ ਕੀ ਉਹ ਜਾਂ ਸਾਰੇ ਜੀਤ ਸਭ ਜੀਤ ਮਾਰੇ ਜੀਤੂ ਜੀਆਂ ਕਾ ਦਾ ਤਾਰਾ ਤੇ ਫਿਰ ਸਾਡਾ ਅਲੱਗ ਕੈਟਾਗਰੀ ਕਿਵੇਂ ਹੋ ਗਈ ਸਾਡੀ ਕੌਮ ਬਖਰੀ ਕਿਵੇਂ ਹੋ ये एक बेटा एक स्कैम बाहर का हां ठीक है फिर सिक्खा अलग कौम के में होगी ये बेईमानी ऐथे बेईमानी ऐथो बेईमानी शुरू होगी ऐथो दूध फटना शुरू हो गया ये खट्टा लाग गया विमान बिगड़ गए थे आगे गुरमा छोड़ दी और गया गुरु की बात त्याग दी ऐथे आके गुरबानी दी त्याग दी तो ये मेरी सानो फट है ਅੰਦਰ ਬੇਈਮਾਨੀ ਹੈ ਰਾਜ ਦੀ ਬੇਈਮਾਨੀਆਂ ਵੱਡਾ ਹੁੰਦੀ ਰਾਜ ਦੀ ਕਬਜ਼ਾ ਕਰ ਲੀਏ ਸਾਰਿਆਂ ਨੂੰ ਆਪਣੇ ਹਿਦਰ ਕਰ ਲੀਏ ਇਹ ਬੇਈਮਾਨੀ ਉਹਦੀ ਸਮਰੱਥਾ ਨੂੰ ਬੰਨਿਆ ਨਹੀਂ ਹੈ ਜੋ ਉਹ ਕਰਦਾ ਉਹ ਹੀ ਹੋਊਗਾ ਇਹ ਨਹੀਂ ਮੰਨੀ ਗੱਲ ਇਹ ਤੇ ਵਿਸ਼ਵਾਸ ਨਹੀਂ ਕੀਤਾ ਕਿ ਉਹ ਹੀ ਨਹੀਂ ਜਦੋਂ ਤੁਹਾਡਾ ਰਾਜ ਤੁਸੀਂ ਮੈਂ ਕਰ ਲਵਾਂਗੇ ਧੱਕੇ ਨਾਲ ਕਰ ਲੋਗੇ ਹਾਂ ਬੇਦ ਪ੍ਰਾਣ ਕਤੇਬ ਕੁਰਾਨ حسیب تھکے کر ہاتھ نہ آئے بیڈ پرانک تیب قران پرانوں وچ لے لے ہن کھساو نے جی لگدا نہ پرانوں وچ کھساو لا لا کے تھکے کڈلیاں مڑامڑا کے تھکے حسیب تھکے کھساو لا کے کر ہاتھ نہ آئے حسیب تھکے ਕੱਕੇ ਕਰ ਸਾਹਬ ਕਰ ਕਰਕੇ ਥੱਕ ਗਏ ਹੱਥ ਨਾਲ ਕਿਸੇ ਦੇ ਹੱਥ ਨਹੀਂ ਆਏ ਕਿਸੇ ਨੂੰ ਜਵਾਬ ਨਹੀਂ ਮਿਲਿਆ ਸਵਾਲ ਪ੍ਰੋਬਲਮ ਸੀ ਇੱਕ ਉਹਦਾ ਸੋਲੂਸ਼ਨ ਨਹੀਂ ਮਿਲਿਆ ਬਥੇਰੇ ਗ੍ਰੰਥ ਲਿਖਤੇ ਗੁਰਬਾਣੀ ਪ੍ਰੋਬਲਮ ਦਾ ਹੱਲ ਹੈ ਸੋਲੂਸ਼ਨ ਹੈ ਜਵਾਬ ਹੈ ਉਸ ਸਵਾਲ ਦਾ ਸਵਾਲ ਕੀ ਹੈ ਇਹ ਸਵਾਲ ਜਿਹਦਾ ਜਕਰਜ ਕਰਦਾ ਹੈ ਇਹਦਾ ਜਵਾਬ ਗੁਰਬਾਣੀ ਚ ਹੈ ਇਹਦਾ ਹੀ ਵਾਵੇ ਕੋਈ ਤਾਂ ਗੁਬਰੇ ਇਹਦਾ ਸਵਾਲ ਆ ਗੁਰਾ ਇੱਕਦੇ ਬੁਝਾਈ ਸੋਮਰ ਜੀਾਂ ਦਾ ਇੱਕ ਦਾਤਾ ਸੋਮਰ ਵੀ ਸੱਣੇ ਮੈਨੂੰ ਇੱਕ ਵਾਰ ਸਮਝਾ ਦੇ ਕੀ ਹੈ ਫੇਰ ਨਹੀਂ ਮੈਂ ਭੁੱਲਦਾ ਐਸ ਵਕਤ ਨਹੀਂ ਮੈਨੂੰ ਪਤਾ ਕੀ ਹੈ ਫੇਰ ਅਮਰ ਰਵੇ ਉਹ ਨਾਨਕ ਦੇਵ ਜੀ ਕਹਿੰਦੇ ਐਸ ਵਕਤ ਨਹੀਂ ਮੈਨੂੰ ਪਤਾ ਕੀ ਹੈ ਗੁਰਾ ਇੱਕਦੇ ਬੁਝਾਈ ਬੁਝਾਈ ਕੌਣ ਆ ਸੋਮਰ ਜੀਾਂ ਦਾ ਇੱਕ ਦਾਤਾ ਜਿਹੜਾ ਉਸ ਇੱਕ ਦੀ ਗੱਲ ਕਰਦਾ ਮੈਂ ਸੋਮਰ ਜੀਾਂ ਦਾ ਇੱਕ ਦਾਤਾ ਜਿਹੜਾ ਉਦੀ ਗੱਲ ਹੈ ਸੋਮੈ ਬਸਰ ਰਹੀ ਫੈਲੀ ਹੋਵੇ ਬੋਲਦਾ ਇਹ ਸਵਾਲ ਦਾ ਜਵਾਬ ਹੈ ਕਰੋ ਪੂਰਨ ਪ੍ਰੇਮ ਪ੍ਰਭਾਵ ਬਿਨਾਂ ਪੂਰਾ ਗਿਆਨ ਜਵਾਬ ਹੈ ਨਹੀਂ ਪੂਰਾ ਗਿਆਨ ਹੈ ਇਹਦਾ ਪੂਰਨ ਪ੍ਰੇਮ ਪ੍ਰਭਾਵ ਬਿਨਾਂ ਪਤਸਿਓ ਕਿਨੁ ਸ੍ਰੀ ਪਦਮਾਪਤੀ ਪਾਏ ਪੂਰਨ ਪ੍ਰੇਮ ਪ੍ਰਭਾਵ ਬਿਨ ਜਿੰਨਾ ਚਿਰ ਪੂਰੇ ਪ੍ਰੇਮ ਦਾ ਪ੍ਰਭਾਵ ਨਹੀਂ ਹੈ ਨਾ ਉਹਨਾਂ ਦਾ ਜਰ ਨਾ ਕਿਸੇ ਦਰਗਾਹ ਦੇ ਵਿੱਚ ਇੱਜ਼ਤ ਹੈ ਦਰਗਾਹ ਕੋਈ ਨਹੀਂ ਪੁੱਛਦਾ ਪ੍ਰੇਮ ਨਹੀਂ ਹੈ ਨਾ ਜਰ ਅੰਦਰੋਂ ਪ੍ਰੇਮ ਨਹੀਂ ਹੈ ਉਹਨਾਂ ਦਾ ਸੱਚ ਦੀ ਪ੍ਰਾਪਤੀ ਕਿਸੇ ਨੂੰ ਹੋਗੀ ਹੋਵੇ ਨਹੀਂ ਹੋ ਸਕਦਾ ਦੱਸੋ ਕਿ ਪਾਇਆ ਦੱਸੋ ਕਿਨੂੰ ਪਤਾ ਲੱਗਿਆ ਸੱਚ ਦਾ ਦੱਸੋ ਕਿਨੂੰ ਪਤਾ ਲੱਗਿਆ ਜਿੱਥੇ ਸੱਚ ਦਾ ਜਰ ਸੱਚ ਨਾਲ ਪ੍ਰੇਮ ਨਹੀਂ ਸੀ ਉਹਦਾ ਕਹਿਣਾ ਪ੍ਰੇਮ ਕਿਉਂ ਦੇ ਇਹਦਾ ਪਾਇ ਪਾਇ ਕੇਨ ਸ੍ਰੀ ਪਦਮਾਪਤੀ ਪਾਇ ਪਦਮਾਪਤੀ ਦੇਖੋ ਪਦਮਾਪਤੀ ਉੱਥੇ ਵੀ ਆਇਆ ਹੋਇਆ ਹੈ ਪਹਿਲਾਂ ਪਦਮਾਪਤੀ ਇੱਥੇ ਵੀ ਆਇਆ ਹੈ ਫਰਕ ਕੀ ਹੈ ਇੱਥੇ ਸ੍ਰੀ ਲੱਗਿਆ ਹੈ ਪਦਮਾਪਤ ਉਹ ਪਦਮਾ ਪਦ ਜਿਹੜਾ ਉੱਥੇ ਸ੍ਰੀ ਨਹੀਂ ਲੱਗਿਆ ਹੋਇਆ ਨਾਲ ਕੋਈ ਬਿਸ਼ਨੂ ਅਰਥ ਕਰਦੇ ਨੇ ਦੋਹੇ ਜਗ੍ਹਾ ਇੱਕ ਸ੍ਰੀ ਪਦਮਾਪਤ ਇੱਕ ਪਦਮਾਪਤਾ ਹੈ ਪਾਰਨ ਪਾਇ ਸਕੇ ਪਦਮਾਪਤੀ ਆ ਪਾਰਨ ਪਾਇ ਸਕੇ ਪਦਮਾਪਤ ਬੇਦ ਕਤੇ ਵਾ ਬੇਦੋਚਾਰਾਂ ਇਹ ਸ੍ਰੀ ਪਦਮਾਪਤਾ ਹੈ ਇਹ ਸ੍ਰੇਸ਼ਟ ਪਦਮਾਪਤਾ ਹੈ ਉਹ ਕੱਲਾ ਬਸ ਬੋਲਦਾ ਉਹ ਨਕਲੀ ਹੈ ਅਸਲੀ ਹੈ ਸ੍ਰੀ ਲਾਗੇ ਅਸਲੀ ਦੱਸਿਆ ਪਦਮਾਪਤ ਕਤੇ ਪਲੇਕ ਇਹ ਦੂਜੇ ਜਗ੍ਹਾ ਹੋਈ ਕਰ ਗਿਆ ਕੋਈ ਨਹੀਂ ਇਹਨੂੰ ਤਾਂ ਬਸਾਂ ਮੌਕਾ ਮਿਲਦਾ ਹੈ ਟੀਕਾ ਕਰ ਇਹ ਟੀਕਾ ਕਰ ਉਹਦਾ ਬਸਾਂ ਮੌਕਾ ਮਿਲਦਾ ਬਾਬਲੂ ਕੋਈ ਕਿਤੇ ਨਾ ਕਹਦੇ ਇਹ ਜਾ ਕੋ ਆਵੇ ਭਾਇਆ ਰਾਮ ਕੁਝੋੜਾ ਬਾਜੋ ਆਪਣਾ ਇਹਦਾ ਵਜਾ ਮੰਦਾਂਗਾ ਉੱਥੇ ਉਹਨਾਂ ਨੇ ਰੱਖਿਆ ਹੈ ਪਹਿਲੇ